के के केआरपी 1500 केआरपी 1550 एएम मैं ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ 11:10 ਹੋਏ ਨੇ 31 ਜਨਵਰੀ ਦਾ ਦਿਨ ਹੈ ਵਰਾ 2017 ਦਾ ਮੰਗਲਵਾਰ ਹੈ 18 ਮਾਘ ਨਾਨਕਸ਼ਹੀ ਸੰਮਤ 548 ਨਿੱਘਾ ਹਾਰਦਿਕ ਸਵਾਗਤ ਹੈ ਜੀ ਅੱਜ ਦੀ ਲੋਕ ਸੱਦ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਜੀ ਸੰਗੀਤ ਸੁਰਖ ਦੇ ਮਸਲੇ ਤੇ ਗੱਲਬਾਤ ਹੋਏਗੀ ਪਹਿਲੇ ਹਿੱਸੇ ਦੇ ਵਿੱਚ ਤੁਹਾਨੂੰ ਖਬਰਾਂ ਲੋਕਲ ਸੁਣਾਉਣਾ ਹੈ ਤੋਂ 1 ਵਜੇ ਤੱਕ ਪ੍ਰੋਫੈਸਰ ਅਮਰਜੀਤ ਸਿੰਘ ਅਮਰੀਕਾ ਤੋਂ ਪੰਜਾਬ ਦੀਆਂ ਚੋਣਾਂ ਦੇ ਬਾਰੇ ਮੌਜੂਦਾ ਸਥਿਤੀ ਕੀ ਹੈ ਇਸ ਬਾਰੇ ਗੱਲਬਾਤ ਕਰਨਗੇ ਪਿਛਲੇ ਘੰਟੇ ਦੇ ਵਿੱਚ ਪਿਛਲੇ ਹਫਤੇ ਵੀ ਉਹ ਗੱਲ ਕਰਕੇ ਗਏ ਸੀ ਸਰ ਅਮਰਜੀਤ ਸਿੰਘ ਉਹਨੇ 1 ਤੋਂ 2 ਵਜੇ ਤੱਕ ਸੰਸਾਰ ਦੇ ਵਿੱਚ ਹੁੰਦੀਆਂ ਘਟਨਾਵਾਂ ਤੇ ਸੰਸਾਰਿਕ ਪਿੰਡ ਜਿਹੜਾ ਬਣਿਆ ਹੋਇਆ ਉਸ ਦੀਆਂ ਘਟਨਾਵਾਂ ਇੱਥੇ ਬੈਠਿਆਂ ਨੂੰ ਸਾਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਇਸ ਦੀ ਗੱਲਬਾਤ ਹੋਏਗੀ ਖੁੱਲਕੇ ਤੁਸੀਂ ਨਾਲ ਆਇਓ ਦੇਖਿਓ ਕਿ ਦੁਨੀਆ ਦੇ ਵਿੱਚ ਕੀ ਕੀ ਹੋ ਰਿਹਾ ਉਹ ਸਾਡੇ ਨਾਲ ਕਿੰਨਾ ਬਵਸਤ ਹੈ 1843 247 1550 1844 247 1550 ਆਉਣੇ ਨੰਬਰ ਹੈ ਕਹਿੰਦੇ ਕੋਈ ਸੂਫੀ ਦੇ ਛੰਨ ਪਾਈ ਹੋਈ ਤੇ ਮੇਰੇ ਤੇ ਮੇਰੇ ਤੇਰੇ ਅਰਗਾ ਦੁਰਦਾ ਫਿਰਦਾ ਉੱਥੇ ਜਾ ਵੜਿਆ ਉਹਦੇ ਥੱਲੇ ਆਪਣੀ ਸਫ ਸਿੱਟੀ ਹੋਈ ਤੇ ਸੁੱਤਾ ਪਿਆ ਤੇ ਉੱਠ ਕੇ ਬਹਿ ਗਿਆ ਉਹ ਕਹਿੰਦਾ ਤੇਰਾ ਸਮਾਨ ਸਮੂਹ ਬਾਈ ਦਿਖਦਾ ਹੀ ਕਿਤੇ ਉਹ ਕਹਿੰਦਾ ਤੇਰਾ ਅਸਮਾਨ ਕਿੱਥੇ ਆ ਜਿਹੜਾ ਗਿਆ ਸੀ ਉਹ ਕਹਿੰਦਾ ਮੈਂ ਤਾਂ ਤੇਰੇ ਕੋਲ ਘੁੰਮਣ ਫਿਰਨਾ ਆਇਆ ਵਿਜ਼ਿਟ ਕਰਨਾ ਆ। ਉਹ ਕਹਿੰਦਾ ਮੈਂ ਵੀ ਵਿਜ਼ਿਟ ਹੀ ਕਰਨ ਆਇਆ ਇਸ ਸੰਸਾਰ ਤੇ ਸਮਾਨਦੀ ਦੀ ਲੋੜ। 18432471550 18442471550 on air ਨੰਬਰ ਹੈ krpi radio.com ਤੇ ਸਿੱਧਾ ਪ੍ਰਸਾਰਣ ਸੁਣਦੇ ਹੋ ਐਪ ਡਾਊਨਲੋਡ ਕਰ ਸਕਦੇ ਹੋ। ਭਵਨਦੀਪ ਸਿੰਘ ਜਵਨ ਦਾ ਪੰਜਾਬ ਗਿਆ ਲੋਕ ਸਾਥ ਤੇ ਤੁਹਾਡਾ ਪ੍ਰੋਗਰਾਮ ਜਿਹੜਾ ਪਾਉਨੇ ਆਪਾਂ ਉਹ ਨਹੀਂ ਪਾ ਰਹੇ ਤੇ ਹੁਣ ਖਬਰ ਤੇ ਅੱਗੇ ਵੀ ਇਹ ਮੁੰਡੇ ਪਾਉਂਦੇ ਐ ਅਟਲੀ ਦੇ ਵਿੱਚ ਖਬਰਨਾਮਾ YouTube ਦਾ ਚੈਨਲ ਹੈ ਉੱਥੇ ਤੁਸੀਂ ਇਹ ਪ੍ਰੋਗਰਾਮ ਸੁਣ ਸਕਦੇ ਹੋ ਜਾਂ ਮੈਂ Facebook ਤੇ ਉਸ ਨੂੰ ਪੋਸਟ ਕਰਦਿਆ ਕਰਾਂਗਾ Facebook ਤੇ ਸੁਣ ਲਿਆ ਕਰੋ ਲਾਈਵ ਵਾਲਾ ਕੰਮ ਪਹਿਲਾਂ ਤਾਂ ਮੈਂ ਸੋਚਿਆ ਸੀ ਫਿਰ ਖਾਸਾ ਮੈਂ ਖਿਆ ਤਾਂ ਖਾਸਾ ਕੰਮ ਹੈ ਪੰਗਾ ਪਾਉ ਕੋਈ ਤੈਨੂੰ ਕੰਟੇ ਕਿਹੜਾ ਸਿੱਧਾ ਹੋ ਕੇ ਬੈਠੂ ਯਾਰ 18432471550 ਉਹ ਨੰਬਰ ਹੈ limitsology ਦਾ ਨੰਬਰ ਕਦੇ ਕਦੇ ਤਾਂ ਲਾਈਵ ਹੋ ਸਕਦਾ ਹਰ ਰੋਜ਼ ਲਾਈਵ ਤਾਂ ਫਿਰ ਔਖਾ ਹੋ ਜੂ 6044406462 info@krpieradio.com ਕਈ ਪਹਿਲਾਂ ਲਿਖ ਕੇ ਪਾਉਂਦੇ ਆ ਪੰਜ ਚਾਰ ਘੰਟੇ ਅਸੀਂ ਇੰਨੇ ਵਜੇ ਲਾਈਵ ਹੋਵਾਂਗੇ ਜੇਵੇਂ ਲਾਈਵ ਨਹੀਂ ਹੋਣਾ ਚੈਲੈਂਜਰ ਸੈਟਲਾਈਟ ਛੱਡਣੀਆਂ ਨਾਸਾ ਨੇ ਇੱਥੇ ਪੁੱਛਦਾ ਕੋਈ ਨਗਰਖਾਨੇ ਤੂਤੀ ਦੀ ਬਥੇਰੇ ਫਿਰਦੇ ਆ ਫਿਰ ਬੜਾ ਮੁੱਛ ਨੂੰ ਗਗੇੜਾ ਜਿਹਾ ਕਦੇ ਪੱਗ ਸਿੱਧੀ ਜਈ ਇਹਨਾਂ ਨਾ ਬਹੁਤ ਕਿਤੇ ਯੂਐਨਓ ਨੂੰ ਸੰਬੋਧਨ ਕਰਦੇ ਹੁੰਦੇ ਆ ਪਹਿਲਾਂ ਲਿਖ ਦਿਆ 6 ਘੰਟੇ ਐਨੇ ਵਜੇ ਅਸੀਂ ਲਾਈਵ ਹੋਵਾਂਗੇ ਪ੍ਰਵਚਨ ਸੁਣੋ 60444064@info@krpiaudio.com ਲਈ ਮਿਡਵਾਲਾ ਜੀ ਦਾ ਨੰਬਰ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਤੇ ਨਾਲ ਹਰਜੀਤ.ਜੀ@krpiaudio.com ਇਹ ਈਮੇਲ ਹੈ ਵਿਰਖਾਂ ਦੇ ਵਰਗੇ ਜਿਨ੍ਹਾਂ ਦੇ ਰਵੱਈਏ ਆਵਾਰਾ ਜ਼ਮੀਨਾਂ ਦੇ ਮੌਜੀ ਗਵਈਏ ਕਮਕੜ ਕਲੰਦਰ ਕਵੀ ਕਾਸ਼ਨੀ ਦਲੇਸ਼ਕ ਇਸ਼ਾਰੇ ਨਾ ਸੱਦੀਏ ਅਦਾ ਨਾ ਬੁਲਾਈਏ ਜ਼ੁਲਫਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤੱਕ ਕਿੱਥੇ ਤੇ ਕਿੱਥੇ ਲੁਕਾਈਏ 에ਰੋਈਆਂ ਤੇ ਬੇਲੇ ਜੇ ਲਸ਼ਕਰ ਤੁਰੇਗਾ ਤਾਂ ਤਾਰੇ ਚੜਨਗੇ ਹਰਕਤ ਚੋਂ ਲਥੇ ਬਰਕਤ ਬੇਬੀ ਬਾ ਨੂੰ ਘੜੀਏ ਨਿਸ਼ਾਨੇ ਲਗਾਈਏ ਜ਼ੁਲਫਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤੱਕ ਕਿੱਥੇ ਤੇ ਕਿੱਥੇ ਲੁਕਾਈਏ ਕੱਚੀ ਦੀ ਧੁੱਪ ਦਾ ਕੋਈ ਓਡਣ ਚਰਾ ਕੇ ਕੱਚੀ ਦੀ ਧੁੱਪ ਦਾ ਕੋਈ ਓਡਣ ਚਰਾ ਕੇ ਘੁੰਮ ਗਈਆਂ ਕੁੜੀਆਂ ਵੀ ਘਗਰੇ ਕਮਾ ਕੇ ਨਾਗਾ ਦੇ ਨੈਣਾ 'ਚ ਲਿਸ਼ਕਣਗੇ ਗਿੱਧੇ ਗੁਲਾਈਏ ਸੁਰਾਈਏ ਨਹੀਂ ਹਵਾ ਹਵਾਈਏ ਜ਼ੁਲਫਾਂ ਦੇ ਛੱਲੇ ਫਤੀਰਾਂ ਦੇ ਜ਼ੇਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲਕਾਈਏ ਖੇਤਾਂ ਦੇ ਮੰਦਰੋ ਸਾਵੇ ਸਬਰ ਨੇ ਚਿਲਿਆਂ 'ਚੋਂ ਵਹਿੰਦੇ ਸਿੱਕੇ ਸੰਦ ਝਰਨੇ ਕਣਕਾਂ ਦੀ ਚੁੱਪ ਨੇ ਤੇ ਅਣਖਾਂ ਵੀ ਚੁੱਪ ਨੇ ਚੜ ਗਈਆਂ ਧੁੱਪਾਂ ਤੋਂ ਕੀ ਕੀ ਸਿਪਾਈਏ ਜ਼ੁਲਫ਼ਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲਕਾਈਏ ਅੱਗਾ ਕਿਉਂ ਲਾਵੇਂ ਕਿਉਂ ਪਾਣੀ ਨੂੰ ਵੰਡੇ ਮਿੱਠਤ ਜ਼ਬਾਨਾਂ ਦੀ ਟੁੱਤੀ ਨੂੰ ਗੰਢੇ ਗੌਤਮ ਦੇ ਨੈਣਾਂ ਨੂੰ ਬੁੱਧਾਂ ਦੇ ਬਹਿਣਾ ਨੂੰ ਚਿੱਤੇ 'ਚ ਰੱਖੀਏ ਤੇ ਗੀਤਾਂ 'ਚ ਗਾਈਏ ਜ਼ੁਲਫ਼ਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲਕਾਈਏ ਨਵੇਲੀ ਹੈ ਅੱਖ ਵੀ ਨਵੇਲਾ ਹੈ ਸੁਰਮਾ ਅਸਥਣ ਨੂੰ ਸੂਰਜ ਨੇ ਪੱਤਣਾ ਤੇ ਖੁਰਨਾ ਸਲਾਮਤ ਰਹੁ ਪਾਤਸ਼ਾਹੀ ਜ਼ਮੀਨ ਦੀ ਆਜਾ ਇਸ ਭੁਲੇਖੇ ਦਾ ਧੂਣਾ ਤਪਾਈਏ ਜ਼ulfਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤੱਕਿੱਥੇ ਤੱਕਿੱਥੇ ਲਕਾਈ ਇਹ ਧੂੜਾਂ ਦੇ ਬੱਦਲ ਜੋ ਟਕਰੇ ਨਿਗਾਹ ਨੂੰ ਇਹ ਕਿਸਬੇ ਨੇ ਘੋੜੇ ਜੋ ਪਿੰਜਣ ਹਵਾ ਨੂੰ ਇਹ ਧੂੜਾਂ ਦੇ ਬੱਦਲ ਜੋ ਟਕਰੇ ਨਿਗਾਹ ਨੂੰ ਇਹ ਕਿਸਬੇ ਨੇ ਘੋੜੇ ਜੋ ਪਿੰਜਣ ਹਵਾ ਨੂੰ ਹੈ ਲਾਜ਼ਮ ਤੇ ਗੁਜ਼ਰੀ ਦਾ ਬੇਟਾ ਹੀ ਹੋਣਾ ਹੈ ਹੈ ਲਾਜ਼ਮ ਕਿ ਗੁਜ਼ਰੀ ਦਾ ਬੇਟਾ ਇਹੀ ਹੋਣਾ ਉਹ ਆਸ਼ਕੀ ਦਾ ਅੰਦਾਜ਼ ਉਸ ਉਹਦੀ ਆਸ਼ਕੀ ਦਾ ਅੰਦਾਜ਼ਾ ਕੀ ਲਾਈਏ ਜ਼ੁਲਫਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤਾਂ ਕਿੱਥੇ ਤੱਕ ਕਿੱਥੇ ਲਕਾਈਏ ਹਰਮਨਜੀਤ ਹੂੰ 10:00 ਵਜੇ ਕੇ 18 ਮਿੰਟ ਹੋਏ ਨੇ ਜੀ ਪ੍ਰੋਗਰਾਮ ਤੁਸੀਂ ਲੋਕ ਸਤ ਸੁਣ ਰਹੇ ਹੋ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਕਿ ਮਸਜਿਦ ਦੇ ਵਿੱਚ ਛੇ ਜਣਿਆਂ ਨੂੰ ਮਾਰਕ ਤੇ ਘੱਟਣ ਵਾਲਾ 27 ਸਾਲ ਦਾ ਮੁੰਡਾ ਵਿਸਨਾ ਜਿਸ ਦਾ ਸ਼ਬਦ ਐ ਫਰੈਂਚ ਸ਼ਬਦ ਹੈ ਦੋ ਜਣੇ ਪਹਿਲਾਂ ਇੱਕ ਮੁਸਲਮਾਨ ਮੁੰਡਾ ਵੀ ਫੜ ਲਿਆ ਸੀ ਪਰ ਉਹ ਹੁਣ ਉਹ ਤਾਂ ਵਿਟਨੈਸ ਹੈ ਉਹਨੂੰ ਵੀ ਨੈਬ ਲਿਆ ਤੀ ਛੜਤਾ ਤੇ ਇਹਦੇ ਤੇ ਹੁਣ 6 ਚਾਰजेस ਲੱਗਿਆ ਦੋ ਬੰਦੇ ਹਾਲੇ ਵੀ ਹਾਲਾਤ ਉਹਨਾਂ ਦੇ ਠੀਕ ਨਹੀਂ ਹਸਪਤਾਲ ਦੇ ਵਿੱਚ ਉਹ ਇਹ ਜਿਹੜੀਆਂ ਮੁਸ਼ਕਿਲਾਂ ਐ ਇਸ ਨੇ ਸਾਰੇ ਕੈਨੇਡੀਅਨ ਨੂੰ ਝੰਡੋੜ ਕੇ ਰੱਖ ਦਿੱਤਾ ਪ੍ਰਧਾਨ ਮੰਤਰੀ ਉਹ ਇਥੋਂ ਸਿੱਧਾ ਉੱਥੇ ਨੂੰ ਭੱਜੇ ਬਹੁਤ ਪਾਪੂਰਤ ਗੱਲਾਂ ਕੀਤੀਆਂ ਜਸਟਨ ਟ੍ਰੂਡੋ ਨੇ ਸਾਰੇ ਹਾਊਸ ਆਫ ਕਾਮਨਸ ਦੇ ਵਿੱਚ ਸਾਰੇ ਪਾਰਟੀਆਂ ਨੇ ਕੋਈ ਗੱਲ ਕਹੀ ਤੇ ਕਿਬੈਕ ਦੇ ਮੁੱਖ ਮੰਤਰੀ ਸਲਫਕੁਆ ਨੇ ਕਿ ਵੀ ਰੌਲਾ ਪਾਇਆ ਕਹਿੰਦਾ ਵੀ ਇਹ ਗੱਲ ਠੀਕ ਨਹੀਂ ਸ਼ਬਦਾਂ ਦੇ ਬਾਣ ਬਹੁਤ ਤਿੱਖਿਆ ਇਹਨਾਂ ਨੂੰ ਖੁੰਡੇ ਕਰੋ ਇਨਾ ਕਰੋਏ ਤੁਸੀਂ ਅਮਨ ਸ਼ਾਂਤ ਇਹ ਬੰਦੇ ਸੈਕੰਡ ਜਨਰੇਸ਼ਨ ਮੋਸਟਲੀ ਇਹ ਫ੍ਰੈਂਚ ਬੰਦੇ ਹੀ ਸੀ ਮੁਸਲਮ ਇਹਨਾਂ ਦੀ ਪਿੱਛੋਂ ਉੱਥੇ ਦੇ ਆਏ ਹੋਏ ਲੋਕ ਸਨ ਇਹ ਫ੍ਰਾਂਸ ਦੇ ਵਿੱਚ ਇਹ ਫ੍ਰੈਂਚ ਬੋਲਣ ਵਾਲੇ ਲੋਕ ਸੀ ਇਹ ਦੂਸਰੇ ਬੰਦੇ ਉਧਰੋਂ ਆਪਣੇ ਵਾਲੇ ਪਾਸਿਓਂ ਜਾਈ ਏਸ਼ੀਆ ਦੇ ਵਿੱਚੋਂ ਨਹੀਂ ਸੀ ਆਏ ਹੋਏ ਲੋਕ ਔਰ ਇਹ ਬਹੁਤ ਟਾਈਟ ਨੈਟਿਡ ਕਮਿਊਨਿਟੀ ਹੈ ਕਿਉਂਕਿ ਭਾਸ਼ਾ ਦੇ ਤੌਰ ਤੇ ਸੱਭਿਆਚਾਰ ਦੇ ਤੌਰ ਤੇ ਕਿਬੈਕ ਦੇ ਵਿੱਚ ਬੜਾ ਪਿਆਰ ਜਾ ਤਾਂ ਕਿਸੇ ਪੁਲਿਸ ਅਫੀਸਰ ਨੂੰ ਤੂੰ ਇੰਗਲਿਸ਼ ਚ ਗੱਲ ਕਰਕੇ ਦਿਖਾ ਜਾਂ ਕਿਸੇ ਦਫ਼ਤਰ ਚ ਜਾ ਕੇ ਨਹੀਂ ਬੋਲਦੇ ਉਹ ਹਾਂ ਪੰਜਾਬੀ ਬੋਲਣ ਲੱਗ ਜਾ ਉਹਨੂੰ ਅੰਗਰੇਜ਼ੀ ਨਹੀਂ ਫਿਰ ਉਹ ਅੰਗਰੇਜ਼ੀ ਬੋਲਣ ਲੱਗ ਜਾਂਦਾ ਇਹ ਡਰਾਈਵਰਾਂ ਨੇ ਕੰਮ ਖੱਡਿਆ ਕਹਿੰਦੇ ਮੌਂਟਰੀਅਲ ਦੇ ਵਿੱਚ ਪੰਜਾਬੀ ਬੋਲਣ ਲੱਗ ਜਾਓ ਪੁਲਿਸ ਅਫੀਸਰ ਫਿਰ ਦੱਸ ਦਿੰਦਾ ਡਾਇਰੈਕਸ਼ਨ ਕੋਈ ਜਿਹੜੀ ਵੀ ਘਟਨਾ ਹੋਈ ਹੈ ਬਹੁਤ ਵੱਡੀ ਹੈ ਘਟਨਾ ਹੋਈ ਹੈ ਦਾਤਾ ਮਿਹਰ ਕਰੇ ਸਾਡਾ ਇਹ ਦੇਸ਼ ਬਹੁਤ ਸੱਭਿਆਚਾਰ ਬਹੁਤ ਸੱਭਿਆ ਬਹੁਤ ਸੱਭਿਆਚਾਰ ਦਾ ਦੇਸ਼ ਹੈ ਬਹੁਤ ਅਲੱਗ-ਅਲੱਗ ਨਸਲਾਂ ਜਾਤਾਂ ਦੇ ਲੋਕ ਇੱਥੇ ਵੱਸਦੇ ਆ ਤੇ ਇੱਕ ਦੂਜੇ ਦਾ ਮਾਣ ਕਰਦੇ ਉਹਨਾਂ ਦੇ ਨਾਂ ਤੇ ਕੈਨੇਡਾ ਵਿਜ਼ਲ ਮੋਮਬਤੀਆਂ ਜਗਾਈਆਂ ਸਾਰੇ ਕੈਨੇਡਾ ਨੇ ਕੱਲ ਇਹ ਮੁਸਲਮ ਕਮਿਊਨਿਟੀ ਇਸ ਗੱਲ ਦੇ ਵਿੱਚ ਡਰ ਦੇ ਵਿੱਚ ਹੈ ਜੇ ਉਹ ਡਰ ਵਿੱਚ ਨੇ ਕਟ ਗਿਣਤੀਆਂ ਤੇ ਸਾਨੂੰ ਨਾਲ ਖੜਨਾ ਚਾਹੀਦਾ ਇਹ ਕਿਸੇ ਤੇ ਵੀ ਹੋ ਸਕਦਾ ਇਹੋ ਨਾ ਕਹੋ ਵੀ ਅੱਜ ਮਸਜਿਦ ਹੈ ਕੱਲ ਨੂੰ ਮੰਦਿਰ ਦੀ ਕੱਲ ਨੂੰ ਗੁਰਦੁਆਰਾ ਸਾਹਿਬ ਦੀ ਵਾਰੀ ਆ ਸਕਦੀ ਹੈ ਨਸਲਵਾਦ ਸਿਰ ਚੁੱਕ ਰਿਹਾ ਹੈ ਵਾਈਟ ਜਿਹੜੇ ਸਿਰਫ ਤੇ ਸਿਰਫ ਚਿੱਟੇ ਨਸਲ ਦੇ ਲੋਕਾਂ ਨੂੰ ਪਿਆਰ ਕਰਨ ਵਾਲੇ ਨੇ ਉਹਦੀ ਸ਼ੁਰੂਆਤ ਅਮਰੀਕਾ ਵਾਲੇ ਪਾਸਿਓਂ ਹੋ ਚੁੱਕੀ ਹੈ ਗੱਲਾਂ ਜਿਹੜੀਆਂ ਡੋਨਲਡ ਟਰੰਪ ਦੀਆਂ ਉਹ ਸਿੱਧੀਆਂ ਨੇ ਉਹ ਚਾਹੁੰਦਾ ਵੀ ਇਹੀ ਹੈ ਜਿਹੜਾ ਸਟਰੋਂਗ ਅਗੇਨ ਕਹਿੰਦਾ ਨਾ ਗ੍ਰੇਟ ਅਗੇਨ ਕਹਿੰਦਾ ਉਹਦਾ ਕੰਮ ਇਹ ਹੈ ਕਿ ਅਸੀਂ ਸਿਰਫ ਆਪ ਭੁੱਲ ਜਾਂਦਾ ਵੀ ਜਰਮਨਾਂ ਗਾਹਾਂ ਖੂਨ ਦੇ ਵਿੱਚੋਂ ਆ ਮੈਂ ਵੀ ਕਿਤੋਂ ਆਇਆ ਜਿਹੜੀਆਂ ਤੋਂ ਲੋਕ ਆ ਕੇ ਵਸ ਅਸਲ ਜਿਹੜੇ ਗ੍ਰੇਟ ਆਲੇ ਨੇ ਉਹ ਤਾਂ ਕੁੰਦਰਾਂ ਦੇ ਵਿੱਚ ਬੈਠੇ ਆ ਤੇ ਮੱਛੀਆਂ ਤੁਸੀਂ ਦਿੰਦੇ ਉਹ ਨੇ ਪਾਣੀਆਂ ਦੇ ਕੰਢੇ ਬੈਠੇ ਸੀ ਜਦ ਕਲੰਬਸ ਨੇ ਢੇੜਾ ਕੱਢਿਆ ਉਹ ਕਹਿੰਦਾ ਇਹ ਤਾਂ ਭਾਰਤੀ ਲੱਗਦੇ ਐ ਇਹ ਜਿਹੜੀਆਂ ਗੱਲਾਂ ਇਹ ਠੀਕ ਨਹੀਂ ਪਰ ਫੇਰ ਵੀ ਆਪਣੇ ਵੱਲੋਂ ਆਪਾਂ ਕੋਸ਼ਿਸ਼ ਕਰੀਏ ਤੇ ਅੱਖਾਂ ਖੋਲ ਕੇ ਰੱਖੋ ਉਸ ਸਮਾਂ ਨਿੰਗਿਆ ਵੀ ਜਦ ਕਿਸੇ ਨੂੰ ਕਿਸੇ ਤੱਕ ਮਤਲਬ ਨਹੀਂ ਅਲਰਟ ਰਹੋ ਅਲਰਟ ਤੁਰੋ ਫਿਰੋ ਅਲਰਟੇ ਗੱਡੀ ਚਲਾਓ ਅ ਉਂਗੋ ਨਾ ਹੁਣ ਸਮਾਂ ਉਹ ਨਹੀਂ ਰਿਹਾ ਥੋੜਾ ਜਿਹਾ ਅੱਖਾਂ ਖੋਲ ਕੇ ਰਿਆ ਕਰਵਾਲ ਦਾ ਨੇ ਜਦ ਖਾਸ ਤੌਰ ਤੇ ਜਾਣੇ ਹੋ ਕਿਤੇ ਜਿੱਥੇ ਤੁਹਾਡਾ ਵੱਧ ਇਕੱਠ ਹੈ ਘਟ ਗਣ ਤੇ ਉੱਥੇ ਥੋੜਾ ਜਿਹਾ ਅਲਰਟ ਰਹੋ ਤੇ ਇਸ ਚੀਜ਼ ਦਾ ਖਿਆਲ ਰੱਖੋ ਇਕਾਲਰ ਨੇ ਗੱਲ ਕਰਨੀ ਚਾਹੁੰਦੇ ਮਨਦੀਪ ਸਿੰਘ ਜੀ ਲਾਈਨ ਨੰਬਰ 3 ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਨਦੀਪ ਹੋਰਿਆਂ ਜੀ ਮੈਂ ਪ੍ਰਿੰਸ ਜੋਰਜ ਤੋਂ ਪਹਿਲੀ ਵਾਰੀ ਕਾਲ ਕਰ ਰਹੀ ਹਾਂ ਤੁਹਾਡੇ ਸ਼ੋਅ 'ਚ ਧੰਨਵਾਦ ਜੀ ਬਾਈ ਜੀ ਥੈਂਕ ਯੂ ਸੋ ਮੱਚ ਜੀ ਹੁਣੇ ਖਬਰ ਮੈਂ ਦੇਖੀ ਆ ਕਿ ਆਪਾਂ ਹਨੇਰੀ ਤੋਂ ਪਹਿਲਾਂ ਜਿਹੜੇ ਵੱਡੇ ਤਾਂ ਕਹਿੰਦੇ ਸੀ ਹਨੇਰੀ ਤੇ ਆਉਣ ਨਾਲ ਡਿੱਗਣਗੇ ਬਾਦਲ ਸਾਹਿਬ ਦੀ ਤੁਸੀਂ ਸ਼ਾ ਡਾਡੀਓ ਛੋਣੀ ਹੋਣੀ ਆ ਜੀ ਮੈਂ ਕਰਦੇ ਦੀ ਅ ਸੁਣੀ ਆ ਜੀ ਸੁਨੇਹਾ ਦੀ ਉਹ ਚੱਲ ਰਹੀ ਆ ਤੇ ਉਹ ਕਿਸੇ ਲੋਕਲ ਆਪਣੇ ਮੁੰਡੇ ਨੂੰ ਮਨਾਉਣ ਦਾ ਯਤਨ ਕਰ ਰਹੇ ਨੇ ਮਿੱਠੂ ਖੇੜੇ ਦੇ ਨੇੜੇ ਉਹਨਾਂ ਦਾ ਸੁਭਾਅ ਜੀ ਇਸ ਤਰ੍ਹਾਂ ਨਰਮ ਹੋ ਕੇ ਸਰਦਾਰ ਜੀ ਕਾਕਾ ਜੀ ਕਹੇ ਕਿ ਬੋਲਦੇ ਆ ساری ਜ਼ਿੰਦਗੀ ਐਵੇਂ ਹੀ ਬੋਲਦੇ ਰਹੇ ਆ ਮੈਨੂੰ ਲੱਗਦਾ ਖਤਰਨਾਕ ਆ ਰਹੇ ਆ ਜਿਹੜੇ ਉਹਨਾਂ ਦੇ ਸ਼ਬਦ ਨੇ ਸਰਦਾਰ ਜੀ ਉਹ ਇਹੀ ਨੇ ਕਿ ਮੇਰੀ ਇੱਜ਼ਤ ਦਾ ਸਵਾਲ ਆ ਮੇਰੀ ਜ਼ਾਤ ਦਾ ਸਵਾਲ ਹਾਂਜੀ ਤੇ ਇਹ ਗੱਲ ਅੱਗੇ ਸਰਾਰ ਨੇ ਨਾ ਸਰਾਰ ਬਾਦਲ ਨੇ ਨਾ ਸ਼ਾਇਦ ਕਹੀ ਹੋਵੇ ਪਰ ਔਰ ਵੈਸੇ ਉਹ ਕਹਿੰਦੇ ਸਰਦਾਰ ਜੀ ਉਹਨੇ ਤੇ ਕਾਕਾ ਜੀ ਕਹਿੰਦੇ ਸਰਦਾਰ ਜੀ ਕਹਿੰਦੇ ਨੇ ਕਹਿੰਦੇ ਬੰਦਾ ਛੇਤੀ ਉੱਲਡ ਦਾ ਸਾਲ ਹੱਥ ਰੱਖਣ ਹੱਥ ਰੱਖ ਠੀਕ ਆ ਤੂੰ ਕਾਕਾ ਜੀ ਠੀਕ ਹੈ ਸੰਦੇਹਾ ਦੀ ਅੱਜ ਪਤਾ ਨਹੀਂ 40 ਕ ਕਿਸੇ ਨੇ ਭੇਜੀ ਆ ਜੀ ਤੇ ਉਹਦੇ ਤੋਂ ਹਾਲੇ ਵੀ ਨਹੀਂ ਇਹ ਕਹਿ ਸਕਦੇ ਕਿ ਜਿੱਤ ਸਾਹਮਣੇ ਪਈ ਐ ਕੁਛ ਨਹੀਂ ਪਤਾ ਹਾਲੇ ਵੀ ਦਿਨ ਤਿੰਨ ਰਹਿੰਦੇ ਆ ਵੋਟਾਂ ਪਈਆਂ ਤੇ ਮਾਰਚ ਦੇ ਰਿਜ਼ਲਟ ਤੋਂ ਬਾਅਦ ਫਿਰ ਗੱਲ ਕਰ ਸਕਦੇ ਹਾਂ ਹਲੇ ਇੱਕ ਪਾਸੜ ਗੱਲ ਕਰਦੀ ਏ ਦੇ ਸਵਾਦੀ ਨਾ ਹੋ ਜਵੇ ਕਈ ਵਾਰ ਕੁਝ ਨਹੀਂ ਪਤਾ ਹੁੰਦਾ ਜਿੱਤ ਹਾਰਾਂ ਤਾਂ ਪਰਬਤ ਦੀ ਦੇ ਹੱਥ ਨੇ ਪਰ ਗੱਲ ਇਹ ਕਹਵੇ 50 ਸਾਲ ਦੀ ਲੈਗਸੀ ਇੱਕ ਬੰਦੇ ਦੀ 50 ਸਾਲਾਂ ਦੀ ਰਾਜਨੀਤੀ ਤੇ ਪੰਜ ਵਾਰ ਸੀਐਮ ਉਹਨੂੰ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਇਸ ਜਗ੍ਹਾ ਤੇ ਖੜਾਉਣ ਵਾਲਾ ਕੌਣ ਹੈ ਇਹਦੇ ਬਾਰੇ ਸੋਚਣ ਦੀ ਜ਼ਰੂਰਤ ਹੈ ਕਿ ਕਿਨੇ ਇੱਥੇ ਖੜਾਇਆ ਕਿਸੇ ਨੇ ਕੀ ਸਰਦਾਰ ਉਹਦੇ ਬਾਦਲ ਦੀਆਂ ਗਲਤੀਆਂ ਨੇ ਇਹ ਜਾਂ ਕਿਸੇ ਹੋਰ ਦੀਆਂ ਗਲਤੀਆਂ ਅੱਜ ਕਹਿੰਦੇ ਉਹਨੇ ਓਖਲ ਪੁੱਤ ਨਾ ਜੰਮੀ ਧੀ ਚੰਗੀ ਕਹਾਣੀ ਵਪਾਰਕ ਸੰਦੇਸ਼ ਸਿਹਤ ਦਾ ਖਿਆਲ ਰੱਖੋ ਸਿਹਤ ਦਾ ਖਿਆਲ ਰੱਖੋ ਕੰਨ ਖੋਲ ਕੇ ਸੁਣੋ ਅਖੀਰ ਇਹੀ ਨਿਬੜੀਆਂ ਨਾਲ ਜਦ ਬਿਮਾਰੀ ਜਕੜ ਲੈਂਦੀ ਆ ਸਰੀਰ ਨੂੰ ਕੋਈ ਕਿਸੇ ਦੇ ਦਰਦ ਦੀ ਜਗਾ ਨਹੀਂ ਲੈ ਸਕਦਾ ਇਨਸਾਨ ਨੂੰ ਖੁਦ ਚੱਲਣੀ ਪੈਂਦੀ ਆ ਤਕੜੇ ਰਹੋ ਸਾਵੇਂ ਰਹੋ ਗਰੋਸਰੀ ਵਧੀਆ ਖਰੀਦੋ ਇਨਟੇਕ ਵਧੀਆ ਰੱਖੋ ਕਾਰਚ ਸਿੰਥੈਟਿਕ ਔਇਲ ਪੋਣਿਓ ਆਪਣੇ ਲਈ ਕੱਢ ਕੇ ਫ੍ਰੀਜਾਂ ਚੋਂ ਲਾ ਲਾ ਤੜਕੇ ਚਾਰ-ਚਾਰ ਦਿਨ ਸਬਜ਼ੀਆਂ ਖਾਈ ਜਾਂਦੇ ਹੋ ਇਹਦੇ ਨਾਲ ਤਾਂ ਸਬਜ਼ਾ ਖਾ ਲੋ ਵੱਢ ਕੇ ਹਰੀਆਂ ਸਬਜ਼ੀਆਂ ਜਦਈ ਮੜੀਆਂ ਸਟੀਮ ਕਰਕੇ ਲੂਣ ਭੁੱਕ ਕੇ ਕਾਲੀ ਮਿਰਚ ਉਹਨੂੰ ਛਕ ਦਿਓ ਨਾਲ ਥੋੜੀ ਜੀ ਪ੍ਰੋਟੀਨ ਲੈ ਲਓ ਸੈਲਡ ਲੱਖੋ ਸੈਲਟ ਜਿਹੜੇ ਪੰਜਾਬੀਆਂ ਦਾ ਕਹਿਣਾ ਇੱਕ ਸੂਪ ਜਿਹੜਾ ਵਧੀਆ ਜੀ ਪੰਜਾਬੀ ਸੂਫ ਕਹਿੰਦੇ ਐ ਐਫਐਫਏ ਨਾਲ 치즈 ਉਹਨਾਂ ਨੂੰ ਵੀ ਉਹਦਾ ਥੋੜਾ ਜਿਹਾ ਘੱਟ ਕਰੋ ਆ ਜਿਹੜਾ ਹੋਰ ਸਮਾਨ ਜਿਹੜਾ ਵਧੀਆ ਖਰੀਦੋ ਕਿਤੋਂ ਪੀਜ਼ਾ ਵਗੈਰਾ ਖਾਣ ਨੂੰ ਜੀ ਕਰਦਾ ਉਹ ਤੋਂ ਪਤਾ ਕਰੋ ਜਿਹੜਾ ਵਧੀਆ ਕੋਈ ਪ੍ਰੋਸੈਸਡ ਚੀਜ਼ ਨਹੀਂ ਵਰਤਦਾ ਵਧੀਆ ਚੀਜ਼ ਵਰਤਦਾ ਤੇ ਵੈਜੀਟੇਰੀਅਨ ਖਾਣੇ ਖਾਓ ਵੱਧ ਤੋਂ ਵੱਧ ਮੈਂ ਤਾਂ ਉੱਥੇ ਨੂੰ ਆਪਾਂ ਪਾਣੀ ਨੂੰ ਤੇ ਹਵਾ ਨੂੰ ਰੋਨੇ ਆ ਕਿ ਕੈਂਸਰ ਬਹੁਤ ਹੈ ਇੱਥੇ ਵੀ ਕੈਂਸਰ ਬਹੁਤ ਵਧ ਗਿਆ ਬਹੁਤ ਕੈਂਸਰ ਦੀਆਂ ਕੈਂਸਰ ਦੇ ਕੇਸ ਹੋ ਰਹੇ ਨੇ ਛਾਲ ਰੱਖੋ ਮੇਰੇ ਖਾਲ ਵੈਜੀਟੇਰੀਅਨ ਫੂਡ ਸਭ ਤੋਂ ਵਧੀਆ ਫੂਡ ਹੈ ਕੁਝ ਨਹੀਂ ਹੈ ਦੱਬ ਨਿੱਤ ਦੇ ਦੇਵੀ ਮੁਰਗਾ ਹੀ ਤਕੜਾ ਕਰੂ ਜਾਂ ਵੀ ਫਈ ਹੁਣ ਤਾਂ ਪੰਜਾਬੀਆਂ ਨੂੰ ਬਹੁਤ ਮੇਰੇ ਅਰਗਾ ਜਿਹੜਾ ਟੁੱਕ ਤੇ ਡੇਲਾ ਛਕਦਾ ਆ ਬੱਟ ਤੇ ਬੈਠ ਕੇ ਉਹਨੂੰ ਕਹਿੰਦਾ ਕੀ ਖਾਣ ਨੂੰ ਕਹਿੰਦਾ ਸਟੇਕ ਸਟੇਕਾਂ ਤੋਂ ਬਿਨਾ ਸਰੀਰ ਮੇਰਾ ਕਿੱਥੇ ਖੜਦਾ ਹੈ ਕਾਨੂੰ ਖੜਦਾ ਸਟੇਕਾਂ ਤੋਂ ਸਟੇਕਾਂ ਖਾ ਕੇ ਜੰਮੇ ਆਪਾਂ ਉੱਥੇ ਸਟੇਕਾਂ ਤੋਂ ਕਿੱਥੇ ਉਹ ਵੀ ਕਹਿੰਦਾ ਹਾਫ ਡਨ ਬਲੱਡੀ ਜੀ ਹੋਵੇ ਬੱਲੇ ਨਾਲ ਕਹਿੰਦਾ ਫਿਰ ਵੈਨ ਹੋਵੇ ਕਾਨੂੰ ਰੱਬ ਜਾਦਾ ਹੈ 6045835030 ਖੱਟੀ ਲੱਸੀ ਦਾ ਜਦ ਕੋਲਾ ਅੰਦਰ ਸਿੱਟੀ ਦਾ ਦੀ ਲੂਣ ਢੋਲ ਕੇ ਕਹਿੰਦਾ ਵਾਹਿਗੁਰੂ ਸੁੱਖ ਰੱਖੀ ਹੁਣ ਕਹਿੰਦਾ ਵੀ ਅਸੀਂ ਵਾਈਨ ਪੀਨੇ ਆਂ you know 604593 5030 eh number hai advanced genomics da 4 inna di location hai at birdnview sri te toronto de vich brampton 6045935030 nisha dogra ji da eh number hai te naal cd attack body and paint 649401080 ICBC ਦੇ ਐਸਪੈਸ਼ਾਪ ਤੇ ਐਕਸਪ੍ਰੈਸ ਕਲਾਸ ਆਫ ਟਰੱਕਾਂ ਤੇ ਨਾਇ ਰਿਪੇਅਰ ਤੇ ਬੋਡੀ ਵਰਕ ਦਾ ਕੰਮ ਹੈ ਵੱਡੇ ਟਰੱਕ ਵੱਡੀ ਫੈਸਿਲਿਟੀ ਚ ਜਾ ਖੜਦੇ ਆ ਤੇ ਉਹਨਾਂ ਦਾ ਬੋਡੀ ਵਰਕ ਹੋਵੇ ਪੇਂਟ ਹੋਵੇ ਬਸਾਂ ਕਰ ਲੋ ਰੈਡੀ ਹੁਣ ਬੇਰੀ ਆਉਣ ਵਾਲੀਆ 2-3 ਮਹੀਨੇ ਤੱਕ ਪਰ ਸਵਾਰ ਕੇ ਬਸਾਂ ਹੁਣ ਸਾਡੇ ਬਜ਼ੁਰਗ ਲੱਦ ਕੇ ਲਜਾਣੇ ਉਹ ਠੱਬਲ ਠੋਲਿਆਂ ਚ ਸਿੱੜਦੇ ਹੋ ਵੇਖਿਓ ਜੇ ਕੋਈ ਬਜ਼ੁਰਗ ਡਿਗੜ ਕੇ ਹੋ ਗਿਆ ਰਾਹ ਦੇ ਵਿੱਚ ਦੂਜੇ ਦਿਨ ਫੇਰ ਰੌਲਾ ਪਊ ਤਾਂ ਜਿਹੜੀ ਕਰੀਮ ਲਾਉਂਦੇ ਆ ਨਾ ਠੇਕੇਦਾਰ ਮਾਣ ਨਾਲ ਲੈ ਕੇ ਜਾਓ ਮਾਣ ਨਾਲ ਛੱਡ ਕੇ ਆਓ ਬੱਸਾਂ ਵਧੀਆ ਲਓ 604 940 1080 ਏਰੀਏਟ ਰਕ ਬਾਡੀ ਐਂਡ ਪੇਂਟ ਖਬਰਾਂ ਦੀ ਗੱਲ ਦੁਨੀਆ ਦੇ ਵਿੱਚੋਂ ਕਰਾਂ ਜੀ ਡੋਨਲਡ ਟਰੰਪ ਦੇ ਦੇਸ਼ ਦੇ ਵਿੱਚ ਹੁਣ ਸੁਪਰੀਮ ਕੋਰਟ ਦੇ ਜੱਜ ਉਸਨੇ ਚੁਣਨੇ ਨੇ ਉਸ ਪੈਨਲ ਦੇ ਵਿੱਚ ਆਪਣੇ ਬੰਦੇ ਉਸਨੇ ਫਿੱਟ ਕਰਨੇ ਆ ਦੇ ਨਾਲ ਹੀ ਜਿਹੜਾ ਬੈਨ ਹੈ ਉਸ ਦੀਆਂ ਗੱਲਾਂ ਬਹੁਤ ਚੱਲ ਰਹੀਆਂ ਨੇ ਇਹ ਵੈਨ ਬੈਨ ਰਹਿਣਾ ਕੀ ਕਹਾਣੀ ਹੋਊ ਇਹਦੇ ਤੋਂ ਜਿਹੜੇ ਹੋਰ ਚਿੱਟੇ ਰੰਗ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੀਆਂ ਜਥੇਬੰਦੀਆਂ ਉਹਨਾਂ ਨੇ ਚਲਾਈਆਂ ਹੋਈਆਂ ਉਹ ਵੀ ਹੁਣ ਖੁੱਲ ਕੇ ਨਿੱਤਰ ਕੇ ਸਾਹਮਣੇ ਆਏ ਨੇ ਵੀ ਠੀਕ ਕੀਤਾ ਜਿਹੜਾ ਇਹਨੇ ਕੀਤਾ ਇਹ ਸੱਚ ਹੈ ਠੀਕ ਹੈ ਤੁਸੀਂ ਇਉਂ ਨਾ ਕਹੋ ਵੀ ਅਤਵਾਦ ਦਾ ਡਰ ਕਰਕੇ ਵੈਨ ਕਰੋ ਪਰ ਜੇ ਤੁਹਾਡੇ ਦਿਲ ਦੇ ਵਿੱਚ ਇਹ ਕਹਾਣੀ ਹੈ ਕਿ ਦੇਸ਼ ਹੀ ਅਸੀਂ ਚਿੱਟਿਆਂ ਦਾ ਬਣਾਉਣਾ ਉਹ ਪੋਸੀਬਲ ਨਹੀਂ ਹੈ ਚਿੱਟੇ ਰੰਗਾਂ ਨੇ ਸਲੀਨਸ ਦੇ ਵਿੱਚ ਤੇ ਕੈਲੀਫੋਰਨੀਆ ਦੇ ਵਿੱਚ ਬਾਦਾਮ ਨਹੀਂ ਤੋੜਨੇ ਤੇ ਨਾ ਹੀ ਉੱਥੇ ਖੇਤੀ ਕਰਨੀ ਹੈ ਨਾ ਹੀ ਚਿੱਟੇ ਰੰਗਾਂ ਤੋਂ ਠੰਡ یخ ਕੋਲ ਸਟੋਰੇਜ ਦੇ ਵਿੱਚ ਪ੍ਰੋਡਿਊਸ ਲੱਦ ਹੋਣਾ ਇਹ ਤਾਂ ਜਿਹੜੇ ਉੱਥੋਂ ਆਉਂਦੇ ਆ ਉਹਨਾਂ ਨੇ ਇਹ ਦੇਸ਼ ਬਾਗੋ ਬਾਗ ਕੀਤੇ ਆ ਜਿਹੜੇ ਸਵੇਰ ਦੇ ਚੜੇ ਹੋਏ ਟਰੱਕਾਂ ਤੇ ਰਾਤ ਨੂੰ 12-12 1-1 ਵਜੇ ਖੜਾਉਂਦੇ ਆ ਇਹ ਉਸ ਏਸ਼ੀਆ ਚੋਂ ਆਏ ਹੋਏ ਲੋਕ ਨੇ ਯਸ ਜੇ ਕਿਤੋਂ ਨੁਕਸ ਹੈ ਸਕਰੀਨਿੰਗ ਤੁਹਾਡੀ ਬਹੁਤ ਹੈ ਪਰ ਗੱਲ ਇਹ ਹੋ ਗਈ ਜੀ ਉੱਥੇ ਖੜ ਗਈ ਆ ਕੇ ਵੀ ਦੇਸ਼ ਦਾ ਮਾਲਕ ਹੈ ਦੇਸ਼ ਦੀ ਉੱਚੀ ਜਗ੍ਹਾ ਤੇ ਬੈਠਾ ਉਹ ਡਿਸਾਈਡ ਕਰੂਗਾ ਉਹਦੇ ਦੇਸ਼ ਚ ਕੀ ਨੇ ਜਿਵੇਂ ਆਪਾਂ ਆਪਣੇ ਘਰ ਦੇ ਮਾਲਕਾਂ ਆਪਾਂ ਡਿਸਾਈਡ ਕਰਾਂਗੇ ਮੇਰੇ ਘਰ ਦੇ ਅੰਦਰ ਕੌਣ ਵੜ ਸਕਦਾ ਗੱਲ ਇੱਥੇ ਆ ਕੇ ਖੜ ਗਈ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਹੱਕ 'ਚ ਹੋ ਗਏ ਲੋਕ ਆ ਜਿਹੜਾ ਰੌਲਾ ਗੌਲਾ ਪੈਂਦਾ 5-7 ਦਿਨਾਂ ਦੇ ਵਿੱਚ ਟਿਕ ਜਾਣਾ ਜਿਹੜੀ ਉਹਨੇ ਲਕੀਰ ਕੱਢਤੀ ਹੁਣ ਉਹਨੇ ਪਿੱਛੇ ਨਹੀਂ ਮੁੜਨਾ 90 ਦਿਨ ਦਾ ਬੈਨ ਅੱਗੇ ਕਿੰਨਾ ਚੱਲੂ ਕਹਿੰਦਾ ਮੈਂ ਹੋਰ ਕੰਟਰੀਆਂ ਵੀ ਇਹਦੇ ਵਿੱਚ ਪਾਉਣੀ ਨਾਲ ਉਹ ਕਹਿ ਰਿਹਾ 45 ਦੇਸ਼ ਨੇ 45ਾਂ ਦੇ ਵਿੱਚੋਂ ਮੈਂ ਤਾਂ 7 ਹੀ ਰੱਖੇ ਆ ਮੁਸਲਮ ਦੇਸ਼ ਬਹੁਤ ਨੇ ਮੰਨ ਨਹੀਂ ਰਿਹਾ ਇਵਨ ਦੇਖੋ ਰੇਸ ਸੀਜ਼ਨ ਤਾਂ ਹੈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਇੱਕ ਜਰਨਲਿਸਟ ਆ ਜਿਹੜਾ ਇੱਥੇ ਦਾ ਨਹੀਂ ਉਹਨੂੰ ਸਵਾਲ ਨਹੀਂ ਪੁੱਛਣ ਦੇ ਰਿਹਾ ਵੀਡੀਓ ਕਿਸੇ ਨੇ ਭੇਜੀ ਹੋਊਗਾ ਨਾ ਤੂੰ ਨਹੀਂ ਪੁੱਛ ਸਕਦਾ ਇਹ ਜਿਹੜੀਆਂ ਗੱਲਾਂ ਜਾਂ ਚੜ੍ਹਦੀ ਜਵਾਨੀ ਵੇਲੇ ਅਪਾਰਟਮੈਂਟ ਦੇ ਵਿੱਚ ਕੋਈ ਸਿਆ ਰੰਗ ਦਾ ਬੰਦਾ ਨਹੀਂ ਰਹਿ ਸਕਦਾ ਅੱਜ ਵੀ ਕਹਾਣੀ ਨਹੀਂ ਹੈ ਕਹਾਣੀ ਹੁਣ ਪਾਵਰ ਵੱਡੀ ਹੋ ਗਈ ਹੁਣ ਮਨਮਰਜ਼ੀ ਵਾਲੀ ਕਹਾਣੀ ਹੈ ਤੇ ਉਹਦੇ ਪਿੱਛੇ ਉਦੇ ਕੋਲ ਨੁਕਤਾ ਇਹ ਹੱਥ ਚ ਆਇਆ ਵੀ ਇਹ ਲੋਕ ਆ ਕੇ ਸਾਡੇ ਤੇ ਹਮਲਾ ਕਰਦੇ ਨੇ ਮੈਂ ਨਹੀਂ ਆਉਣ ਦੇਣਾ ਮੇਰੇ ਬੰਦਿਆਂ ਕੋਲ ਕੰਮ ਹੈ ਨਹੀਂ ਮੈਂ ਨਹੀਂ ਇਹ ਆਉਣ ਦੇਣਾ ਉਹ ਅਮਰੀਕਨ ਲੋਕਾਂ ਦੇ ਹੱਕ ਚ ਗੱਲ ਬਹਿ ਗਈ ਕੋਈ ਵੀ ਨਹੀਂ ਚਾਹੁੰਦਾ ਉਹਨਾਂ ਦੀ ਧਰਤੀ ਤੇ ਆ ਕੇ ਕੋਈ ਹਮਲਾ ਕਰੇ ਪਰ ਅੰਕੜੇ ਜਿਹੜੇ ਨੇ ਉਹ ਠੀਕ ਨਹੀਂ ਦਰਸਾਉਂਦੇ ਇਹਨਾਂ ਦੇਸ਼ਾਂ 'ਚ ਆ ਕੇ ਕਿਸੇ ਨੇ ਨਹੀਂ ਹਮਲਾ ਕੀਤਾ ਜਿਹੜੇ ਦੇਸ਼ਾਂ 'ਚ ਆ ਕੇ ਹਮਲਾ ਕੀਤਾ ਹੈ ਉਹਨਾਂ ਨਾਲ ਯਾਰੀ ਹੈ ਤੁਹਾਡੀ ਹਥਿਆਰਾਂ ਦੀ ਸਾਂਝ ਹੈ ਹਥਿਆਰ ਤੁਸੀਂ ਇਕਾਈਸਿਸ ਨੂੰ ਵੇਚਦਾ ਹੈ ਇਕਾਈਸਿਸ ਦੇ ਖਿਲਾਫ ਵਾਲਿਆਂ ਨੂੰ ਵੇਚਦਾ ਹੋ ਸਕਦਾ ਸਾਊਦੀ ਅਰਬ ਚੋਂ ਘੁੰਮ ਕੇ ਥੋਡੇ ਵਾਲੇ ਵਾਪਸ ਆ ਜਾਣ ਥੋਡੇ ਵਾਲੇ ਹੰਮਰ ਭੁਜਾਈ ਫਿਰਦੇ ਆ ਇਸੇ ਸਾੜੇ ਇਹ ਨਹੀਂ ਇਹ ਗੱਲ ਲੋਕਾਂ ਦੇ ਹਲਕ ਦੇ ਥੱਲੇ ਨਹੀਂ ਜਾਂਦੀ ਕਿ ਡਬਲ ਸਟੈਂਡਰਡ ਆ ਇਹ ਖਰਾਬ ਕਰੂ ਪਰ ਬਹੁਤਾਤ ਚ ਲੋਕ ਦੱਬੀ ਸੁਰ ਦੇ ਵਿੱਚ ਇਸ ਗੱਲ ਨੂੰ ਵਧੀਆ ਕਹਿ ਰਹੇ ਨੇ ਕਿ ਸਾਨੂੰ ਕੰਮ ਮਿਲੂਗਾ denn ਬਹੁਤ ਵਧੀਆ ਆਤਮਾ ਬੁੱਢੇ ਵਾਲੀਆ ਸੁਣਨਾ ਚਾਹੀਦਾ ਅੱਜ ਪੰਜਾਬ ਤੋਂ ਖਬਰਾਂ ਆ ਰਹੀਆਂ ਜੀ ਮੋੜ ਮੰਡੀ ਦੇ ਵਿੱਚ ਕਾਂਗਰਸ ਦੀ ਇੱਕ ਰੈਲੀ ਜਿਸ ਨੂੰ ਹਰਮਿੰਦਰ ਜੱਸੀ ਜਿਹੜਾ ਸੌਦੇ ਸਾਧ ਦਾ ਨੇੜੇ ਦਾ ਰਿਸ਼ਤੇਦਾਰ ਹੈ ਉੱਥੇ ਇੱਕ ਮਰੂਤੀ ਗੱਡੀ ਖੜੀ ਉਹਦੇ ਵਿੱਚ ਬਲਾਸਟ ਹੋਇਆ ਬਲਾਸਟ ਨਾਲ ਜਣੇ ਮਾਰੇ ਗਏ ਨੇ ਪ੍ਰੈਸ਼ਰ ਕੁੱਕਰ ਤੇ ਗੁੱਲ ਮੇਖਾਂ ਉਥੋਂ ਲੱਭੀਆਂ ਵੋਟਰਾਂ ਦੇ ਵਿੱਚ ਦਿਨ ਰਹਿ ਗਏ ਇੱਕ ਤਰੀਕ ਉਥੇ ਹੋ ਗਈ 1 ਫਰਵਰੀ ਦਿਨ ਰਹਿ ਗਏ 3 ਤੇ ਇਹੋ ਜਿਹਾ ਕੁਸ਼ਾ ਜਿਹੜਾ ਇਹ ਕਈ ਵਾਰ ਖਤਰੇ ਦੀ ਘੰਟੀ ਹੈ ਪਰ ਲੱਗਦਾ ਨੀ ਜਿਹੜੇ حساب ਦੇ ਨਾਲ ਸਾਰਾ ਕੁਝ ਚੱਲ ਰਿਹਾ ਹੈ ਕਿ ਸਰਕਾਰ ਦੇ ਹੱਥ ਹੈ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਹੈ ਪਿਛਲੇ ਦਿਨੀ ਕੇਜਰੀਵਾਲ ਦਾ ਕਲਕੱਤਾ ਦੇ ਵਿੱਚ ਰਹਿਣਾ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ ਵੀਪੀ ਸੰਝਾ ਤੇ ਸੁਖਵੀਰ ਬਾਦਲ ਦੀ ਇੱਕ ਇੰਟਰਵਿਊ ਹੈ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਜਿਨ੍ਹਾਂ ਨੂੰ ਮੈਂ ਜੇਲ੍ਹ 'ਚ ਡੱਕ ਕੇ ਜਿਨ੍ਹਾਂ ਨੂੰ ਰੱਖਿਆ ਅਸੀਂ 20 ਸਾਲ ਹੋ ਗਏ ਜਿਨ੍ਹਾਂ ਨੂੰ ਅਸੀਂ ਅੰਦਰ ਰੱਖਿਆ ਨਾ ਜਿਹੜੇ ਬੰਦਿਆਂ ਨੇ 20 ਸਾਲ ਪੰਜਾਬ ਦੇ ਮੋਹ ਸ਼ਾਂਤੀ ਭੰਗ ਕੀਤੀ ਤੇ ਜਿਨ੍ਹਾਂ ਨੂੰ ਮੈਂ ਜੇਲ੍ਹ 'ਚ ਰੱਖਿਆ ਉਹਨਾਂ ਨਾਲ ਕੀ ਰਹਿੰਦਾ ਤੇ ਬੱਬਰ ਖਾਲਸਾ ਸਵੇਰੇ ਬ੍ਰੈਕਫਾਸਟ ਕਰਦਾ ਹੈ ਤੇ ਸਿਰਫ ਅਖੰਡ ਕੀਰਤਨੀ ਦੇ ਜਥਿਆਂ ਦੇ ਨਾਲ ਸਵੇਰ ਦਾ ਉਹਦੇ ਲੰਗਰ ਛਕਣ ਨੂੰ ਕਹਿ ਰਿਹਾ ਜਿਹੜਾ ਬੰਦਾ ਬਰੀ ਹੈ ਉਸ ਕੋਲ ਰਹਿਣ ਨੂੰ ਕਹਿ ਰਿਹਾ ਤੇ ਇਹਦੇ ਵਿੱਚ ਹੁਣ ਸਮਝ ਨਹੀਂ ਆਉਂਦੀ ਉਹ ਮੂਰੇ ਸਵਾਲ ਉਹ ਪੁੱਛ ਰਿਹਾ ਵੀ 25 ਧਾਰਾ ਕੀ ਨੇ ਸਾੜੀ ਤੇ ਭੋਗਾਂ ਤੇ ਕੌਣ ਜਾਂਦਾ ਰਿਹਾ ਆਮ ਆਦਮੀ ਪਾਰਟੀ ਵਾਲੇ ਇਹ ਕਹਿ ਰਹੇ ਨੇ ਉਸ ਜਵਾਬ ਨਹੀਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਨਸ਼ੇ ਦੀ ਗੱਲ ਕੀਤੀ ਨਸ਼ੇ ਕਹਿੰਦਾ ਪੰਜਾਬ ਦੇ ਵਿੱਚ ਨਸ਼ਾ ਹੈ ਨਹੀਂ ਪੰਜਾਬ ਦਾ ਨਸ਼ਾ ਤਾਂ ਮੈਂ ਅਸੀਂ ਤਾਂ ਘੇਰਦੇ ਆਂ ਪੰਜਾਬ 'ਚ ਜਾਣ ਨੂੰ ਜਿੰਨਾ ਪੰਜਾਬ 'ਚ ਨਸ਼ਾ ਉਹ ਜਾਈ ਦਿੱਲੀ 'ਚ ਕਹਿੰਦਾ ਇਤੋਂ ਕੰਮ ਹੈ ਘਟ ਹੈ ਪੇਗਾਂ ਦਿੱਲੀ ਚ ਵੱਧ ਆ ਕੈਨੇਡਾ ਚ ਵੀ ਆ ਅਮਰੀਕਾ ਚ ਵੀ ਆ ਨਸ਼ਾ ਸਾਰੇ ਆ ਠੀਕ ਆ ਨਸ਼ਾ ਸਾਰੇ ਆ ਦੁਨੀਆ ਇੱਥੇ ਵੀ ਮਰ ਰਹੀ ਮਜੀਠੀਆ ਕਰਾਂਗੇ ਮਜੀਠੀਆ ਬਾਅਦ ਕੋਈ ਗੱਲ ਹਾਲਾਂਕਿ ਐਫੀਡੈਵਿਟ ਦੇ ਵਿੱਚ ਸਾਰਾ ਕੁਝ ਬੰਦਿਆਂ ਨੇ ਦੱਸਿਆ ਸੀ ਕਿ ਕਿਨੇ ਕੀਹਦੇ ਨਾਲ ਗੱਲ ਕਰਾਈ ਪਰ ਸਟਿਲ ਜਿਹੜਾ ਬਰੀ ਕੀਤਾ ਹੈ ਬੰਦਾ ਉਸ ਨੂੰ ਤੁਸੀਂ ਦੋਸ਼ੀ ਨਹੀਂ ਮੰਨ ਸਕਦੇ ਜੇ ਆਪਾਂ ਇੱਥੇ ਜਾਂ ਹੁਣ ਉੱਥੇ ਜਿਹੜੇ ਘਰੇ ਗੁਰਿੰਦਰ ਸਿੰਘ ਦੇ ਮੁੰਡੇ ਦੇ ਰਹੇ ਸੀ ਉਸ ਨੂੰ ਬਰੀ ਕੀਤਾ ਹੋਇਆ ਡਬਲ ਗੱਲ ਨਹੀਂ ਉਹਦੇ ਕਰ ਸਕਦੇ ਗੱਲ ਸੇਮ ਹੋਣੀ ਚਾਹੀਦੀ ਹੈ ਪਰ ਕੀ ਜਿਹੜੇ ਬੰਦਿਆਂ ਨੂੰ ਅੰਦਰ ਕਰਨ ਦੀ ਗੱਲ ਚੱਲ ਰਹੀ ਹੈ ਜਿਨ੍ਹਾਂ ਨੂੰ ਅੰਦੇ ਰੱਖਣ ਦੀ ਗੱਲ ਚੱਲ ਰਹੀ ਹੈ ਇਹ ਪਰਿਵਾਰ ਸ਼ਾਇਦ ਕਿਸੇ ਦੇ ਕੋਲ अजीत ਸਾੰਭਿਆ ਪਿਆ ਹੋਵੇ ਜੀ ਵਿੱਚ ਭੋਗਾ ਤੇ ਪ੍ਰਕਾਸ਼ ਸਿੰਘ ਬਾਦਲੂ ਨੇ ਜਾਂਦੇ ਰਹੇ ਆ हां ਹੁਣ ਪੁੱਤ ਦਾ ਸੁਭਾਅ ਕੋਈ ਹੋਰ ਹੋ ਸਕਦਾ ਕਿਉਂਕਿ ਉਸ ਸਮੇਂ ਪੰਜਾਬ ਦੇ ਵਿੱਚ ਨਹੀਂ ਸੀ ਕੈਲੀਫੋਰਨੀਆ ਸੀ ਉਹਦੀ ਗੱਲ ਹੋਰ ਹੈ ਤੇ ਨਾਲ ਜਿਹੜੀ ਟੈਲੀਫੋਨ ਕਨਵਰਸੇਸ਼ਨ ਦੀ ਸਵੇਰ ਦੀ ਘੁੰਮ ਰਹੀ ਹੈ ਮਿੱਠੂ ਖੇੜੇ ਦੇ ਮੁੰਡੇ ਨਾਲ ਉਹਨੇ ਗੱਲ ਕੀਤੀ ਹੈ ਮੇਰੇ ਖਿਆਲ ਦੇਖੋ ਗੱਲ ਤਾਂ ਸੱਚੇ ਹੈ ਵੀ ਡੈਸਪਰੇਸ਼ਨ ਤਾਂ ਹੈ ਡੈਸਪਰੇਟ ਤਾਂ ਹੈ ਲੋ ਖਾਸ ਤੌਰ ਤੇ ਜੇ ਉਹਦੇ ਵਿੱਚ ਮੰਤਾਂ ਵਾਲੀ ਗੱਲ ਜਾਂ ਮਦਦ ਕਰਨ ਵਾਲੀ ਗੱਲ ਕਹੀ ਜਾਵੇ ਖਾਸ ਇਹ ਸਟਾਈਲ ਹੀ ਪ੍ਰਤਾਪ ਸਿੰਘ ਬਾਦਲ ਉਹਨਾਂ ਦਾ ਇਹੀ ਹੈ ਉਹ ਜਦ ਆਪਣਾ ਉਹਨਾਂ ਨੇ ਕੰਮ ਕਰਾਉਣਾ ਤੇ ਮੁੰਡਾ ਮੂਹਰੋਂ ਕਹਿ ਰਿਹਾ ਵੀ 5 ਸਾਲ ਮੈਂ ਜਿਹੜੇ ਕਰਦਾ ਰਿਹਾ ਤੇ ਤੁਹਾਡੇ ਲੀਡਰਾਂ ਨੇ ਅੰਕਲ ਜੀ ਮੇਰਾ ਖਹਿੜਾ ਨਹੀਂ ਮੈਨੂੰ ਨੇੜੇ ਨਹੀਂ ਲੱਗਣ ਦਿੱਤਾ ਉਹ ਕਹਿੰਦਾ ਸਾਰੀਆਂ ਭੁੱਲ ਜਾ ਹੁਣ ਮਦਈ ਬਣ ਜਾ ਮੇਰੀ ਇੱਜ਼ਤ ਦਾ ਸਵਾਲ ਹੈ ਮੇਰੀ ਜ਼ਾਤ ਦਾ ਸਵਾਲ ਹੈ ਤੇ ਸਿੱਧੇ ਹੁੱਕੇ ਕੰਮ ਕਰੋ ਪਰ ਲੋਕ ਆ ਹੋਏ ਬੈਠੇ ਉਹ ਮੁੰਡੇ ਨੇ ਕਨਵਰਸੇਸ਼ਨ ਰਿਕਾਰਡ ਕਰ ਲਈ ਤੇ ਉਹਨੇ ਪਾ ਦਿੱਤੀ ਇਹਦਾ ਮਤਲਬ ਉਹਨੇ ਮਦਦ ਨਹੀਂ ਕਰਨੀ ਉਹਨੇ ਤਾਂ ਖਲਾਰਾ ਪਾ ਦਿੱਤਾ ਵਾਰੀ ਇਹੀ ਆ ਨਾ 5 ਸਾਲ ਇਹ ਮੈਂ ਵੇਖਿਆ ਹੈ ਕਹਾਣੀ ਇਹ ਨੇੜੇ ਉਹ ਜਿਆਦਾ ਘਰਾਂ ਘਰਾਂ 'ਚ ਮੋਬਾਈਲ ਫੋਨ ਨਹੀਂ ਸੀ ਹੁੰਦੇ ਤਾਂ ਲੋਕਾਂ ਨੇ ਸਵੇਰੇ ਐਮਐਲਏ ਜਿਹੜੇ ਲੋਕਲ ਹੋਣੇ ਉਹਨਾਂ ਦੇ ਘਰਾਂ ਦੇ ਮੂਹਰੇ 90 92 ਦੇ ਵਿੱਚ ਜਦ ਬੰਦ ਹੋਇਆ ਇਹ ਮਾਰ ਕੇ ਜੱਟਾਂ ਨੇ ਖੰਟ ਦੇ ਵਿੱਚ ਧੁੰਦ ਦੇ ਵਿੱਚ ਖੜਨਾ ਜਾ ਕੇ ਸਵੇਰ ਦੇ ਆ ਤੇ ਫੇਰ ਗੱਲ ਉਹਨਾਂ ਜਾਓ ਪੈਲ ਨੂੰ ਆ ਜਾਓ ਤੁਸੀਂ ਆ ਜਾਓ ਆਲੇ-ਦਾਲੇ ਦੇ ਮੇਰੇ ਛੋਟੇ-ਛੋਟੇ ਸ਼ਹਿਰ ਨੇ ਲੋਕਾਂ ਨੇ ਸਵੇਰੇ ਦਰਾਂ ਤੇ ਖੜਿਆ ਨੇ ਉਕਣੇ ਭੁਕੇ ਬੁਕਲਾ ਜਿਹੜੀਆਂ ਮਾਰਨੀ ਆ ਸਾਈਕਲ ਚੱਕਣੇ ਅੱਧੇ ਦਰਾਹੇ ਅੱਧੇ ਪੈਲ ਅੱਧੇ ਰਾੜਾ ਸਾਹਿਬ ਇਹ ਗੱਡੀ ਅੰਬੈਸਡਰ ਤੇ ਬੰਦਿਆਂ ਨੇ ਬਹਿਣਾ ਨਾ ਪੈਲ ਨਾ ਰਾੜੇ ਦਾ ਦਰਾਹੇ ਖਤਮ ਦੂਜੇ ਦਿਨ ਸਵੇਰੇ ਫੇਰ ਆਏ ਨਹੀਂ ਉਹ ਜ਼ਰੂਰੀ ਕੰਮ ਪੈ ਗਿਆ ਸੀ ਚੰਡੀਗੜ੍ਹ ਨੂੰ ਜਾਣਾ ਸੀ ਅੱਜ ਚਲੋ ਇਹ ਤਾਂ ਜਲ 5 ਸਾਲ ਦਾ ਹੁਣ ਸਮਾਂ ਜਿਹਦੇ ਦਰਾਂ ਤੇ ਖੜਾਉਣੇ ਉਹਦੇ ਬਾਅਦ 5 ਸਾਲ ਨਹੀਂ ਲੱਭਦੇ ਇਹ ਭੁੱਲ ਜਾਓ ਤੁਸੀਂ ਉਹ ਟੈਲੀਫੋਨ ਦੀ ਗੱਲ ਦੇ ਵਿੱਚ ਉਹ ਮੁੰਡਾ ਮੁਰਮੁਰ ਕੇ ਆਕੀ ਹੋ ਕੇ ਕਹਿ ਰਿਹਾ ਇਹ ਮੈਂ ਬਹੁਤ ਗੇੜੇ ਕੱਢਿਆ ਤੁਸੀਂ ਨਹੀਂ ਮੇਰੀ ਬਾਤ ਪੁਣੀ ਕਿਉਂਕਿ ਜੱਥੇਦਾਰ ਬਣਾਤਾ ਉਹ ਸਿੱਕੇ ਟੰਗਣ ਵਾਲਾ ਕੋਈ ਮਿੱਠੂ ਖੇੜੇ ਪਿੰਡ ਦੀ ਉਹ ਗੱਲ ਦੱਸ ਰਿਹਾ ਮੁੰਡਾ ਤੇ ਨਹੀਂ ਸੁਣੀ ਗੱਲ ਦੇਖੋ ਜੇ ਲੋਕ ਜੇ ਕਿਸੇ ਦਾ ਸਵਾਰਿਆ ਹੋਵੇ ਉਹ ਤਾਂ ਖੈਰ ਨਾਲ ਖੜਿਆ ਜਿਨ੍ਹਾਂ ਦਾ ਸਵਾਰਿਆ ਉਹ ਨਹੀਂ ਹਿੱਲੇ ਜਿਨ੍ਹਾਂ ਜਿਹੜੇ ਰੱਬ ਮੰਨਦੇ ਆ ਜਿਨ੍ਹਾਂ ਦਾ ਕੰਮ ਹੋਇਆ ਉਹ ਨਾਲ ਨੇ ਪਰ ਆਮ ਲੋਕ ਸਦਾ ਜਨ ਸੁਧਾਰਨ ਬਾਗੀ ਕਿਉਂ ਹੋ ਗਿਆ ਇਹ ਗੱਲ ਜ਼ਰੂਰੀ ਹੈ ਉਹਨਾਂ ਦੀਆਂ 6-6 ਲੇਨਾਂ ਸੜਕਾਂ ਉਹਨਾਂ ਨੂੰ ਕਿਉਂ ਨਹੀਂ ਦਿਖਦੀਆਂ ਉਹਨਾਂ ਨੂੰ ਸੁਭ ਸੈਂਟਰ ਕਿਉਂ ਨਹੀਂ ਦਿਖਦੇ ਉਹਨਾਂ ਨੂੰ ਹੋਰ ਚੀਜ਼ਾਂ ਕਿਉਂ ਨਹੀਂ ਦਿਖਦੀਆਂ ਉਹਨਾਂ ਨੂੰ ਫਿਰ ਕੀ ਦਿਖਦਾ ਉਹ ਮੰਨਾ ਮੰਨਾ ਕੋਈ ਬੋਲਣ ਲੱਗਿਆ ਸੀ ਨਾ ਇੱਕ ਸਿੰਘ ਨੇ ਆ ਕੇ ਮਾਈਕ ਫੜ ਲਿਆ ਕੱਠ ਚ ਉਹ ਵੀ ਵੀਡੀਓ ਹੈ ਸਟੇਜ ਸੈਕਟਰੀ ਬੋਲ ਕੇ ਹਟਿਆ ਮੂਰੇ 20-30 ਬੰਦੇ ਬੈਠੇ ਆ ਬਈ ਮੰਨਾ ਜੀ ਬੋਲਣਗੇ ਜਦ ਮੰਨਾ ਜੀ ਖੜੇ ਹੋਏ ਬਰਾਬਰੋਂ ਕੁਰਤਾ ਪਿਆ ਪਾਇਆ ਬਾਹਰ ਦੀ ਗਾਤਰਾ ਪਾਇਆ ਆ ਕੇ ਉਹਨੇ ਮਾਈਕ ਫੜ ਲਿਆ ਕਾ ਉਹਨੇ ਬੇਅਦਬੀ ਦੀ ਜਆ ਸੁਣਾਈ ਕਹਿੰਦਾ ਮੈਂ ਉੱਥੇ ਸੀ ਭਾਉ ਆ ਉਹਨੇ ਦੱਸਿਆ ਵੀ ਕਹਿੰਦਾ ਸਾਡਾ ਇਸ਼ਟ ਜਾਂ ਚੋਰੀ ਹੋਇਆ ਸੀ ਰੌਲਾ ਪਾਇਆ ਤੇ ਉਹਦੇ ਬਾਅਦ ਉਹਦੇ ਅੰਗ 130 ਦੇ ਤਿੱਖ ਖੰਡਾ ਤੇ ਬਰਗਾੜੀ ਕਾਂਢ ਤੇ ਗੋਲੀਆਂ ਸਾਡੇ ਮਾਰੀਆਂ ਅੱਥਰੂ ਗਏ ਤੁਸੀਂ ਸਿੱਪੀ 40000 ਦੇ ਕੱਠ ਤੇ ਹੁਣ ਤੁਸੀਂ ਵੋਟਾਂ ਮੰਗਦੇ ਹੋ ਲੋਕ ਨਹੀਂ ਭੁੱਲ ਰਹੇ ਉਸ ਗੱਲ ਨੂੰ ਬੇਅਦਬੀ ਦਾ ਰੌਲਾ ਸਭ ਤੋਂ ਪਹਿਲਾਂ ਲੋਕ ਕਹਿੰਦੇ ਸਾਡਾ ਇਸ਼ਟੇ ਨਹੀਂ ਰਿਹਾ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਸਰਕਾਰਾਂ ਨੇ ਕਾਂਗਰਸ ਨੇ ਜਾਂ ਨਹੀਂ ਜੇ ਕਾਲੀਆਂ ਨੇ ਨਹੀਂ ਦਿੱਤਾ ਦਿੱਤਾ ਕਾਂਗਰਸ ਨੇ ਵੀ ਨਹੀਂ ਪਰ ਲੋਕ ਇਸ ਗੱਲ ਨੂੰ ਨਹੀਂ ਭੁੱਲ ਰਹੇ ਜਿਹੜਾ ਵਿਰੋਧ ਆ ਇਹ ਗੱਲ ਦਾ ਸਭ ਤੋਂ ਵੱਡਾ ਵਿਰੋਧ ਤੇ 50 ਸਾਲਾਂ ਦਾ ਕੀਤਾ ਹੋਇਆ ਕੰਮ 5 ਸਾਲ ਦੀ ਮੁੱਖ ਮੰਤਰੀ ਬਣੀ ਹੋਈ ਉਹ ਕਿੱਧਰ ਨੂੰ ਜਾ ਰਹੀ ਆ ਅਖੀਰ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਸਟਿਲ ਮੈਂ ਕਹਿੰਦਾ ਵੋਟਰ ਰਿਜ਼ਲਟ ਕੋਈ ਵੀ ਹੋ ਸਕਦਾ ਪਰ ਹਾਲਾਤ ਕਿਹੜੇ ਨੇ ਇਹ ਦੇਖੋ ਸਖਬੀਰ ਬੱਲ ਜੀ ਲਾਈਨ ਨੰਬਰ 2 ਅਸੀਂ ਗੱਲ ਗੱਲ ਸਾਹਿਬ ਸਤਿ ਸ਼ਕਾਲ ਜੀ ਬਾਈ ਜੀ ਆਪਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਵੇਖੋ ਆਪਾਂ ਕਿ ਤੁਸੀਂ ਕਿਹਾ ਸੀਗਾ ਕਿ ਪੰਜਾਬ ਤਸਵੀਰ ਬਾਦਲ ਸਾਭ ਦੇ ਕੀਤੇ ਕੰਮਾ ਕਰਕੇ ਹੋਇਆ ਵਾ ਵੀ ਅੱਜ ਲੱਗਦਾ ਤੁਹਾਨੂੰ ਵੀ ਸ਼ਾਇਦ ਸਖਬੀਰ ਬਾਦਲ ਦੇ ਕੀਤੇ ਕਰਕੇ ਇਹ ਸਾਰਾ ਕੁਝ ਹੋਇਆ ਪਰ ਆਪਾਂ ਬਾਦਲ ਸਾਹਿਬ ਨੂੰ ਭੁੱਲ ਜਾਨੇ ਆ ਕਿ ਸਭ ਤੋਂ ਪਹਿਲਾਂ ਆਪਣੀ ਪਿੱਠੇ 'ਚ ਛੁਰਾ ਉਹਨਾਂ ਮਾਰਿਆ ਵਾ ਇੱਕ ਵਾਰੀ ਨਹੀਂ ਮਾਰਿਆ ਬਾਰ-ਬਾਰ ਮਾਰਿਆ ਆਪਾਂ ਪਤਾ ਨਹੀਂ ਕਿਉਂ ਮaaf ਕਰ ਦਿੰਦੇ ਆ ਉਹਨੂੰ ਫੇਰ ਪਤਾ ਨਹੀਂ ਉਮਰ ਦਾ ਲਿਹਾਜ ਕਰਦੇ ਆ ਪਰ ਐਡੀ ਵੱਡੀ ਗद्दार ਨੂੰ ਤੂੰ ਹੀ ਮਾਫ਼ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਥੈਂਕ ਯੂ ਵੈਰੀ ਮੱਚ ਧੰਵਾਦ ਜੀ ਮੈਂ ਮਾਫੀ ਜਾਂ ਕਿ ਸਜ਼ਾ ਨਹੀਂ ਦੇ ਰਿਹਾ ਮੈਂ ਗੱਲ ਇਹ ਕਰ ਰਿਹਾ ਵੀ ਲੋਕ ਦੁਖੀ ਕਿਉਂ ਨੇ ਕਾਰਨ ਕੀ ਹੈ ਜਾਂ ਤੁਹਾਡੀ ਸ਼ਬਦਾਬਲੀ ਗਲਤ ਹੈ ਇਹ ਕੁਦਰਤ ਦਾ ਕਾਨੂੰਨ ਲਾ ਲਓ ਬਹੁਤ ਸਿਆਣਾ ਪੁਰ ਸੱਜਣ ਕੱਲ ਮੈਂ ਗੱਲ ਕਰ ਰਿਹਾ ਕਹਿੰਦਾ ਵੀ 40% ਵੀ ਜੇ ਵਿਜ਼ਡਮ ਹੁੰਦੀ ਨਾ ਜਿਹੜੀ ਪਰਿਵਾਰ ਚੋਂ ਮਿਲੀ ਹੁੰਦੀ ਰਾਜ ਪੀੜੀਆਂ ਦਾ ਕਿਸੇ ਨੇ ਨਹੀਂ ਸੀ ਵਢਣਾ ਔਰ ਪੀੜੀਆਂ ਦਾ ਹੀ ਰਾਜ ਹੈ 50 ਸਾਲ ਜੇ ਤੁਸੀਂ ਰਾਜ ਕੀਤਾ ਇੱਕ ਖਿੱਤੇ ਤੇ ਪੀੜੀਆਂ ਦਾ ਹੀ ਹੋ ਜਾਂਦਾ ਕਰਤੇ ਦਾ ਕੁਛ ਆਪਣਾ ਕੰਮ ਹੈ ਉਸ ਨੇ ਕਿਧਰ ਵੀ ਤਿੰਨ ਦਿਨ ਰਹਿੰਦੇ ਆ ਵੋਟਾਂ ਪੈਣੀਆਂ ਫਿਰ ਉਹਦੇ ਰਿਜ਼ਲਟ ਆਉਣੇ ਉਜੇ ਮੀ ਪੋਸੀਬਲ ਹੈ ਪਰ ਲੋਕਾਂ ਦੇ ਗੁੱਸੇ ਦੀ ਮੈਂ ਗੱਲ ਕਰ ਰਿਹਾ ਵੀ ਗੁੱਸਾ ਕਿਹੜੇ ਲੈਵਲ ਦਾ ਵਪਾਰਕ ਸੰਦੇਸ਼ ਆ ਪਾਉਲ ਜੀ ਲਾਈਨ ਨੰਬਰ 3 ਤੁਸੀਂ ਇਰ ਤੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਭਾਈ ਜਿਹੜਾ ਅਪਾ ਕਿੰਨੇ ਵੀ ਨਾ ਮੈਅਰ ਕਿਉਂ ਆਪਣੀ ਪ੍ਰੋਗਰੈਸ ਹੋਈ ਹੈਗੀ ਯਾਰ ਐ ਪੇਟਰੋ ਜਿਹੜਾ ਕਾਪਰ ਸਿਸਟਮ ਆ ਉਹ ਜਿਹੜੀਆਂ ਫੈਮਿਲੀ ਸੋਸ਼ਲ ਰਿਲੀਜੀਅਸ ਫੈਸ ਪੋਲੀਟੀਕਲ ਪਾਰਟੀਆਂ ਉਹ ਪ੍ਰੋਗਰੈਸ ਕਰਨ ਦਾ ਫ੍ਰੀ ਹੈਗਾ ਪਰ ਜਦੋਂ ਫੈਮਿਲੀ ਸੋਸ਼ਲ ਵੈਲਿਊ ਦੀ ਗੱਲ ਕਰਦੇ ਆ ਉਹਨਾਂ ਨੂੰ ਉਹ ਕਰਨੀ ਦੇ ਰਹੇ ਮੀਡੀਆ ਦੇ ਥਰੂ ਆਪਣਾ ਜੁਡੀਸ਼ੀਅਲ ਸਿਸਟਮ ਦੇ ਥਰੂ ਉਹ ਜਿਹੜੇ ਪੇਰੈਂਟ ਆ ਉਹ ਓਕੇ ਅਗੇ ਬੱਚੇ ਸਾਡੇ ਪਰਾਂ ਹੋ ਆਪਣੇ ਵੈਲਿਊਜ਼ ਨਾਲੋਂ ਆਪਣੇ the views expressed are not necessarily those of the staff management or ownership of this station hanji paul <laughs> ji laljot singh di line number 4 hanji bhai harjit singh ji satkar sahib aap saab ji sat sri akal ji sat sri akal ji haan ji dekho pe mrjit singh ji jehdi aap ji khalsay di gall kar rahe youtube de utte ohna ne bade hi sudharan gurmukkh pyare si ohna ne kehya sega ke ve ਗੁਰੂ ਸਾਹਿਬ ਦਾ ਰੂਪ ਜਿਹੜਾ ਚੋਰੀ ਹੋਇਆ ਉਹਦਾ ਤੁਸੀਂ ਕੱਖ ਨਹੀਂ ਕਰ ਸਕੇ ਉਸ ਦੇ ਬਾਅਦ ਵਿੱਚ ਅੰਗ 파ੜੇ ਗਏ ਉਹਦਾ ਤੁਸੀਂ ਕਰਨੀ ਚੱਕੇ ਕਰ ਸਕੇ ਉਹਨਾਂ ਨੇ ਬਹੁਤ ਖਰਿਆ ਕਰੀਆਂ ਨਸਾਂ ਤੇ ਉੱਥੇ ਮਕਾਲੀ ਦਲ ਦੀ ਉਹ ਜਿਹੜੀ ਸਗੀ ਛੋਟੀ ਜੀ ਮੀਟਿੰਗ ਉਹਦੇ ਵਿੱਚ ਉਹਨਾਂ ਨੂੰ ਕੋਈ ਸਵਾਲ ਨਹੀਂ ਆਇਆ ਕੋਈ ਜਵਾਬ ਨਹੀਂ ਆਇਆ ਬਿਲਕੁਲ ਪਰਪਚ ਲੱਗ ਗਿਆ ਦੂਜੇ ਮਿਸਟਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਇੱਕ ਬ੍ਰਾਹਮਣ ਸਭਾ ਚ ਗਏ ਸੀ ਜੇਰੂ ਰੰਗ ਦਾ ਬੜਾ ਤਿਲਕ ਲਾਇਆ ਸੀ ਮੈਂ ਕਿਹਾ ਹੁਣ ਬੜੇ ਸਸਤੇ ਤਿਲਕ ਤੇ ਆ ਗਏ ਆ ਕਦੇ ਆਪਣੇ ਕੇਸਰ ਦਾ ਜਾਂ ਚੰਦਨ ਦਾ ਤਿਲਕ ਲਾਇਆ ਹੋਣਾ ਚਾਹੀਦਾ ਸੀ ਉੱਤੇ ਪਰ ਗੇਰੂ ਦੇ ਤਿਲਕ ਨਾਲ ਹੀ ਸਾਰਨ ਲੱਪਾਇਆ ਹੁਣ ਤਾਂ ਇਹ ਆਪਣੇ ਧਾਰੋਤੇ ਲੂਣ ਕਸਾਉਣ ਵਾਲੀ ਗੱਲ ਹੋ ਗਈ ਕੋਰ ਬਾਦਲ ਸਾਹਿਬ ਦੇ ਮੈਂ ਦੇਖਿਆ ਕਿ ਜਿਹੜੇ ਲੋਕ ਆ ਉਹ ਇੰਨਾ ਮੋਹਰੇ ਬਾਦਲ ਸਾਹਿਬ ਨੂੰ ਛਈਆਂ ਲੈ ਲੈ ਪੈ ਰਿਆ ਔਰ ਹਾਹੇ ਵਾਲੇ ਵਰਤ ਰਹੇ ਆ ਕਿ ਅਸੀਂ ਉਹ ਹੋਵਾਂਗੇ ਕਿ ਮੈਂ ਹੈਰਾਨ ਦੀ ਗੱਲ ਹੈ ਕਿ ਇੰਨੀ ਦੁਰਦਸ਼ਾ ਹੋ ਰਹੀ ਆ ਮਕਾਲੀ ਦਲ ਦੇ ਵੱਡੇ ਵੱਡੇ ਲੀਡਰਾਂ ਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਇਹਨਾਂ ਦਾ ਕਰਤਾਰ ਅਚਾਰ ਚੱਜ ਅਚਾਰ ਇੰਨਾ ਮਾੜਾ ਹੋ ਗਿਆ ਪਿਛਲੇ 5-10 ਸਾਲਾਂ ਵਿੱਚ ਲੋਕਾਂ ਨੇ ਇਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਢਾਕ ਤੇ ਚੜਦੇ ਲੋਕਾਂ ਨੇ ਹੁਣ ਢਾਕ ਦੇ ਚੜੇ ਸੀ ਪਰ ਢਾਕ ਤੋਂ ਲਾ ਕੇ ਸਿਰ ਤੇ ਜਿੱਦਾ ਕਿ ਆਪਣੇ ਮੱਖਣ ਦੇ ਵਿੱਚੋਂ ਵਾਲ ਕੱਢ ਲੁੰਦੇ ਆ ਤੇ ਦੁੱਧ ਦੇ ਵਿੱਚ ਜਾਂ ਚੱਜ ਭਈ ਮੱਖੀ ਚੱਕ ਕੇ ਬਾਹਰ ਸੜਦੇ ਆ ਧੰਨਵਾਦ ਜੀ ਸ਼ਬਦ ਅਰ ਸਿੰਘ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਆ ਵੀ ਜਿਹਨੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਲਾਇਆ ਵਾ ਸਾਡੀ ਜਾਗਤ ਜੋਤ ਆ ਗੁਰੂ ਗ੍ਰੰਥ ਸਾਹਿਬ ਆ ਉਹ ਬਸਿਆ ਨੀਗਾ ਆਪਾਂ ਪੁਰਾਣੀਆਂ ਮਸਾਲਾਂ ਮੈਂ ਹੁਣ ਬੜੀਆਂ ਕੀ ਦੇਣੀ ਆ ਇੰਦਰਾ ਗਾਂਧੀ ਦਾ ਹਾਲ ਦੇਖ ਲਓ ਵੀ ਉਹਨੇ ਵੀ ਸਾਡੇ ਗੁਰੂ ਨਾਲ ਮੱਥਾ ਲਾਇਆ ਸੀ ਤੇ ਅੱਜ ਉਹਦਾ ਪਰਿਵਾਰ ਤੇ ਇੱਥੇ ਖੜੇ ਆ ਮੈਨੂੰ ਵੀ ਇਹ ਲੱਗਦਾ ਵੀ ਬਾਕੀ ਤਾਂ ਇਹਦਾ ਸਾਰਾ ਕੁਝ ਮਾਫ਼ ਹੋਈ ਜਾਂਦਾ ਸੀ ਹੁਣ ਪਰ ਜਿਹੜੇ ਇਹਨੇ ਵੋਟਾਂ ਦੀ ਗੱਲ ਤੋਂ ਸਾਡੇ ਗੁਰੂ ਦਾ ਮੱਥਾ ਲਾਇਆ ਨਾ ਉਹ ਇਹਨੂੰ ਬਹੁਤ ਮਹਿੰਗਾ ਪਾਊਗਾ ਮੈਨੂੰ ਖਤਮ ਹੀ ਸਮਝੋ ਜਿਹੜਾ ਇਹਨੇ ਗੁਰੂ ਨਾਲ ਪੰਗਾ ਲਿਆ ਉਹਦਾ ਸਿੱਖਲਵਾਈ ਧੰਵਾਦ ਜੀ ਸਵਾਗਤ ਜਤਿੰਦਰਪਾਲ ਸਿੰਘ ਜੀ ਲਾਈਨ ਨੰਬਰ ਸਤਿ ਸ੍ਰੀ ਅਕਾਲ ਵੀ ਜੀ ਸਤਿ ਸ੍ਰੀ ਅਕਾਲ ਜੀ ਇਹ ਗੱਲ ਸਭ ਸੁਚੀ ਸੁਣੀ ਜਾਂਦੇ ਆ ਦਿੱਲੀ ਜਿਹੜਾ ਕੁਝ ਵੀ ਤੁਸੀਂ ਅਪਡੇਟਿੰਗ ਹੋ ਰਹੀ ਆ ਇਹਦੇ ਚੋਂ ਬਹੁਤ ਚੀਜ਼ਾਂ ਇਦਾਂ ਦੀਆਂ ਦੇਖਣ ਆਉਣੀਆਂ ਨੇ ਵੀ ਕਈ ਕੁਝ ਪਿਛਲੇ ਸਮੇਂ ਦੇ ਵਿੱਚ ਕਈ ਬੰਦੇ ਕਹਿੰਦੇ ਆ ਜਾਂ ਉਹਨਾਂ ਦੇ ਬੁਲਾ ਨੇ ਜਾਂ ਜੋ ਵੀ ਇੱਥੇ ਕਹਿੰਦੇ ਇੱਥੇ ਵੀ ਦੋ ਛੱਲੇ ਕਈ ਥੁਰੇ ਸਰਦੇ ਆ ਵੀ ਨਹੀਂ ਜੀ ਅਕਾਲੀ ਦਲ ਆ ਜਿਹੜੀ ਉਹ ਪੰਥਕ ਪਾਰਟੀ ਆ ਸਿੱਖਾਂ ਦੀ ਪਾਰਟੀ ਆ ਗਲਤ ਗਲਬਾ ਪੈ ਗਿਆ ਮੈਨੂੰ ਲੱਗਦਾ ਜਿਉਂ-ਜਿਉਂ ਇਹਦਾ ਸਮਾਂ ਨੇੜੇ ਆ ਰਿਹਾ ਇਲੈਕਸ਼ਨ ਦਾ ਨਾ ਤਿਉਂ-ਤਿਉਂ ਉਹਨਾਂ ਦੀ ਫਰਸਟ੍ਰੇਸ਼ਨ ਜਾਂ ਉਹਨਾਂ ਦਾ ਜਿਹੜਾ ਅਸਲੀ ਚਿਹਰਾ ਉਹ ਨੰਗਾ ਹੋ ਰਿਹਾ ਜਿਹੜੀਆਂ ਅੱਜ ਕਿਤਾਬਾਂ ਨਿਕਲ ਰਹੀਆਂ ਤੁਸੀਂ ਵੀ ਇੱਕ ਦਿਨ ਮੈਂਸ਼ਨ ਕਰ ਰਹੇ ਸੀ ਵੀ ਕੇ ਪੀਐਸ ਗਿੱਲ ਦੇ ਨਾਲ ਜਿਵੇਂ ਨੇਰੇ ਦੇ ਵਿੱਚ ਸੁਖਵੀਰ ਬਾਦਲ ਦੀਆਂ ਆਪਣੇ ਦੇ ਪਿਤਾ ਦੀਆਂ ਪ੍ਰਕਾਸ਼ ਬਾਦਲ ਦੀਆਂ ਮੀਟਿੰਗਾਂ ਹੁੰਦੀਆਂ ਸੀਗੀਆਂ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਦਾਂ ਦੀਆਂ ਸਟੇਟਮੈਂਟਾਂ ਦੇ ਰਿਹਾ ਅਖੰਡ ਕੀਰਤਨੀ ਜਥਾ ਜਿਹਦੀ ਕਿ ਸਿੱਖਾਂ ਦੇ ਵਿੱਚ ਇੰਨੀ ਰਿਸਪੈਕਟ ਹੈ ਨੂੰ ਕੀ ਦੇਣਾ ਇਹਨਾਂ ਨੂੰ ਦੁਸ਼ਟਾਂ ਨੂੰ ਨਹੀਂ ਪਤਾ ਜਾਂ ਉਹ ਅੱਖਾਂ ਬੰਦ ਕਰਕੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦੇ ਉੱਤੇ ਉਤਰ ਆਏ ਨੇ ਪਰ ਇਸ ਇੰਟਰਵਿਊ ਦਾ ਜੇ ਤੁਸੀਂ ਐਂਡ ਦੇਖੋਗੇ ਵੀ ਉਹ ਜਿਹੜਾ ਮੁੰਡੇ ਨੇ ਇੰਟਰਵਿਊ ਕੀਤੀ ਆ ਯਾਦਵਿੰਦਰ ਸਿੰਘ ਨੇ ਉਹਦੇ ਤੋਂ ਸੁਖਵੀਰ ਸਿੰਘ ਬਾਦਲ ਉਹਦੀ ਉਹਦੀ ਪਿੱਠ ਤੇ ਹੱਥ ਮਾਰ ਕੇ ਦੌੜ ਗਿਆ ਉਹਦੇ ਕੋਲੋਂ ਇਹ ਤੁਸੀਂ ਪੈਸੇ ਲਏ ਆ ਜੀ ਇਹ ਕੀਤਾ ਉਹ ਕੀਤਾ ਇਹਨਾਂ ਦੇ ਤੁਹਾਨੂੰ ਦੇਖਣ ਦੀ ਹੁਣ ਇਹ ਗੱਲ ਆ ਵੀ ਇਹਨਾਂ ਨੇ ਟੋਟਲੀ ਦਾਰੋ ਮਜ਼ਾਰ ਆ ਜਿਹੜਾ ਉਹ ਆਰਐਸਐਸ ਸ਼ਿਵ ਸੈਨਾ ਜਿਹੜੀਆਂ ਕੱਟੜ ਪੰਥੀ ਸੋ ਕਾਲ ਦਾ ਜਥੇਬੰਦੀਆਂ ਨੇ ਉਹਨਾਂ ਦੇ ਉੱਪਰ ਆਪਣਾ ਦਾਰੂਵਾਰ ਕਰ ਲਿਆ ਸਿੱਖਾਂ ਤੋਂ ਇਹਨੂੰ ਕੋਈ ਆਸ ਨਹੀਂ ਪਰ ਜਿਹੜੀ ਗੱਲ ਇਹ ਹੁਣ ਤੱਕ ਕਹਿ ਰਹੇ ਸੀਗੇ ਪਿਓ ਪੁੱਤ ਤੇ ਸਾਰੀ ਇਹਨਾਂ ਦੀ ਜਿਹੜੀ ਜੁੰਡਲੀ ਆ ਕਾਲੀ ਕਾਲੀ ਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਤਾਂ ਕੋਈ ਮੁੱਦਾ ਹੀ ਨਹੀਂ ਪਿਛਲੇ ਸਮੇਂ ਪਿਛਲੇ 3 ਦਿਨਾਂ ਤੋਂ ਹੋਏ ਤੁਸੀਂ ਪ੍ਰਧਾਨ ਮੰਤਰੀ ਉੱਥੇ ਆਇਆ મોદી ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਅੱਜ 1.5 ਸਾਲ ਬਾਅਦ ਯਾਦ ਆ ਗਿਆ ਕਿ ਜਿਹੜਾ ਮੁੱਦਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸੀਬੀਆਈ ਜਾਂਚ ਕਰ ਰਹੀ ਆ ਸਿੱਖਾਂ ਨੂੰ ਇਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ ਇਹਨਾਂ ਵੀ ਗੱਲਾਂ ਹੁੰਦੀਆਂ ਨੇ ਵੀ ਕਿ ਤੋਂ ਸਾਨੂੰ ਕੋਈ ਆਸ ਨਹੀਂ ਕਰਨੀ ਚਾਹੀਦੀ ਉਹ ਇੱਕ ਹਿੰਦੂ ਜੈਂਟਲਮੈਨ ਆ ਦੂਜੀ ਸਟੇਟ ਦਾ ਪਰ ਇੱਥੇ ਜਿਹੜੀਆਂ ਬਾਕੀ ਪੰਥਕ ਜੱਥੇਬੰਦੀਆਂ ਵਿਚਰ ਰਹੀਆਂ ਨੇ ਸ਼ੋਮਨੀ ਕਾਲੀਦਾਨ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਨੇ ਉਹ ਕਿਉਂ ਇਸ ਸਿਚੁਏਸ਼ਨ ਤੋਂ ਬਿਲਕੁਲ ਹੀ ਦਰ ਕਿਨਾਰਾ ਹੋ ਗਏ ਕਿਉਂ ਸਿੱਖ ਉਹਨਾਂ ਕੰਨੀ ਨਹੀਂ ਝਾਕ ਰਹੇ ਕਿਉਂ ਸੋ ਸੋ ਕਾਲਡ ਕਹਿੰਦੇ ਕਹੋਂਦੇ ਜਾਂ ਕੋਈ ਪੰਥਕ ਦਰਦੀ ਆ ਜਾਂ ਖਾਲਸਤਾਨੀ ਮੈਨੂੰ ਤਾਂ ਇਹ ਨਹੀਂ ਸਮਝ ਲੱਗਦਾ ਵੀ ਉਹ ਜਿਸ ਤਰੀਕੇ ਨਾਲ ਉਹ ਉਹਦੇ ਬੰਦੇ ਤੇ ਇੱਕ ਇਲਜ਼ਾਮ ਲਗਾਏ ਜਾ ਰਹੇ ਨੇ ਖਾਲਸਤਾਨੀ ਦੇ ਘਰੇ ਰਹਿ ਪਿਆ ਉਹ ਬੰਦਾ ਕਲੀਅਰ ਕੱਟ ਹੋਇਆ ਆਮ ਆਦਮੀ ਵਾਲੇ ਕਿਉਂ ਨਹੀਂ ਉਹਨਾਂ ਨੂੰ ਠੋਕ ਵਜਾ ਕੇ ਕਹਿੰਦੇ ਵੀ ਤੁਹਾਡੀ ਜ਼ਰੂਰਤ ਕਿੰਦੀ ਹੁੰਦੀ ਆ ਇਸ ਤਰ੍ਹਾਂ ਦੇ ਬੰਦੇ ਨੂੰ ਤੁਸੀਂ ਖਾਲਸਤਾਨੀ ਖਾਲਸਤਾਨੀ ਬੰਦੇ ਅਤਵਾਦੀ ਨੇ ਇਹਦਾ ਮਤਲਬ ਅਸੀਂ ਐਡਮਿਟ ਕਰ ਰਹੇ ਆ ਜੇ ਕੋਈ ਬੰਦੇ ਦੀ ਆਪਣੀ ਅਲੱਗ ਸੋਚ ਹੈਗੀ ਆ ਮਤਲਬ ਕਿ ਇਸ ਤਰੀਕਾ ਦੇ ਜੋ ਕੁਝ ਵੀ ਆਰਐਸਐਸ ਜਾਂ ਉਹਨਾਂ ਦਾ ਬਜਰੰਗਦਲ ਵਾਲੇ ਕਹਿ ਰਹੇ ਸੀ ਨਾ ਜੀ ਉਹ ਅੱਜ ਦਾ ਕਾਲੀ ਦਲ ਬਣ ਗਿਆ ਮੰਦਰਾਂ ਦੇ ਵਿੱਚ ਸ਼ਰਿਆਂ ਠੋਕ ਵਜਾ ਕੇ ਕਹਿੰਦੇ ਅਸੀਂ ਜਾਵਾਂਗੇ ਇਹ ਹੁਣ ਸਿੱਖਾਂ ਨੂੰ ਜਾਂ ਜਿਹੜੇ ਮੇਰੇ ਵੀਰ ਲਕ ਕਰਨੀ ਕਹਿ ਸਕਦੇ ਉਹਨਾਂ ਜ਼ਮੀਰਾਂ ਮਾਰ ਚੁੱਕੀਆਂ ਨੇ ਜਿਹੜੇ ਉਹਨਾਂ ਨੂੰ ਦੇਖ ਦੇਖ ਕੇ ਅਜੇ ਵੀ ਉਹਨਾਂ ਦੇ ਮਗਰ ਤੁਰ ਰਹੇ ਨੇ ਮੈਂ ਕਹਿੰਦਾ ਵੀ ਆਪਣੀਆਂ ਜ਼ਮੀਰਾਂ ਨੂੰ ਜਗਾਓ ਸਾਨੂੰ ਅਗੇਨ ਇਹ ਕੋਈ ਉਹਦੇ ਤੋਂ ਆਸ ਨਹੀਂ ਪਰ ਸਿੱਖ ਜਾਣ ਤਾਂ ਜਾਣ ਤਾਂ ਕਿਹੜੇ ਖੂਚ ਡੇਗੜ ਸ਼੍ਰੋਮਣੀ ਕਮੇਟੀ ਤੇ ਉਹਨਾਂ ਦਾ ਕਬਜ਼ਾ ਕਹਿ ਲੋ ਅਕਾਲ ਤਖਤ ਸਾਹਿਬ ਉਹਨਾਂ ਦੇ ਪੰਜੇ ਦੇ ਵਿੱਚ ਸੋ ਕਾਲਡ ਧੁੰਮਾ ਟਕਸਾਲ ਉਹਨਾਂ ਦੇ ਅੱਜ ਕਿੱਥੇ ਨੇ ਉਹ ਟਕਸਾਲ ਵਾਲੇ ਜਿਹੜੇ ਧੁੰਮੇ ਨੂੰ ਆਪਣਾ ਫਰਜੰਦ ਮੰਗਦੇ ਮੰਨਦੇ ਆ ਉਹ ਆਪਣਾ ਗੁਰੂ ਮੰਨਦੇ ਉਹ ਕਿੱਥੇ ਬੋਲਦੇ ਕਿਉਂ ਨਹੀਂ ਪੰਥਕ ਮੁੱਦੇ ਤੇ ਆਉਂ ਤੁਹਾਡਾ ਪ੍ਰਧਾਨ ਫੋਨ ਇਹਦਾ ਮਤਲਬ ਧੁੰਮਾ ਵੀ ਅੱਤਵਾਦੀ ਹੈ ਉਹ ਤੋਂ ਵੱਡਾ ਤਾਂ ਕੋਈ ਅੱਤਵਾਦੀ ਨਹੀਂਗਾ ਉਹ ਤਾਂ ਅਮਰੀਕਾ ਚੋ ਜਾ ਕੇ ਉੱਥੇ ਗਿਆ ਇਹਦੇ ਤੇ ਬਿਲਕੁਲ ਜਿਹੜੀਆਂ ਜਿਹੜੀਆਂ ਸੰਸਥਾਵਾਂ ਨੇ ਈਵਨ ਇੱਥੋਂ ਦੇ ਜਿਹੜੇ ਗੁਰਦੁਆਰਾ ਸਾਹਿਬਾਂ ਦੀਆਂ ਕਮੇਟੀਆਂ ਨੇ ਉਹਨਾਂ ਨੂੰ ਏਦਾਂ ਦੇ ਬਿਆਨਾਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਕੋਈ ਐਦਾਂ ਦੀ ਸਟੇਟਮੈਂਟ ਬਾਹਰਲੇ ਸਿੱਖਾਂ ਕੋਲੋਂ ਜਾਰੀ ਹੋਣੀ ਚਾਹੀਦੀ ਆ ਗੁਰਦੁਆਰਿਆਂ ਤੋਂ ਜਾਰੀ ਹੋਣੀ ਚਾਹੀਦੀ ਆ ਵੀ ਇਹਨਾਂ ਦਾ ਦਿਮਾਗ ਹਿੱਲ ਗਿਆ ਇਹ ਸਿੱਖ ਕੌਮ ਦੇ ਨਾਲ ਕਾਲੀ ਦਲ ਦਾ ਕੋਈ ਲੈਣਾ ਦੇਣਾ ਹੀ ਹੈ ਨਹੀਂ ਕੋਈ ਵੀ ਸਿੱਖ ਪੰਜਾਬ ਦੀ ਪੰਜਾਬ ਦੇ ਪਾਣੀ ਦੇ ਮੁੱਦੇ ਦੀ ਪੰਜਾਬ ਦੀ ਪੰਜਾਬੀ ਦੀ ਗੱਲ ਕੋਈ ਚੰਡੀਗੜ੍ਹ ਦੀ ਗੱਲ ਕਰਦਾ ਇਹਨਾਂ ਨੂੰ ਅਤਵਾਦੀ ਲਿਖਦਾ ਸਿੱਖਾਂ ਨੂੰ ਇਸ ਟਾਈਮ ਤੇ ਬਹੁਤ ਸਖ਼ਤ ਸਟੈਂਡ ਲੈਣਾ ਚਾਹੀਦਾ ਬਾਹਰ ਲੀਆਂ ਦੀਆਂ ਜਿਹੜੀਆਂ ਕਮੇਟੀਆਂ ਨੇ ਜਾਂ ਜਿਹੜੇ ਜਾਗਰੂਕ ਸਿੱਖ ਬਾਹਰ ਹੈਗੇ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਕਿ ਉਹ ਜਿਸ ਤਰ੍ਹਾਂ ਕੋਈ ਵੀ ਸੱਚ ਬੋਲਦੇ ਬੰਦੇ ਦੇ ਉੱਤੇ ਠੱਪਾ ਕਾਲੀ ਦਲ ਕਾਲੀ ਦਲ ਆਰਐਸਐਸ ਦੀ ਬੋਲੀ ਬੋਲ ਕੇ ਅਤਵਾਦ ਦਾ ਲਾ ਰਿਹਾ ਨਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਗੰਭੀਰ ਦਾਦਾ ਮੁੱਦਾ ਤੇ ਸਿੱਖਾਂ ਨੂੰ ਇਹਦੇ ਤੇ ਕੋਈ ਨਾ ਕੋਈ ਨਿਰਣਾ ਹੁਣ ਇਸ ਟਾਈਮ ਤੇ ਇਸ ਘੜੀ ਦੇ ਲੈਣਾ ਚਾਹੀਦਾ ਮੇ ਜੀ ਥੈਂਕ ਯੂ ਜਨਰਵਾਦ ਜੀ ਬਿਲਕੁਲ ਫੋਟੋ ਕਿਸ ਨੇ ਭੇਜੀ ਆ ਪਜਾਮੀ ਵਾਲਾ ਨ ਹੁਣ ਜਿਹੜਾ ਕਹਿੰਦਾ ਕਿ ਜੇ ਕੇਜਰੀਵਾਲ ਹੈ ਖਾਲਸਤਾਨੀਓ ਕਿ ਉਹ ਅੰਮ੍ਰਿਤਸਰ ਐਲਾਨਨਾਮਾ ਪੜ ਰਿਹਾ ਦਸਕਤ ਕਰ ਰਿਹਾ ਆ ਇੱਥੇ ਜਦ ਬੰਨੀ ਫਿਰਦਾ ਆ ਕੇ ਗੁਲਾਬੀ ਜਿਵੇਂ 20 ਸਾਲ ਦਾ ਮੁੰਡਾ ਹੁੰਦਾ ਟੈਕਸੀ ਗੁਰੂ ਘਰ ਬੋਰ ਕਿੰਨੀ ਗਿਆ ਪਿੱਛੇ ਖਾਲਸਤਾਨ ਜਿੰਦਾਬਾਦ ਲਿਖਿਆ ਹੋਇਆ ਉੱਥੇ ਸ਼ਰਮ ਆਉਂਦੀ ਕਹੇ ਤੇ ਤਾਂ ਖੜ ਜੋ ਕਿਤੇ ਜਿਹੜੀ ਗੱਲ ਮੂੰਹੋਂ ਕਹੇ ਤੀ ਹੁਣ ਸਖਬੀਰ ਬਾਦਲ ਉਸ ਇੰਟਰਵਿਊ ਦੇ ਵਿੱਚ ਧਾਰਾ 25 ਨੂੰ ਸਾੜਨ ਦੀ ਗੱਲ ਉਹ ਮੁੰਡੇ ਦੀ ਸੁਣੇ ਨਹੀਂ ਰਿਹਾ ਮੂਰਿਓ ਟੱਟੂ ਭਜਾਇਆ ਹੋਇਆ ਉਹਦੀ ਗੱਲ ਨਹੀਂ ਸੁਣ ਰਿਹਾ ਨਾ ਜਵਾਬ ਦੇ ਰਿਹਾ ਉਸ ਗੱਲ ਉਹ ਕਹਿੰਦਾ ਵੀ ਤੇ ਜਾਂਦੇ ਰਹੇ ਹੋ ਉਹ ਕਹਿੰਦੇ ਨੇ ਤੁਸੀਂ 25 ਪਾੜੀ ਉਹ ਕਹਿੰਦਾ ਨਾ ਨਾ ਇਹ ਨਹੀਂ ਗੱਲ ਇਹ ਨਹੀਂ ਹੈ ਇੰਨਾ ਕੱਚਾ ਝੂਠ ਬਲਦੇਵ ਸਿੰਘ ਢਾਲੀਵਾਲ ਲਾਈਨ ਨੰਬਰ 3 ਆਜੀ ਗਿੱਲ ਸਾਬ ਸਤਸ੍ਰੀਕਾਰ ਸਤਸ੍ਰੀ ਅਕਾਲ ਜੀ ਗਿਲ ਸਾਹਿਬ ਬ੍ਰੇਕਿੰਗ ਨਿਊਜ਼ ਤਾਂ ਤੁਸੀਂ ਦੇ ਹੀ ਦਿੱਤੀ ਆ ਜੈਤੋਂ ਦੀ ਉਸ ਤੋਂ ਬਾਅਦ ਮੇਰਾ ਦੋਸਤ ਗਏ ਹੋਇਆ 8 ਵਜੇ ਸਵੇਰੇ ਮੈਂ ਉਹਦੇ ਨਾਲ ਗੱਲ ਕੀਤੀ ਐ ਲੰਬੀ ਹਲਕੇ ਦਾ ਜੀ ਉਹ ਬੰਦਾ ਬਹੁਤ ਨਜ਼ਦੀਕੀ ਦੋਸਤ ਆ ਮੇਰਾ ਉਹਨਾਂ ਨੇ ਦੱਸਿਆ ਸਾਰਾ ਡਿਟੇਲ ਨਾਲ ਇੱਕ ਤਾਂ ਕਹਿੰਦਾ ਵੀ ਜਲਾਲਾਬਾਦ ਵਿੱਚ ਪੈਸੇ ਬੰਡੇ ਸ਼ੁਰੂ ਕਰਤੇ ਸੁਖਵੀਰ ਨੇ ਦੂਸਰਾ ਲੰਬੀ ਤੋਂ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਜੀ ਹਰ ਰਹੇ ਆ ਜੀ ਪੱਕੀ ਨਿਊਜ਼ ਦਿੱਤੀ ਐ ਜੀ ਉਹਨੇ ਗਿਲ ਸਾਹਿਬ ਥੈਂਕ ਯੂ ਤਨਵਜ ਜੀ ਚਲੋ ਵੋਟਾਂ ਦੀ ਕਹਾਣੀ ਹੈ ਜਿਹੜੀ ਹਾਰ ਦੀ ਗੱਲ ਆ ਤਾਂ ਹੀ ਜਿਹੜੇ ਹਾਰੇ ਨੇ ਪੈ ਰਹੇ ਨੇ ਉਹ ਟੈਲੀਫੋਨ ਦੀ ਕਨਵਰਸੇਸ਼ਨ ਹੈ ਜਿਹੜੀ ਉਹਦੇ ਵਿੱਚ ਗੱਲ ਜਿਹੜੀ ਮੈਨੂਫੈਕਚਰ ਟੈਂਪਰ ਨਹੀਂ ਕੀਤੀ ਸਕ੍ਰੈਪ ਨਹੀਂ ਕੀਤੀ ਉਹ ਤਾਂ ਆਵਾਜ਼ ਵੀ ਤੁਸੀਂ ਪਛਾਣ ਰਹੇ ਹੋ ਰੌਲਾ ਪੈ ਰਿਹਾ ਉਹ ਵੀ ਆਈਪੀ ਸਟੇਟਸ ਵੇ ਸਿੰਘ ਗੱਲ ਕਰਨਗੇ ਜਿਵੇਂ ਉਹ ਇੱਕ ਰੱਖਿਆ ਹੁੰਦਾ ਵਿਚਾਰਾ ਜੀ ਜੇਬ ਚ ਫੋਨ ਨੇ ਉਹ ਉਹ ਮੂਰੇ ਕੋਈ ਖਾਸ ਹੈ ਜਿਹਦੇ ਨਾਲ ਉਹ ਗੱਲ ਕਰ ਰਹੇ ਨੇ ਤੇ ਉਸ ਨੇ ਰਿਕਾਰਡ ਕਰਕੇ ਉਹ ਬਾਹਰ ਕੱਢ ਦਿੱਤੀ ਉਹਨੂੰ ਪਹਿਲਾਂ ਕਿਹਾ ਹੋਊ ਇਹ ਗੱਲ ਕਰਨੀ ਆ ਤੇ ਉਹਨੇ ਰੈਡੀ ਕਰ ਲਿਆ ਹੋਊ ਕੰਮ ਸੋ ਬਾਕੀ ਕੱਲ ਦੀ ਸ਼ਿਕਾਗੋ ਵਾਲਾ ਰੈਡੀਓ ਆਪਣਾ ਚੰਨਪ੍ਰਦੇਸੀ ਬਸਰਾਉ ਉਹਨਾਂ ਦਾ ਉਹਦੇ ਤੇ 11000 ਬੋਤਲਾਂ ਸ਼ਰਾਬ ਦੀਆਂ ਬਠੰਡੇ ਫੜਨ ਦੀ ਵੀ ਗੱਲ ਆਈ ਸੀ ਇਹ ਦੱਸੀ ਸੀ ਉੱਥੇ ਉਸ ਰੈਡੀਓ ਤੇ ਉਹਦੇ ਬਾਰੇ ਪਤਾ ਨਹੀਂ ਹਲੇ ਲੱਗਿਆ ਵਪਾਰਕ ਸਵੇ ਸ਼ਦੋਬਾਦ ਪ੍ਰੋਫੈਸਰ ਅਮਰਜੀਤ ਸਿੰਘ ਗੱਲਬਾਤ ਕਰਨਗੇ ਪੰਜਾਬ ਦੀ ਮੌਜੂਦਾ ਸਥਿਤੀ ਕੀ ਹੈ ਮੌੜ ਮੰਡੀ ਦੇ ਬਲਾਸਟ ਤੋਂ ਬਾਅਦ ਕਿ ਆਉਣ ਵਾਲੇ 2-3 ਦਿਨਾਂ ਚ ਜੇ ਇਸ ਜੀਆਂ ਘਟਨਾਵਾਂ ਕਿਤੇ ਹੋ ਜਾਣ ਕਿਤੇ ਇਲੈਕਸ਼ਨ ਪੋਸਟਪੋਨ ਕਰਨੀ ਹੋ ਜੂਗੀ ਜਾਂ ਫਿਰ ਲੋਕਾਂ ਦਾ ਉਤਸ਼ਾਹ ਲੋਕਾਂ ਦੀ ਗਰਮੀ ਵੇਖ ਕੇ ਇਹਦੇ ਤੇ ਵਿਚਾਰ ਕੀਤੀ ਜਾ ਸਕੇਗੀ ਕਿ ਨਾ ਇਹਨਾਂ ਨੂੰ ਨਾ ਛੇੜਿਓ ਦੇਖਦੇ ਆ ਕਿ ਗੱਲ ਬਣਦੀ ਆ ਵਪਾਰ ਖਸੇੜਸ਼ ਤੇ ਉਸ ਤੋਂ ਬਾਅਦ ਪੈਸਾਬ ਨਾਲ ਗੱਲ ਕਰਦੇ 12 ਵਜੇ ਦੇ 13 ਮਿੰਟ ਹੋਏ ਨੇ ਜੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਕਿ ਪ੍ਰੋਫੈਸਰ ਅਮਰਜੀਤ ਸਿੰਘ ਜੀ ਹੁਣੇ ਅਮਰੀਕਾ ਤੋਂ ਗੱਲਬਾਤ ਕਰਨਗੇ ਪੰਜਾਬ ਦੀ ਮੌਜੂਦਾ ਸਥਿਤੀ ਦੇ ਬਾਰੇ ਕਿ ਉਹਨਾਂ ਦੀ ਨਿਗਾਹ ਉਧਰ ਹੈ ਸਰਵੇ ਹੋ ਰਹੇ ਨੇ ਹਾਲਾਤ ਕਹਿਜੇ ਨੇ ਤੇ ਕਿਉਂ ਜੀ ਤਵਕਕੂ ਹੈ ਆਉਣ ਵਾਲੇ 3-4 ਦਿਨਾਂ ਦੇ ਵਿੱਚ ਕਿਹੋ ਜਿਹਾ ਸਮਾਂ ਹੋਏਗਾ ਤੇ ਕੀ ਹੋ ਸਕਦਾ ਹਰ ਕੁਝ ਪੋਸੀਬਲ ਹੈ ਮੋਰ ਮੰਡੀ ਦੀ ਰੈਲੀ ਦੇ ਵਿੱਚ ਬਲਾਸਟ ਤੋਂ ਬਾਅਦ ਅਮਨ ਸਥਿਤੀ ਦੀ ਅਮਨ ਕਾਨੂੰਨ ਦੀ ਸਥਿਤੀ ਬਦਲ ਨਾ ਜਾਵੇ ਵੋਟਾਂ ਤੇ ਕੋਈ ਫਰਕ ਨਾ ਪੈ ਜਾਵੇ ਕਿਹੜੀ ਪਾਰਟੀ ਕਿੱਥੇ ਖੜੀ ਆ ਲੋਕਾਂ ਦਾ ਮੁੱਦਾ ਕੀ ਆ ਲੋਕਾਂ ਦਾ ਗੁੱਸਾ ਕਿਉਂ ਆ ਵਿਕਾਸ ਦੇ ਨਾਮ ਤੇ ਅਕਾਲੀ ਦਲ ਵੋਟਾਂ ਲੈ ਰਿਹਾ ਤੇ ਵੋਟਾਂ ਮਿਲ ਜਾਣਗੀਆਂ ਜਾਂ ਨਹੀਂ ਕਿਹੋ ਜਿਹੇ ਨਤੀਜੇ ਆਉਣਗੇ ਇਹ ਸਾਰੀ ਗੱਲ ਨੂੰ ਉਹਨਾਂ ਨਾਲ ਸਾਂਝਾ ਕਰਾਂਗੇ ਤੁਹਾਡਾ ਸਵਾਗਤ ਹੈ ਜੀ ਲੋਕ ਸਤਿ ਸ੍ਰੀ ਅਕਾਲ ਅਜੀਤ ਜੀ ਤੇ तमाम ਦੇਸ਼ ਵਿਦੇਸ਼ਾਂ ਚ ਬੈਠੇ ਮੇਰੇ ਪੰਜਾਬੀ ਵੀਰ ਜਿੱਥੇ ਵੀ ਇਸ ਪ੍ਰੋਗਰਾਮ ਨੂੰ ਸ਼੍ਰੀ ਪੰਜਾਬ ਦੇ ਵੇਦੀ ਪ੍ਰੋਗਰਾਮ ਨੂੰ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਬਹੁਤ ਤੁਹਾਡਾ ਆਪਣੀ ਯੂਨੀਵਰਸਿਟੀ ਕਾਲਜ ਦੇ ਸਮੇਂ ਚ ਸਮਾਂ ਕੱਢ ਕੇ ਮੰਗਲਵਾਰ ਨੂੰ ਮੇਰੇ ਨਾਲ ਗੱਲ ਕਰਦੇ ਰਹਿੰਦੇ ਹੋ ਤੁਸੀਂ ਜਦ ਵੀ ਬੇਨਤੀ ਕਰਦਾ ਤੁਸੀਂ ਮੰਨਦੇ ਹੋ ਲੈਟਲੀ ਹੁਣੇ ਹੀ 1.5 ਘੰਟਾ ਪਹਿਲਾਂ ਖਬਰਾਂ ਆਈਆਂ ਜੀ ਉੱਥੇ ਇੱਕ ਹਰਮਿੰਦਰ ਜੱਸੀ ਜਿਹੜਾ ਸੌਦਾ ਸਾਧ ਦਾ ਬਹੁਤ ਨੇੜੇ ਦਾ ਰਿਸ਼ਤੇਦਾਰ ਆ ਉਸਦੀ ਰੈਲੀ ਦੇ ਵਿੱਚ ਇੱਕ ਬਲਾਸਟ ਹੋਇਆ ਜਿਹੜਾ ਉਹ ਦੱਸ ਰਹੇ ਨੇ ਐਨਡੀ ਟੀਵੀ ਤੇ ਹਿੰਦੁਸਤਾਨ ਟਾਈਮਜ਼ ਕੇ ਮਰੂਤੀ ਕਾਰ ਖੜੀ ਸੀ ਉਹ 'ਚ ਬਲਾਸਟ ਹੋਇਆ ਉਹਦੇ ਵਿੱਚ ਪ੍ਰੈਸ਼ਰ ਕੁੱਕਰ ਤੇ ਮੇਖਾਂ ਖੰਡੀਆਂ ਨੇ ਤਿੰਨ ਬੰਦੇ ਮਾਰੇ ਗਏ ਇਸ ਤੁਸੀਂ ਕਿਸ ਤਰ੍ਹਾਂ ਲੈਨੇ ਹੋ ਜੀ ਹਜੀਜੀ ਮੈਂ ਨੂੰ ਇੱਕ ਖਬਰ ਤਾਂ ਮਿਲ ਗਈ ਸੀ ਪਰ ਤੁਸੀਂ ਇਸ ਖਬਰ ਨੂੰ ਮੇਰੇ ਨਾਲ ਸਾਂਝੀ ਕਰਕੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਇਸ ਲਈ ਤੁਹਾਡਾ ਸ਼ੁਕਰੀਆ ਇਸ ਗੱਲ ਨੂੰ ਮੈਂ ਇਸ ਤਰੀਕੇ ਨਾਲ ਲੈ ਰਿਹਾ ਹਜੀਜੀ ਕਿ ਜਿਵੇਂ ਅਸੀਂ ਪਹਿਲਾਂ ਹੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਪ੍ਰੋਗਰਾਮ ਕੀਤੇ ਹਨ ਜਾਂ ਜਿੰਨਾ ਵੀ ਪ੍ਰੋਗਰਾਮਾਂ ਦੇ ਵਿੱਚ ਅਸੀਂ ਪੰਜਾਬ ਦੇ ਹਾਲਾਤ ਨੂੰ ਜਾਣੂ ਹੋਏ ਆਂ ਇਹ ਸ਼ੱਕ ਪਹਿਲਾਂ ਤੋਂ ਹੀ ਸੀ ਔਰ ਇਹ ਘਟਨਾਵਾਂ ਜਿਹੜੀਆਂ ਘਟਨਾਵਾਂ ਪਿਛਲੇ ਬੀਤੇ ਸਮੇਂ ਦੇ ਵਿੱਚ ਹੋਈਆਂ ਚਾਹੇ ਉਹ ਕੁਰਾਨ ਦੀ ਬੇਅਤ ਵੀ ਹੋਵੇ ਚਾਹੇ ਉਹ ਅਰਦਾਸ ਮਾਮਲਾ ਹੋਵੇ ਚਾਹੇ ਗੁਰਗੰਨ ਸਾਹਿਬ ਦੀ ਬੇਅਤ ਹੋਵੇ ਚਾਹੇ ਕਿਸਾਨਾਂ ਦੇ ਅੰਦੋਲਨ ਨੂੰ ਵਾਪਸ ਮੋੜਨ ਵਾਲੀ ਗੱਲ ਹੋਵੇ ਤੁਸੀਂ ਕਿਸੇ ਵੀ ਘਟਨਾ ਨੂੰ ਲੈ ਲਓ ਇਹ ਘਟਨਾਵਾਂ ਉਦੋਂ ਸ਼ੁਰੂ ਹੁੰਦੀਆਂ ਨੇ ਜਦੋਂ ਸਰਕਾਰ ਨੂੰ ਇਹ ਪਤਾ ਲੱਗਿਆ ਕਿ ਹੁਣ ਸਾਡਾ ਸਮਾਂ ਜਿਹੜਾ ਉਹ ਜ਼ਿਆਦਾ ਦੇਰ ਤੱਕ ਰਾਜ ਗੱਦੀ ਤੇ ਉੱਤੇ ਲੰਬਾ ਸਮਾਂ ਚੱਲਣ ਵਾਲਾ ਨਹੀਂ ਹੈ ਪਰ ਸਮ ਹਾਉ ਕੁਦਰਤ ਦਾ ਇੱਕ ਕਾਨੂੰਨ ਹੈ ਕਿ ਕਿ ਆਪ ਤੇ ਖੁਦਾ ਦਾ ਵੈਰ ਹੁੰਦਾ ਸੋ ਸਮ ਹਾਉ ਮੈਨੂੰ ਉਹਦੇ ਵਿੱਚੋਂ ਇਹਨਾਂ ਘਟਨਾਵਾਂ ਦੇ ਨਤੀਜਿਆਂ ਦੇ ਵਿੱਚੋਂ ਜਦੋਂ ਮੈਂ ਦੇਖਦਾ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਇੱਕ ਸਾਜ਼ਿਸ਼ ਹੋ ਸਕਦੀ ਹੈ ਔਰ ਉਸ ਸਾਜ਼ਿਸ਼ ਦੇ ਵਿੱਚ ਜਿਹੜੀ ਸ਼ੱਕ ਵਾਲੀ ਗੱਲ ਮੈਨੂੰ ਇਸ ਘਟਨਾ ਦੇ ਵਿੱਚੋਂ ਲੱਗ ਰਹੀ ਹੈ ਆ ਖਬਰ ਇਹ ਕਹਿੰਦੀ ਹੈ ਕਿ ਉਹ ਬਲਾਸਟ ਜੱਸੀ ਦੇ ਜਾਣ ਤੋਂ 4 ਜਾਂ 5 ਮਿੰਟ ਬਾਅਦ ਹੋਇਆ ਸੋ ਇਸ ਗੱਲ ਤੋਂ ਜਿਹੜਾ ਸ਼ੱਕ ਦਾ ਜਿਹੜਾ ਸੂਬਾ ਉਹ ਥੋੜਾ ਜਿਹਾ ਹੋਰ ਜ਼ਿਆਦਾ ਕਲੀਅਰ ਹੁੰਦਾ ਜੇ ਅਸੀਂ ਇਸ ਖਬਰ ਨੂੰ ਗਰਮ ਦਲੀਆਂ ਦੇ ਨਾਲ ਜੋੜਨਾ ਚਾਹੀਏ ਅਸੀਂ ਇਸ ਖਬਰ ਨੂੰ ਖ਼ਾਸਤਾਨੀਆਂ ਦੇ ਨਾਲ ਜੋੜਨਾ ਉਹਨਾਂ ਨੂੰ ਮੌਕਾ ਮਿਲ ਰਿਹਾ ਇਸ ਗੱਲ ਦਾ ਪਰ ਜਿਸ ਵਜ੍ਹਾ ਕਰਕੇ ਜਿਸ ਸਬਾ ਕਰਕੇ ਜਿਸ ਨੈਤਿਕ ਕਾਰਨ ਕਰਕੇ ਰਾਜਨੀਤਿਕ ਕਾਰਨ ਕਰਕੇ ਇਹ ਘਟਨਾ ਵਾਪਰੀ ਹੈ ਇਹ ਬਹੁਤ ਸਾਰੇ ਸਵਾਲ ਖੜੇ ਕਰਦੀ ਹੈ ਅ ਰੱਬ ਅਗੇ ਅਰਦਾਸ ਕਰੀਏ ਅਸੀਂ ਸਾਰੇ ਕਿ ਆਉਣ ਵਾਲੇ ਸਮੇਂ ਜਿਹੜਾ ਕਿ ਬਹੁਤ ਘੱਟ ਰਹਿ ਗਿਆ ਉਹਦੇ ਵਿੱਚ ਕੋਈ ਐਹੋ ਜੀ ਘਟਨਾ ਹੋਰ ਨਾ ਹੋਵੇ ਕਿ ਚੋਣ ਕਮਿਸ਼ਨ ਨੂੰ ਇਹ ਲੱਗੇ ਜਾਂ ਚੋਣ ਕਮਿਸ਼ਨ ਨੂੰ ਉੱਪਰੋਂ ਇਹ ਹੁਕਮ ਨਾ ਆ ਜਾਣ ਕਿ ਇਹਦੇ ਜਿਹੜੇ ਹਾਲਾਤ ਨੇ ਇਹ ਸੇਫ ਨਹੀਂ ਇਹ ਸੁਰੱਖਿਅਤ ਨਹੀਂ ਪੰਜਾਬ ਦੀਆਂ ਚੋਣਾਂ ਦੀ ਖਾਤਰ ਤੇ ਅੱਜ ਦੀ ਘੜੀ ਹਾਲ ਦੀ ਘੜੀ ਇਹਨਾਂ ਨੂੰ ਟਾਲ ਦਿੱਤਾ ਚਾਵੇ ਜੀ ਹਾਂ ਜੀ ਜੀ ਜੀ ਕਨਫਲਿਕਟਡ ਰਿਪੋਰਟਸ ਨੇ ਜੀ ਹਿੰਦੁਸਤਾਨ ਟਾਈਮ ਦਿਸ ਕਹਿ ਰਿਹਾ ਬਲਾਸਟ ਹੈ ਐਨਡੀਟੀਵੀ ਬਲਾਸਟ ਕਹਿ ਰਿਹਾ ਪ੍ਰੈਸ਼ਰ ਕੁੱਕਰ ਤੇ ਨੇਲਜ਼ ਕਹਿ ਰਿਹਾ ਦਾ ਇੰਡੀਅਨ ਦਾ ਨਿਊ ਇੰਡੀਅਨ ਐਕਸਪ੍ਰੈਸ 2 ਘੰਟੇ ਪਹਿਲਾਂ ਲੇਟਸ 36 ਮਿੰਟ ਪਹਿਲਾਂ ਜਿਹੜਾ ਐਨਡੀਟੀਵੀ ਹੈ ਉਸ ਇਸ ਇਹ ਕਿ ਅੱਛਾ ਵਿੱਚ ਕਨਫਲਿਕਟਿੰਗ ਰਿਪੋਰਟਸ ਹੈ ਨੇ ਕਿ ਮਰੂਤੀ ਕਾਰ ਦੇ ਵਿੱਚ ਸਿਲੰਡਰ ਸੀ ਜਿਹੜਾ ਫਟ ਗਿਆ ਤੇ ਪਰ ਲੇਟੈਸਟ ਜਿਹੜੀ 36 ਮਿੰਟ ਪਹਿਲਾਂ ਖਬਰ ਹੈ ਉਹਦੇ ਵਿੱਚ ਇਹੀ ਹੈ ਕਿ ਉੱਥੇ ਪ੍ਰੈਸ਼ਰ ਕੁੱਕਰ ਤੇ ਬਲਾਸਟ ਐਨੀਵੇਜ਼ ਜੇ ਜੇ ਮਾੜੀ ਤੇ ਆਉਣਾ ਹੋਵੇ ਸੈਂਟਰ ਸਰਕਾਰ ਨੇ ਤੇ ਜਾਂ ਫਿਰ ਕਮਿਸ਼ਨ ਨੇ ਕਿ ਇਲੈਕਸ਼ਨਸ ਪੋਸਟਪੋਨ ਕੀਤੀਆਂ ਜਾਣ ਉਹਦਾ ਕੀ ਕਾਰਨ ਹੋ ਸਕਦਾ ਪ੍ਰਧਾਨ ਸਾਹਿਬ ਜਿਹੜਾ ਸੈਂਟਰ ਦੀ ਸਰਕਾਰ ਬੀਜੇਪੀ ਨੂੰ ਜਾਂ ਇਲੈਕਸ਼ਨ ਕਮਿਸ਼ਨ ਦਾ ਤਾਂ ਚਲੋ ਕੋਈ ਇਹਦੇ ਵਿੱਚ ਨਹੀਂ ਜਿਹਾ ਕੁਝ ਸਾਹਮਣੇ ਕੰਧ ਤੇ ਲਿਖਿਆ ਦਿਖਣ ਲੱਗ ਗਿਆ ਕਿ ਕੁਝ ਬਦਲਾਅ ਰਿਹਾ ਜਾਂ ਡਰ ਹੈ ਕਿਹੜੀ ਕੀ ਕਾਰਨ ਹੋ ਸਕਦਾ ਮੈਂ ਸਭ ਤੋਂ ਵੱਡਾ ਜਿਹਾ ਕਾਰਨ ਗਿੰਦਾ ਆਪਣੇ ਹਰਜੀਤ ਜੀ ਇਸ ਕਟਨਾ ਕਰਮ ਦੇ ਵਿੱਚੋਂ ਜਾਂ ਕੰਪਲੀਟ ਜਿਹੜਾ ਪਿਉਰਾ ਅਸੀਂ ਦੇਖ ਰਹੇ ਹਾਂ ਪਿਛਲੇ 3 ਜਾਂ 4 ਮਹੀਨਿਆਂ ਤੋਂ ਪੰਜਾਬ ਦੇ ਵਾਤਾਵਰਣ ਦੇ ਵਿੱਚ ਪੰਜਾਬ ਦੇ ਸਮਾਜ ਦੇ ਵਿੱਚ ਪੰਜਾਬ ਦੀਆਂ ਚੁਣੌਤੀਆਂ ਦੇ ਵਿੱਚ ਵਾਪਰ ਰਿਹਾ ਉਹ ਕਿਸੇ ਨਾ ਕਿਸੇ ਹੱਦ ਤੱਕ ਇੱਕ ਚੈਲੰਜ ਆ ਔਰ ਉਹ ਚੈਲੰਜ ਉਸ ਸੱਤਾ ਦੇ ਲਈ ਹੈ ਜਿਹਦਾ ਆਪਾਂ ਜ਼ਿਕਰ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਕੀਤਾ ਸੀ ਪੂਰੇ ਭਾਰਤ ਦੇ ਵਿੱਚ ਅਗਰ ਨਿਗਾਹ ਮਾਰੀਏ ਤਾਂ ਤੁਹਾਨੂੰ ਹਰ ਰਾਜ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਪਰਿਵਾਰ ਰਾਜ ਕਰਦੇ ਨਜ਼ਰ ਆਉਣਗੇ ਜਾਂ ਉਹ ਪਰਿਵਾਰਾਂ ਦੇ ਹੱਥਾਂ ਦੇ ਵਿੱਚ ਸੱਤਾ ਨਜ਼ਰ ਆਉਗੀ ਜਿਹੜੇ ਅੰਗਰੇਜ਼ਾਂ ਦੇ ਸਮੇਂ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਧੇ ਰੂਪ ਚ ਅਸਿੱਧੇ ਰੂਪ ਦੇ ਵਿੱਚ ਉਸ ਅੰਗਰੇਜ਼ ਸ਼ਕਤੀ ਦੇ ਨਾਲ ਜੁੜੇ ਹੋਏ ਨੇ ਕਿਸੇ ਦਾ ਇਤਿਹਾਸ ਫੋਲ ਕੇ ਦੇਖ ਲਓ ਔਰ ਇਹ ਜਿਹੜਾ ਮੀਡੀਆ ਇਹ ਜਿਹੜੇ साधन ਸਰਕਾਰੀ ਸਾਧਨ ਹੁਣ ਤੱਕ ਆਜ਼ਾਦੀ ਤੋਂ ਲੈ ਕੇ ਇਹਨਾਂ ਪਰਿਵਾਰਾਂ ਨੇ ਆਪਣੇ ਹੱਕ ਦੇ ਦੇ ਵਿੱਚ ਪੁੱਗ ਤੌਣ ਦੇ ਲਈ ਹਰ ਕੋਸ਼ਿਸ਼ ਇਹ ਕਰਦੇ ਰਹੇ ਨੇ ਪਰ ਹੁਣ ਦਾ ਜਿਹੜੇ ਹਾਲਾਤ ਨੇ ਇਹ ਹਾਲਾਤ ਕੁਝ ਨਵਾਂ ਪਣ ਲੱਪਣ ਦੀ ਰੁਚੀ ਵੱਲ ਪਰਬਲ ਨੇ मेरे ਰਾਜ कुछ ਕੁਝ कर सकेगा। बस ਬਸ ਇਸ ਵਾਰੀ ਦੀਆਂ ਜਿਹੜੀਆਂ ਵੋਟਾਂ ਵਿੱਚ ਇਸੇ ਗੱਲ ਨੇ ਸਾਰੇ ਨਤੀਜੇ ਸਾਹਮਣੇ ਲੈ ਕੇ ਆਉਣੇ ਨੇ ਕਿ ਬਾਕੀ ਲੋਕ ਵੀ ਔਰ ਸਮ ਹਾਉ ਮੇਰੇ ਖਿਆਲ ਦੇ ਵਿੱਚ ਕੁਦਰਤ ਵੀ ਸ਼ਾਇਦ ਇਹੀ ਚਾਹੁੰਦੀ ਹੈ ਕਿ ਕੁਝ ਨਮਾਪਣ ਹੋਵੇ ਹੁਣ ਨਵੇਂਪਣ ਦੇ ਵਿੱਚ ਜਿਹੜੀ ਇਹ ਜਦੋਂ ਪਿਛਲੇ ਇਤਿਹਾਸ ਵੱਲ ਨਿਗਾਹ ਮਾਰੀਏ ਸੰਸਾਰ ਦੇ ਜਦੋਂ ਰੂਸ ਦੇ ਜ਼ਾਰਾਂ ਹੱਥੋਂ ਸੱਤਾ ਖੁੱਸ ਕੇ ਰੂਸ ਦੇ ਕਾਮਿਆਂ ਨੇ ਆਪਣੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ ਪੰਜਾਬ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਿਰਫ 6 ਪਰਿਵਾਰ ਅਸੀਂ ਉਂਗਲਾਂ ਤੇ ਗਿਨੇ ਜਾ ਸਕਦੇ ਨੇ ਜਿਨ੍ਹਾਂ ਨੇ ਰਾਜ ਸਤਾ ਸੰਭਾਲੀ ਫਿਰ ਭੋਗੀ ਤੇ ਫਿਰ ਆਪਣੀ ਸੰਤਾਨ ਨੂੰ ਉਹ ਰਾਜਨੀਤਿਕ ਵਿਰਾਸਤ ਦੀ ਵਾਂਗ ਡੋਰ ਸੰਭਾਲਦਿਆਂ ਇਹ ਵੀ ਨਹੀਂ ਸੋਚਿਆ ਕਿ ਯਾਰ ਇਹ ਇੱਕ ਨੈਤਿਕ ਭ੍ਰਿਸ਼ਟਾਚਾਰ ਹੈ ਹੁਣ ਉਸ ਪ੍ਰਸ਼ਟਾਚਾਰ ਦੀ ਜਦੋਂ ਆਪਾਂ ਕੜੀ ਜੋੜਦੇ ਆ ਤਾਂ ਦੇਖ ਲਓ ਤੁਸੀਂ ਇਹਨਾਂ ਪਰਿਵਾਰਾਂ ਨੂੰ ਸਾਬਕਾ ਮੁੱਖ ਮੰਤਰੀ ਹਰਜਨ ਸਿੰਘ ਬੜਾਰ ਦੇ بیٹے ਸਨੀ ਬੜਾਰ ਕੈਪਟਨ ਤੇ ਛੋਟੇ ਪਰਾ ਮਾਲਵਿੰਦਰ ਦਾ ਵਿਆਹ ਸਕੀਆਂ ਭੈਣਾ ਹੁਣ ਸਿਮਰਨਜੀਤ ਮਾਨ ਤੇ ਕੈਪਟਨ ਸਾਡੂ ਵਿਆਹ ਕਿਹਦੇ ਨਾਲ ਹੋਇਆ ਸਾਬਕਾ ਮੁੱਖ ਸਕੱਤਰ ਗਿਆਨ ਸਿੰਘ ਕਾਲੋ ਦੀਆਂ ਬੇਟੀਆਂ ਪਰਨੀਤ ਤੇ ਗੀਤਿੰਦਰ ਦਾਨ ਜਦੋਂ ਸੁਖਵੀਰ ਮਿਲਦਾ ਕੈਪਟਨ ਤਾਂ ਉਹ ਕਹਿੰਦਾ ਮੈਂ ਤੇਰੇ ਪੈਰੀਂ ਹੱਥ ਲਾਉਣਾ ਕੈਪਟਨ ਚੰ다 ਕਿ ਮੈਂ ਇਹਨੂੰ ਜੇਲ੍ਹ ਦੇ ਵਿੱਚ ਇਹਦਾ ਇਹਦਾ ਪੈਪਸੀ ਦਾ ਕੋਕ ਦਾ ਪ੍ਰਬੰਧ ਕੀਤਾ ਹੈ ਕਿ ਲਈ ਡਾਈਟ ਪੈਪਸੀ ਨੂੰ ਚਾਹੀਦੀ ਸੀ ਸੋ ਕਿਸੇ ਕਦੇ ਬਾਦਲ ਕਾਂਗਰਸੀ ਸੀ ਕਦੇ ਕੈਪਟਨ ਅਕਾਲੀ ਸੀ ਸੋ ਇਹ ਜਿਹੜਾ ਸਾਰਾ ਗੱਠ ਆ ਇਹ ਕੇਂਦਰ ਦੇ ਵਿੱਚ ਵੀ ਜਾ ਕੇ ਜੁੜਦਾ ਕਿਉਂਕਿ ਆਲਟੀਮੇਟਲੀ ਸਾਰੇ ਕੈਬਨਿਟ ਮੰਤਰੀ ਸਾਰੇ ਮੰਤਰੀ ਇੰਨਾ ਹੀ ਪਰਿਵਾਰਾਂ ਦੇ ਵਿੱਚੋਂ ਜੁੜ ਕੇ ਉੱਥੇ ਕੈਬਨਟ ਬਣਾਉਂਦੇ ਆ ਜੁੜ ਕੇ ਆਪਣੇ ਫੈਸਲੇ ਕਰਦੇ ਆ ਤੇ ਸਰਕਾਰ ਦੀ ਕੰਨਾਂ ਦੇ ਵਿੱਚ ਇਹ ਜਿਹੜੀ ਲੀਕ ਆ ਉਹ ਬਰਦਾਸ਼ਤ ਨਹੀਂ ਹੋ ਰਹੀ ਕਿ ਯਾਰ ਸਾਡਾ ਤਾਂ ਰਾਜ ਖੁੱਸ ਰਿਹਾ ਇਹ ਤਾਂ ਨਵੀਂ ਚੁਣੌਤੀ ਪੈਦਾ ਹੋ ਗਈ ਲੋਕ ਤਾਂ ਅਵੇਅਰਨੈਸ ਹੋ ਗਏ ਲੋਕਾਂ ਨੂੰ ਤਾਂ ਜਾਗਰੂਕਤਾ ਆ ਗਈ ਤੇ ਇਹ ਜਾਗਰੂਕਤਾ ਜਿਹੜੀ ਇਹ ਸਾਡੇ ਘਰਾਂ ਤੱਕ ਪਹੁੰਚੂਗੀ ਸਾਡੇ ਮਹਿਲਾ ਤੱਕ ਪਹੁੰਚੀ ਸਾਡੀਆਂ ਇੱਟਾਂ ਵੀ ਖਿੰਣਣਗੀਆਂ ਜਿਵੇਂ ਅੱਜ ਇੱਟਾਂ ਪੰਜਾਬ ਦੀਆਂ ਗਲੀਆਂ ਦੇ ਵਿੱਚ ਖਿੰਡ ਰਹੀਆਂ ਨੇ ਜੀ ਹਾਂ ਜੀ ਜੀ ਬਿਲਕੁਲ ਜੀ ਪਰਿਵਾਰਾਂ ਦੀ ਗੱਲ ਛੇਆਂ ਦੀ ਹਰਚਾਨ ਬਰਾੜ ਪ੍ਰਸਾਰ ਕੈਰੋਂ ਪਰਿਵਾਰ ਮਜੀਠਾ ਪਰਿਵਾਰ ਬਾਦਲ ਪਰਿਵਾਰ ਕੈਪਟਨ ਪਰਿਵਾਰ ਇਹਨਾਂ ਦੀ ਆਪਸ ਵਿੱਚ ਅੰਗਲੇ ਸੰਗਲੀਆਂ ਵਪਾਰਕ ਸੰਦੇਸ਼ਾਂ ਤੋਂ ਬਾਅਦ ਜਿਹੜੀਆਂ ਪ੍ਰਚਲਿਤ ਪਾਰਟੀਆਂ ਦੇ ਵਿੱਚੋਂ ਸਰਦ ਬਾਰੇ ਮੈਂ ਪ੍ਰੈਸ ਸਾਹਿਬ ਤੋਂ ਪੁੱਛਣਾ ਚਾਹੁੰਦਾ ਪੰਥਕ ਗੱਲ ਹੈ ਵੱਧ ਹੱਕਾਂ ਦੀ ਗੱਲ ਹੈ ਕੁਰਬਾਨੀ ਦਿੱਤੀ ਵੀ ਆਈ ਜੀ ਸਨ ਪਾਗਲਪੁਰ ਰਹੇ ਬਾਹਰ ਨਿਕਲ ਕੇ ਲੋਕਾਂ ਨੇ ਜਿਤਾਏ ਇਕੱਠ ਹੁੰਦਾ ਲੋਕ ਸੁਣਦੇ ਨੇ ਸੱਚ ਬੋਲਦੇ ਨੇ ਵੋਟਾਂ ਦੇ ਪਾਸੇ ਨੂੰ ਗੱਲ ਕਿਉਂ ਨਹੀਂ ਜਾਂਦੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਧਾਰਮਿਕ عقیده ਤੇ ਆ ਤੇ ਲੋਕ ਮੁਖੀਆਂ ਚ ਥੁੱਕੀ ਬੈਠੇ ਇਸ ਸਾਲ ਦੀਆਂ ਇਸ ਵਾਰ ਦੀਆਂ ਵੋਟਾਂ ਹੋਣੀਆਂ ਹੀ ਉਸ ਬੇਸ ਤੇ ਨੇ ਕਿ ਮਹਾਰਾਜ ਦੀ ਬੇਆਦਬੀ ਹੋਈ ਤੁਸੀਂ ਬੰਦੇ ਨਹੀਂ ਫੜੇ ਸਾਡੇ ਧਰਨੇ ਤੇ ਬੈਠੇ ਦੋ ਬੰਦੇ ਤੁਹਾਡੇ ਐਸਐਸਬੀ ਸ਼ਰਮੇ ਨੇ ਮਾਰੇ ਤੁਸੀਂ ਸ਼ਰਮਾ ਵੀ ਬਹਾਲ ਕਰਤਾ ਹੁਣ ਅੱਜ ਕੇ 27 ਮਿੰਟ ਹੋਇਆ ਜੀ ਪ੍ਰੋਫੈਸਰ ਅਮਰਜੀਤ ਸਿੰਘ ਮੇਰੇ ਨਾਲ ਨੇ ਪ੍ਰੋਫੈਸਰ ਸਾਹਿਬ ਬ੍ਰੇਕ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਸੀ ਕਿ ਸੁਧਾਰਨ ਦਾ ਬੜਾ ਉਹਨਾਂ ਨੇ ਕੰਮ ਕੀਤਾ ਜ਼ਰੂਰਤ ਰੱਖਦੇ ਹੈ ਰਾਜਸੀ ਪੈਂਤੜੇ ਦੇ ਵਿੱਚ ਗੱਲ ਕਿਉਂ ਨਹੀਂ ਫਿੱਟ ਆ ਰਹੀ ਇੱਕ ਵਾਰ ਬਹੁਤ ਵਾਰ ਉਹਨਾਂ ਨੂੰ ਵੋਟਾਂ ਨਾਲ ਜਿਤਾਇਆ ਤੇ ਹੁਣ ਮਾਨ ਦਲ ਦੇ ਜਿੰਨੇ ਸਮਰਥਕ ਨੇ ਉਹ ਕਹਿੰਦੇ ਜੇ ਆਪ ਨਾ ਹੁੰਦੀ ਤਾਂ ਗੁਰੂ ਮਹਾਰਾਜ ਦੀ ਜਿਹੜੀ ਬੇਅਦਬੀ ਹੋਈ ਹੈ ਇਸ ਇਹ ਸਾਰੀ ਬੋਰਡ ਪੰਥਕ ਤੇ ਕੋਈ ਨਹੀਂ ਸੀ ਹੋਣੀ ਮਾਨ ਨੂੰ ਇਹ ਵੋਟਾਂ ਜਾਣੀਆਂ ਸੀ ਤੇ ਸਰਕਾਰ ਬਣ ਜਾਣੀ ਸੀ ਪਹਿਲਾਂ ਵੀ ਜਦ ਬਾਈਕਾਰਟ ਹੋਇਆ ਜਦ ਸਰਦਾਰ ਮਾਨ ਦੀ ਸਰਕਾਰ ਬਣਨੀ ਸੀ ਤੁਸੀਂ ਉਹਨਾਂ ਦੀ ਰਾਜਸੀ ਜੀਵਨ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਬਿਲਕੁਲ ਹਰਜੀਤ ਜੀ ਸਮ ਅ ਮੈਂ ਇਸ ਗੱਲ ਨੂੰ ਕਿਸੇ ਹੋਰ ਰੂਪ ਦੇ ਵਿੱਚ ਲੈ ਕੇ ਤੁਹਾਡੇ ਨਾਲ ਇਹਦੀ ਸਾਂਝ ਪਾਵਾਂਗਾ ਕੋਈ ਸ਼ੱਕ ਨਹੀਂ ਉਹਨਾਂ ਦੇ ਕਿਰਦਾਰ ਤੇ ਉਹਨਾਂ ਦੇ ਪਾਰਟੀ ਤੇ ਉਹਨਾਂ ਦੇ ਜੋ ਉਦੇਸ਼ ਨੇ ਜਾਂ ਉਹਨਾਂ ਦੀ ਪਾਰਟੀ ਦੇ ਜੋ ਏਮ ਨੇ ਉਹ ਸਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਨੇ ਔਰ ਉਸ ਲੋਕਤੰਤਰੀ ਆਵਾਜ਼ ਨੂੰ ਉਹ ਉਠਾਉਂਦੇ ਨੇ ਆਪਣੇ ਝੰਡੇ ਦੇ ਰਾਹੀਂ ਆਪਣੇ ਪਾਰਟੀ ਦੇ ਰਾਹੀਂ ਆਪਣੇ ਜਿੱਥੇ-ਜਿੱਥੇ ਵੀ ਉਹ ਆਪਣੇ ਸਮਾਗਮ ਕਰਦੇ ਨੇ ਪਰ ਤੁਸੀਂ ਇੱਕ ਗੱਲ ਯਾਦ ਰੱਖਿਓ ਪੰਜਾਬ ਦਾ ਇਹ ਪਿਛੋਕੜ ਆ ਇਹ ਇਤਿਹਾਸ ਆ ਜਦੋਂ ਵੀ ਆਪਾਂ ਇੱਥੋਂ ਤੱਕ ਕੇ ਜੇ ਮੈਂ ਤੁਹਾਨੂੰ ਸ਼ੁਰੂ ਕਰਾਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਜਦੋਂ ਹੁੰਦੀ ਹੈ ਉਸ ਸਮੇਂ ਤੱਕ ਮੁਗਲ ਹਕੂਮਤ ਦਾ ਜੋ ਬੋਲਬਲਾ ਉਹ ਤਾਂ ਸਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੇ ਵਿੱਚੋਂ ਹੀ ਇਤਿਹਾਸਿਕ ਸਾਂਝ ਪਵਾ ਦਿੰਦਾ ਲੇਕਿਨ ਅਸੀਂ ਬੋਲਦੇ ਨਹੀਂ ਦੂਸਰੇ ਪਾਤਸ਼ਾਹ ਵਲੇ ਤੀਸਰੇ ਪਾਤਸ਼ਾਹ ਵਲੇ ਚੌਥੇ ਪਾਤਸ਼ਾਹ ਵਲੇ ਔੜੰਗੀਆਂ ਪੈ ਰਹੀਆਂ ਨੇ ਮੁਸੀਬਤਾਂ ਆ ਰਹੀਆਂ ਨੇ ਪਰ ਅਸੀਂ ਬੋਲਦੇ ਨਹੀਂ ਅੰਤ ਨੂੰ ਇਹ ਜਿਹੜਾ ਰੂਪ ਹੈ ਇਹ ਅੰਤ ਨੂੰ ਉਸ ਸ਼ਹੀਦੇ ਦੇ ਨਾਲ ਜੁੜਦਾ ਤੇ ਜੁੜਨ ਤੋਂ ਬਾਅਦ ਇੱਕ ਐਸੀ ਐਬਰਪਟ ਚੇਂਜ ਆਉਂਦੀ ਹੈ ਸਭੀ ਪੰਥ ਦੇ ਵਿੱਚ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਉਹਦੀ ਚੇਂਜ ਨੇ ਉਹ ਸਬਦਿਲੀ ਨੇ ਇੱਕ ਐਸਾ ਮੋੜ ਦਿੱਤਾ ਸਾਨੂੰ ਇੱਕ ਐਸੀ ਸ਼ਬੀ ਦਿੱਤੀ ਇੱਕ ਐਸਾ ਤਖਤ ਦਿੱਤਾ ਜਿਹਨੂੰ ਅਸੀਂ ਸਮੁੱਚੇ ਪੰਥ ਦੇ ਵਿੱਚ ਅਕਾਲ ਤਖਤ ਦੇ ਨਾਮ ਨਾਲ ਜਾਣ ਕਰਦੇ ਹਾਂ ਉਸ ਤੋਂ ਬਾਅਦ ਫੇਰ ਲੈ ਲੋ 6ਵੇਂ ਪਾਚਾ 7ਵੇਂ ਪਾਚਾ 8ਵੇਂ 9ਵੇਂ ਤੱਕ ਫੇਰ ਇੱਕ ਐਸੀ ਘਟਨਾ ਹੁੰਦੀ ਹੈ ਜਿਨੇ ਐਬਰਪਟਲੀ ਸਾਨੂੰ ਐਸਾ ਹਲੂਣਾ ਦਿੱਤਾ ਕਿ ਉਸ ਹਲੂਨੇ ਨੇ ਇੱਕ ਨਵੀਂ ਕ੍ਰਾਂਤੀ ਕੀਤੀ ਇੱਕ ਨਵਾਂ ਸਮਾਜ ਸਿਰਜਤਾ ਇੱਕ ਨਵਾਂ ਦੇਸ਼ ਸਿਰਜਤਾ ਇੱਕ ਨਵਾਂ ਕਾਨੂੰਨ ਸਿਰਜਤਾ ਇੱਕ ਨਵਾਂ ਲੋਕਤੰਤਰ ਸਿਰਜਤਾ ਜਿੱਦੇ ਵਿੱਚ ਹਰ ਨਿੱਕੇ ਤੋਂ ਨਿੱਕਾ ਗਰੀਬ ਤੋਂ ਗਰੀਬ ਬੰਦਾ ਆਪਣੀ ਬਾਹ ਉਠਾ ਕੇ ਉਸ ਲੋਕਤੰਤਰੀ ਆਵਾਜ਼ ਦਾ ਹਿੱਸਾ ਬਣਿਆ ਮੈਂ اسی ਗੱਲ ਨੂੰ ਫਿਰ ਇੱਥੇ ਲੈ ਕੇ ਆ ਰਿਹਾ ਕਿ ਉਹ ਇੱਕ ਆਵਾਜ਼ ਬਣੇ ਉਸ ਤਬਦੀਲੀ ਨੂੰ ਮੈਂ ਦੇਖ ਰਿਹਾ ਕਿ ਜਦੋਂ ਉਹਨਾਂ ਦੇ ਪੋਸਟਰ ਪੰਜਾਬ ਦੇ ਪਿੰਡ-ਪਿੰਡ ਦੇ ਵਿੱਚ ਲੱਗੇ ਤਾਂ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਦਿਖਾਇਆ ਤੇ ਲੋਕਾਂ ਨੇ ਇੱਕ ਐਸੀ ਜਿੱਤ ਦਿੱਤੀ ਉਹਨਾਂ ਨੂੰ ਰਿਕਾਰਡ ਤੌਰ ਸਰਕਾਰਾਂ ਨੂੰ ਵੀ ਇਹ ਸੋਚਣਾ ਪੈ ਗਿਆ ਕਿ ਇਸ ਬੰਦੇ ਨੂੰ ਬਾਹਰ ਕੱਢ ਕੇ ਕੁਝ ਕਰਨਾ ਪੈਣਾ। ਪਰ ਉਹਨਾਂ ਦੀ ਜਿਹੜੀ ਰਾਜਨੀਤਿਕ ਵਿਚਾਰਧਾਰਾ ਨੂੰ ਅਮਲੀ ਚਾਮਾ ਪਹਿਨਾਉਣ ਦੇ ਵਿੱਚ ਉਹ ਕਿਤੇ ਨਾ ਕਿਤੇ ਠਿਰਕ ਗਏ। ਮੈਂ ਰੀਸੈਂਟਲੀ ਪਿਛਲੇ ਹਫ਼ਤੇ ਇੱਕ ਆਰਟੀਕਲ ਲਿਖਿਆ ਸੀਗਾ ਉਹਦੇ ਵਿੱਚ ਮੈਂ ਆਹੀ ਸਵਾਲ ਜਿਹੜਾ ਤੁਸੀਂ ਮੈਨੂੰ ਕੀਤਾ ਉਠਾਇਆ ਸੀ ਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਉਸ ਵਿਚਾਰਧਾਰਾ ਦੀ ਉਸ ਲੋਕਤੰਤਰੀ ਅਪਰੋਚ ਦੀ ਸਭ ਤੋਂ ਵੱਧ ਲੋੜਾ ਤੇ ਉਹ ਲੋਕ ਕਿੱਥੇ ਗਏ ਤੇ ਸਿੱਖ ਜਗਤ ਨੂੰ ਵੀ ਅੱਜ ਇਹ ਸਵਾਲ ਕਰਨਾ ਚਾਹੀਦਾ ਕਿ ਪੰਜਾਬ ਦੇ ਇਹਨਾਂ ਰਾਜਨੀਤਿਕ ਹਾਲਾਤਾਂ ਦੇ ਵਿੱਚ ਉਹਨਾਂ ਦੀ ਪਾਰਟੀ ਗੁੰਗੀ ਕਿਉਂ ਬਣੀ ਹੋਈ ਹੈ ਜਿਹੜੇ ਆਖਦੇ ਨੇ ਕਿ ਅਸੀਂ ਲੋਕਤੰਤਰੀ ਢੰਗ ਨਾਲ ਲੈਣਾ ਢੰਗ ਨਾਲ ਜਿਉਣਾ ਕੋ ਟੁਕਾ ਤਾਂ ਉਹਨਾਂ ਨੂੰ ਅੱਜ ਦੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਜ਼ਰੂਰ ਗੱਜਦੇ ਰਹਿਣਾ ਚਾਹੀਦਾ ਗੱਜਦੇ ਹੋਣਾ ਚਾਹੀਦਾ ਔਰ ਆਪਣੇ ਜਿਹੜੇ ਉਹਨਾਂ ਦੇ ਉਦੇਸ਼ ਨੇ ਆਪਣੇ ਜਿਹੜੇ ਉਹਨਾਂ ਦੇ ਅਕੀਦੇ ਨੇ ਉਹ ਦੁਬਾਰਾ ਫੇਰ ਤੋਂ ਲੋਕਾਂ ਦੇ ਨਾਲ ਜ਼ਰੂਰ ਸਾਂਝੇ ਕਰਨੇ ਚਾਹੀਦੇ ਨੇ ਹਜੀਜੀ ਧੰਨਵਾਦ ਜੀ ਅੱਛਾ ਹੁਣ ਪਾਰਟੀਆਂ ਦਾ ਕਿੰਨੇ ਪਾਰਟੀਆਂ ਦਾ ਆਪਾਂ ਅੱਜ ਦਾ ਸਟੇਟਸ ਇਹ ਗੱਲ ਕਿੰਨੀ ਕੁ ਠੀਕ ਹੈ ਕਿ ਕਾਂਗਰਸ ਦਾ ਗ੍ਰਾਫ ਹੈ ਜਿਹੜਾ ਦਿਨੋਂ ਦਿਨ ਉੱਚਾ ਹੋ ਰਿਹਾ ਹੈ ਅੱਜ ਸਵੇਰੇ ਕਿਸੇ ਨੇ ਸਰਵੇਖਣ ਭੇਜਿਆ 60 65 ਸੀਟਾਂ ਦਿਖਾ ਰਹੇ ਨੇ ਇੱਕ ਲੋਕਾਂ ਦਾ ਇਹ ਵੀ ਤੌਂਖਲਾ ਹੈ ਕਿਉਂਕਿ ਇਹ ਦੋਸਤ ਨੇ ਆਸ ਵਿੱਚ ਰਿਸ਼ਤੇਦਾਰੀਆਂ ਨੇ ਬਹੁਤ ক্লোਜ਼ ਨੇ ਉਹ ਕਹਿੰਦੇ ਵੀ ਇਹ ਵੀ ਨਾ ਹੋ ਜਵੇ ਵੀ ਕਿਤੇ ਵੋਟਾਂ ਜਿਹੜੀਆਂ ਦੋਨੇ ਪਾਰਟੀਆਂ ਰਲ ਕੇ ਇੱਕ ਦੂਜੇ ਦੇ ਕੈਂਡੀਡੇਟਾਂ ਨੂੰ ਅੰਦਰੋਂ ਸੈੱਟ ਕਰਕੇ ਪਾ ਦੇਣ ਇਹ ਜੀ ਪੋਸਿਬਿਲਟੀ ਹੈ ਪਹਿਲਾਂ ਕਾਂਗਰਸ ਦਾ ਕਰਿਓ ਵਿਸ਼ਲੇਸ਼ਣ ਤੇ ਫਿਰ ਦੂਸਰੀ ਗੱਲ ਕਰਿਓ ਕਿ ਇਕੱਠੇ ਨਾ ਹੋ ਜਾਣ ਵੀ ਜੇ ਦੇਖਿਆ ਜਾਵੇ ਵੀ ਆਮ ਆਦਮੀ ਪਾਰਟੀ ਦੀ ਚੜ੍ਹਤ ਬਹੁਤ ਹੈ ਤੇ ਉਸ ਨੂੰ ਰੋਕਿਆ ਜਾਵੇ ਅਸੀਂ ਦੋਨਾਂ ਚ ਕੋਈ ਸਰਕਾਰ ਬਣ ਜਾਏ ਹਜੀਤੀ ਇਹ ਗੱਲ 100% ਸਹੀ ਹੈ ਤੁਹਾਡੀ ਰੀਸੈਂਟਲੀ ਆਲਮੋਸਟ ਡੇਢ ਮਹੀਨਾ ਪਹਿਲਾਂ এবিপি ਸੰਧਾ ਦੇ ਨਾਲ ਇਹ ਗੱਲ ਸਮ ਕੈਪਟਨ ਅਮਿੰਦਰ ਸਿੰਘ ਸਾਫ਼ ਵੀ ਕਰ ਚੁੱਕਿਆ ਆਪਣੀ ਉਸ ਇੰਟਰਵਿਊ ਦੇ ਵਿੱਚ ਸਿੱਧੇ ਤੌਰ ਤੇ ਤਾਂ ਨਹੀਂ ਪਰ ਅਸਿੱਧੇ ਤੌਰ ਤੇ ਉਹਨਾਂ ਨੇ ਬਹਾਨੇ ਦੇ ਨਾਲ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਅਗਰ ਕੇਂਦਰ ਸਰਕਾਰ ਦੀ ਟੀਮ ਦੇਖੋ ਕਿਨੇ ਤਰੀਕੇ ਨਾਲ ਕਿ ਅਗਰ ਕੇਂਦਰ ਤੋਂ ਸਾਨੂੰ ਹੁਕਮ ਆਇਆ ਤਾਂ ਸਮਾਂ ਪੈਣ ਤੇ ਅਸੀਂ ਇਹਨਾਂ ਦੇ ਨਾਲ ਵੀ ਗੱਠ ਕਰ ਸਕਦੇ ਹਾਂ ਹੁਣ ਪਿੱਛੇ ਜਾਓ ਹੁਣ ਜਦੋਂ ਬਾਦਲ ਤੇ ਮਜੀਠੀਆ ਦੀ ਤੁਸੀਂ ਗੱਠ ਜੋੜ ਪਰਿਵਾਰ ਦੀ ਗੱਲ ਗਤ ਕਰਕੇ ਹਟਿਓ ਤਾਂ ਆਪਾਂ ਫੇਰ ਉੱਥੇ ਚਲੀ ਜਾਈਏ ਕਿ ਸਤਜੀਤ ਮਜੀਠੀਆ ਦੀ ਧੀ ਜਿਹੜੀ ਇਹਨਾਂ ਦੀ ਨੋ ਹਰ ਅ ਕੋਰ ਬਾਦਲ ਉਹਦਾ ਵਿਆਹ ਸੁਖਵੀਰ ਜੀ ਨਾਲ ਹੋਇਆ। ਸਾਲਾ ਸਭ ਕੌਣ ਨੇ? ਵਿਕਰਮਜੀਤਿਆ ਕੈਬਨਟ ਮੰਤਰੀ। ਚਾਚਾ ਹਰਰਾਜ ਦਾ ਮੁੰਡਾ ਲਾਲੀ ਢਿੱਲੋਂ ਕੰਮਕੀ ਜੀ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ। ਦੂਜੇ ਚਾਚੇ ਗੁਰਰਾਜ ਸਿੰਘ ਦਾ ਬੇਟਾ ਭਿੰਦੜ ਢਿੱਲੋਂ ਵੱਡੇ ਬਾਦਲ ਦੇ ਕੀ ਰਹੇ ਨੇ? 1997 ਤੋਂ ਲੈ ਕੇ 2000 ਤੱਕ ਪੋਲੀਟੀਕਲ ਸੈਕਟਰੀ। ਹੁਣ ਵੱਡੇ ਬਾਦਲ ਦੇ ਮਤਰੇਪਰਾ ਹਰਦੀਪਿੰਦਰ ਅਕਾਲੀ ਸਰਕਾਰ 'ਚ ਕੀ ਸੀਗੇ? ਟ੍ਰਾਂਸਪੋਰਟ ਮੰਤਰੀ। ਸੋ ਅ ਜੀ ਜੀ ਇਹ ਸਾਰੀ ਗੇਮ ਜਿਹੜੀ ਬਿਹਾਈਂਡ ਦਾ ਸੀਨਸ ਵੀ ਸਾਗੇ ਚੱਲ ਰਹੀ ਆ ਔਰ ਫਰੰਟ ਦਾ ਸੀਨ ਤਾਂ ਮੈਂ ਤੁਹਾਨੂੰ ਕਿੰਨੀ ਐਗਜ਼ਾਮਪਲਾਂ ਦੇ ਚੁੱਕੀਆਂ ਜਿਹੜਾ ਹੋ ਚੁੱਕਿਆ ਪਰਦੇ ਦੇ ਉੱਤੇ ਸਕਰੀਨ ਦੇ ਸਾਹਮਣੇ ਇਹ ਜਿੰਨੀ ਮਰਜੀ ਇੱਕ ਦੂਜੇ ਦੀ ਟੌਂਡੀ ਪਿੱਟੀ ਜਾਣ ਇੱਕ ਦੂਜੇ ਨੂੰ ਮਾਰਾ ਕਈ ਜਾਣ ਪਰਦੇ ਦੇ ਪਿੱਛੇ ਇਹਨਾਂ ਦੋਹਾਂ ਹੀ ਅਗੇਨ ਪਰਿਵਾਰਵਾਦੀ ਸੱਤਾ ਭੋਗਣ ਵਾਲੀਆਂ ਸਤਾਮਾਂ ਨੂੰ ਇੱਕ ਖਤਰਾ ਪਿਆ ਪਿਆ ਕਿ ਅਗਰ ਇਹ ਸੱਤਾ ਸਾਡੇ ਹੱਥੋਂ ਨਿਕਲ ਕੇ ਕਿਸੇ ਹੋਰ ਜਗ੍ਹਾ ਤੇ ਚਲੀ ਗਈ ਤਾਂ ਅਸੀਂ ਦੋਨੇ ਜਣੇ ਮਾਰੇ ਜਾਵਾਂਗੇ ਸਾਡਾ ਜਿਹੜਾ ਢਾਂਚਾ ਸਾਡਾ ਜਿਹੜਾ ਪਰਿਵਾਰਕ ਵਿਰਾਸਤ ਆ ਜਿਹੜੀ ਸਿਆਸਤ ਸਾਡੀ ਉਹ ਸਾਡੇ ਹੱਥੋਂ ਖੁੱਸ ਨਾ ਜਾਵੇ ਜੀ ਹਾਂ ਜੀ ਜੀ ਅੱਛਾ ਜੀ ਤੇ ਜੇ ਅੱਜ ਜਿਵੇਂ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਤੁਸੀਂ ਸੋਚਦੇ ਹੋ ਵੀ ਵਾਕਿਆ ਹੀ ਉਹ ਪਾਰਟੀ ਜਿਸ ਨੇ ਸਾਡਾ ਕਤਲ ਕੀਤਾ ਜਿਨ੍ਹਾਂ ਨੇ ਸਭ ਤੋਂ ਵੱਧ ਜ਼ੁਲਮ ਕੀਤਾ ਜਿਨ੍ਹਾਂ ਨੇ ਸਾਡਾ ਪਾਕ ਜਗਾ ਸਾਡੀ ਮੀਰੀ ਪੀਰੀ ਦੀ ਜਗਾ ਸਾਡੀ ਜਿੱਥੇ ਕੋਈ ਵੀ ਵਰਨ ਧਰਮ ਦਾ ਬੰਦਾ ਆ ਕੇ ਸਜਦਾ ਕਰਦਾ ਰੂਹ ਤੇ ਛੱਡਦੀ ਉਹਨੂੰ ਖਰਾਕ ਮਿਲਦੀ ਹੈ ਜਿੱਥੋਂ ਸਾਡਾ ਜਿੱਥੇ ਇਮੋਰਟਲ ਤਖਤ ਹੈ ਦੁਨੀਆ ਦੇ ਤਖਤਾਂ ਤੋਂ ਉੱਚਾ ਜਿਹੜਾ ਕਦੇ ਵੀ ਨਹੀਂ ਕਿਤੇ ਵੀ ਨਹੀਂ ਖਤਮ ਹੋ ਸਕਦਾ ਉਸ ਤਖਤ ਤੇ ਫੌਜਾਂ ਜਿਸ ਸਰਕਾਰ ਨੇ ਚਾੜੀਆਂ ਉਸ ਉਸ ਦੇ ਵਿੱਚ ਜਿੱਥੇ ਸਭ ਤੋਂ ਵੱਧ ਜੰਗਜੂ ਸਾਹਮਣੇ ਹੋ ਉਸ ਖਿੱਤੇ ਦੇ ਵਿੱਚ ਕਾਂਗਰਸ ਅੱਗੇ ਜਾ ਰਹੀ ਹੈ ਗੱਲ ਠੀਕ ਹੈ ਮੇਰੀ ਖਿਆਲ ਦੇ ਵਿੱਚ ਨਹੀਂ ਹਰਜੀਤ ਜੀ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਸਮੀਕਰਨ ਕਿਸੇ ਵੀ ਇਲਾਕੇ ਬਾਰੇ ਕ੍ਰੀਏਟ ਕਰਨੀ ਬਹੁਤ ਔਖੀ ਹੈ ਉਸ ਔਖੀ ਦਾ ਅ ਜਿਹੜਾ ਮੈਂ ਸ਼ਬਦ ਬਦ ਪ੍ਰਿਆ ਕੇ ਸਮੀਕਰਨ ਔਖੀ ਹੈ ਉਹਦਾ ਸਾਨੂੰ ਪਿਛਲੇ 10 ਸਾਲਾਂ ਦੇ ਜੋ ਕਨੈਕਟਿੰਗ ਹਿਸਟਰੀ ਆ ਉਸ ਇਲਾਕੇ ਦੀ ਉਹਦੇ ਨਾਲ ਜ਼ਰੂਰ ਜੁੜਨਾ ਪਊਗਾ ਅੱਜ ਦੇ ਹਾਲਾਤ ਗਰਾਉਂਡ ਰਿਪੋਰਟਸ ਨੇ ਅਗਰ ਉਥੋਂ ਦੇ ਵਾਕਈ ਪਿੰਡਾਂ ਦੇ ਵਿੱਚ ਜਾ ਕੇ ਅਗਰ ਤੁਹਾਡਾ ਕੋਈ ਵਿਸ਼ਵਾਸਪਾਤਰ ਉਸ ਤੋਂ ਇਲਾਵਾ ਆਪਾ ਤੱਪੀ ਪਈ ਹੋਈ ਹੈ ਹਰ ਇੱਕ ਬੰਦਾ ਇੱਕ ਦੂਜੇ ਨੂੰ ਕਹਿਰੀ ਅੱਖ ਨਾਲ ਦੇਖ ਰਿਹਾ ਛੋਟਾ ਨੇਤਾ ਹੋਵੇ ਵੱਡਾ ਨੇਤਾ ਹੋਵੇ ਜੰਦਰ ਸਭ ਦੀ ਨਜ਼ਰ ਦੇ ਵਿੱਚ ਵੋਟ ਬੈਂਕ ਤੇ ਆ ਜਿਹੜਾ ਅੱਜ ਵੀ ਖੜੀ ਸਭ ਤੋਂ ਵੱਡਾ ਸਰਮਾਇਆ ਉੱਥੇ ਕਿਸੇ ਦੇ ਲਈ ਉਹ ਲੋਕਤੰਤਰੀ ਢਾਂਟੇ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਅਸੀਂ ਕਿਸੇ ਵੀ ਇਲਾਕੇ ਨੂੰ ਕਿਸੇ ਵੀ ਪਾਰਟੀ ਦੇ ਨਾਲ ਜੋੜ ਦੇ ਜੋੜ ਕੇ ਨਹੀਂ ਦੇ ਸਕਦੇ ਹਾਂ 4 ਤਰੀਕ ਨੂੰ ਚੋਣਾਂ ਹੋਣ ਤੋਂ ਬਾਅਦ ਜਿਹਨੂੰ ਅਸੀਂ ਐਗਜ਼ਿਟ ਪੋਲ ਕਹਿੰਦੇ ਆ ਉਹ ਸਮ ਸਾਨੂੰ ਕਿਸੇ ਹੱਦ ਤੱਕ ਕੋਈ ਧੰਚਾ ਬਖ ਸਕਦਾ ਜਾਂ ਕੋਈ ਤਨਛੇ ਬਲ ਸੰਕੇਤ ਕਰ ਸਕਦਾ ਮੈਨੂੰ ਪਰਸੋਂ ਦੀ ਜਿਹੜੀ ਰਿਪੋਰਟ ਮਿਲੀ ਹਲਕਾ ਦਾਖਾ ਦੇ ਵਿੱਚੋਂ ਆ ਚਾਰ ਪੰਜ ਪਿੰਡਾਂ ਦੇ ਵਿੱਚ ਆ ਦਾ ਜੋ ਮੌਜੂਦਾ ਵਿਦਾਂਸਭਾ ਦਾ ਮੈਂਬਰ ਹੈ ਆ ਕੋਈ ਕਿਆਲੀ ਕਰਕੇ ਹੈ ਉਹਨੇ ਆਪਣੇ ਆਪਣੇ ਬੰਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਕੋਲੇ ਸਰਪੰਚਾਂ ਦੇ ਕੋਲੇ ਭੇਜੇ ਆਪਣੀਆਂ ਆਪਣੀਆਂ ਲਿਸਟਾਂ ਉਹਨੂੰ ਪ੍ਰੋਵਾਈਡ ਕਰਨ ਦੀ ਖਾਤਰ ਸੋ ਹੁਣ ਜਿਹੜੇ ਵਿਚਾਰੇ ਨਰਮ ਹੋਣਗੇ ਉਹਨਾਂ ਨੇ ਉਹਨੂੰ ਉਹ ਜਿਹੜੀ ਲਿਸਟ ਪ੍ਰੋਵਾਈਡ ਕਰ ਦਿੱਤੀ ਤੇ ਕਈ ਜਿਹੜੇ ਅਕਰੂ ਨੇ ਜਾਂ ਜਿਨ੍ਹਾਂ ਦੀ ਆਪਣੇ ਕੋਈ ਸੋਚ ਆ ਉਹਨਾਂ ਨੇ ਉਹਨੂੰ ਉਹ ਲਿਸਟ ਦੇਣ ਤੋਂ ਮਨਾ ਕਰ ਦਿੱਤਾ ਸੋ ਇਹੀ ਹਾਲਾਤ ਬਾਕੀ ਰਾਜਨੀਤਿਕ ਸੱਤਾ ਜਿਹੜੀ ਇਸ ਸਮੇਂ ਕਾਬਜ਼ ਹੈ ਉਹਦੇ ਵੱਲੋਂ ਵੀ ਉਹ ਕੋਸ਼ਿਸ਼ਾਂ ਬਾਕੀ ਰਾਜਾਂ ਦੇ ਵਿੱਚ ਹੋ ਰਹੀਆਂ ਹੋਣਗੀਆਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਇਹਦੇ ਵਿੱਚ ਕੋਈ ਝੂਠ ਨਹੀਂ ਹੋ ਸਕਦਾ ਹੁਣ ਉਹਨਾਂ ਦਾ ਜਿਹੜਾ ਪ੍ਰੈਸ਼ਰ ਆ ਉਹਨਾਂ ਦਾ ਜਿਹੜਾ ਜ਼ੋਰ ਆ ਉਹ ਅੰਤ ਨੂੰ ਪੋਲਿੰਗ ਬੂਥਾਂ ਤੱਕ ਵੀ ਚਲਣਾ ਅਜੇ ਜੀ ਉਹਨਾਂ ਦੀ ਇੱਕ ਕੋਸ਼ਿਸ਼ ਹੋਏਗੀ ਕਿ ਆਪਣੇ ਸਟਰੋਂਗ ਬੰਦੇ ਆਪਣੇ ਬਦਮਾਸ਼ ਬੰਦੇ ਆਪਣੇ ਗੈਂਗਸਟਰ ਬੰਦੇ ਉਹਨਾਂ ਬੂਥਾਂ ਤੱਕ ਵੀ ਪਹੁੰਚਾਣ ਤਾਂ ਕਿ ਕਮਜ਼ੋਰ ਅੱਖਾਂ ਦੇ ਨਾਲ ਹੀ ਇਹ ਕਹਿ ਦਿੱਤਾ ਜਾਵੇ ਕਿ ਚੱਲ ਮੇਰੇ ਨਾਲ ਚੱਲ ਅੰਦਰ ਚੱਲ ਸੋ ਇਹ ਜਿਹੜੀ ਸਿਚੁਏਸ਼ਨ ਆ ਇਹਨੇ ਇੱਕ ਨਵੀਂ ਤਸਵੀਰ ਸਾਡੇ ਸਾਹਮਣੇ ਲੈ ਕੇ ਆਉਣੀ ਆ ਦੂਜੀਆਂ ਪਾਰਟੀਆਂ ਪੋਲਿੰਗ ਬੂਥ ਤੱਕ ਜਾਣ ਤੋਂ ਲੈ ਕੇ ਹੋਂਦੇ ਪ੍ਰਚਾਰ ਤੋਂ ਲੈ ਕੇ ਲੋਕਾਂ ਦੀ ਨਬਜ਼ ਪੱਕਣ ਤੱਕ ਇਹ ਸਾਰੇ ਸਵਾਲ ਉਦੋਂ ਤੱਕ ਗੁੱਝੇ ਨੇ ਔਰ ਗੁੱਝੇ ਰਹਿਣਗੇ ਜਦੋਂ ਤੱਕ ਸਤਿਆ ਹੋਇਆ VOTER ਪਿਛਲੇ ਸਾਲਾਂ ਦੇ ਜੋ ਸੰਤਾਪ ਹੰਡਾਰਿਆ VOTER ਉਹ ਆਪਣਾ ਸਹੀ ਫੈਸਲਾ ਅੰਦਰ ਜਾ ਕੇ ਨਹੀਂ ਕਰਦਾ ਜੀ ਹਾਂ ਜੀ ਇਹ ਖਦਸ਼ਾ ਲੋਕਾਂ ਨੂੰ ਕਿ ਹਾਲੇ ਵੀ ਬੂਟ ਕੈਪਚਰਿੰਗ ਹੋ ਸਕਦੀ ਆ ਪਰ ਲੋਕ ਬਹੁਤ ਆਕੀ ਹੋਏ ਹੋਇਆ ਜੀ ਮੈਂ ਇਸ ਤਰ੍ਹਾਂ ਦਾ ਜਿੰਨੀ ਕੁ ਸੋਝੀ ਆ ਮੈਂ ਇਹੋ ਜੀ ਕੋਈ ਇਲੈਕਸ਼ਨ ਨਹੀਂ ਵੇਖੀ 7 ਵਾਲੀ ਇਲੈਕਸ਼ਨ ਤੇ 12 ਵਾਲੀ ਇਲੈਕਸ਼ਨ ਉੱਥੇ ਸਾਂ ਮੈਂ 2 ਵਾਲੀ ਵਿੱਚ ਵੀ ਉੱਥੇ ਸਾਂ ਇਹੋ ਜਿਹਾ ਕੁਝ ਨਹੀਂ ਵੇਖਿਆ ਪਾਰਟੀਆਂ ਦੋਨੋਂ ਸੀ ਇੱਕ ਦੂਜੇ ਦੇ ਸਿਰ ਤੇ ਨਹੀਂ ਸੀ ਚੜਦੇ ਪਰ ਲੋਕ ਇੰਨੇ ਗੁੱਸੇ 'ਚ ਨੇ ਨਾ ਜੀ ਉਹਦਾ ਉਹਦੇ ਤੋਂ ਨਿਰਣਾ ਲਾਇਆ ਜਾ ਸਕਦਾ ਗੱਲ ਕਿਤੇ ਅੱਛਾ ਹੁਣ ਅਕਾਲੀ ਦਲ ਤੇ ਬੀਜੇਪੀ ਦੀ ਸਾਂਝੀ ਸਰਕਾਰ ਦੀ ਗੱਲ ਚੱਲੀਏ ਕਰੀਏ ਸੜਕਾਂ ਵਿਕਾਸ ਦੇ ਨਾਂ ਤੇ ਵੋਟਾਂ ਦੀ ਗੱਲ ਹੈ ਸੜਕਾਂ ਬਣ ਗਈਆਂ ਸੁੰਦਰੀਕਰਨ ਹੋ ਗਿਆ ਵਿਰਾਸਤੀ ਦਿਖ ਹੋ ਗਈ ਸ਼ੁਭਦਾ ਸੈਂਟਰ ਬਣ ਗਏ ਸ਼ਗਨ ਸਕੀਮਾਂ ਬਣਾਤੀਆਂ ਉਸ ਤੋਂ ਬਾਅਦ ਪਾਣੀ ਬਿਜਲੀ ਫ੍ਰੀ ਜਟਾਂ ਨੂੰ ਇੰਨਾ ਕੁਝ ਹੋਣ ਦੇ ਬਾਵਜੂਦ ਪੰਜਾਬ ਦੇ ਲੋਕ ਆਕੀ ਕਿਉਂ ਨੇ ਕਿ ਇੱਕ 50 ਸਾਲ ਰਾਜ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਵੋਟਰ ਨੂੰ ਉਨੇ 2 ਮਿੰਟ ਲਾਉਣੇ ਪੈਂਦੇ ਆ ਕਾਕਾ ਜੀ ਮੇਰੀ ਮਦਦ ਕਰਿਓ ਮੇਰੀ ਇੱਜ਼ਤ ਦਾ ਸਵਾਲ ਆ ਮੇਰੀ ਜ਼ਾਤ ਦਾ ਸਵਾਲ ਆ ਨਾਲ ਹੋਵੋ ਭੁੱਲ ਜਾਓ ਜੀ ਸਾਰਾ ਕੁਝ ਹੁਣ ਮਦਈ ਹੋ ਕੇ ਮੇਰੇ ਸਾਹਮਣੇ ਆਓ ਤੇ ਫਟੇ ਹੁਣ ਜਕਾਰਾ ਛੱਡੋ ਤੇ ਇਸ ਤਰ੍ਹਾਂ ਮੈਂ ਕੋਈ ਹਲਪਲੈਸ ਇਨਸਾਨ ਹੀ ਹੂੰ ਵੇਖਿਆ ਜਿਹਦਾ ਐਡਾ ਰਤਬਾ ਹੋਵੇ ਤੇ ਮੁੰਡੇ ਮੂਰਾ ਭੱਜ-ਭੱਜ ਕੇ ਪੈ ਰਿਹਾ ਉਹ ਕਹਿੰਦਾ ਭੱਜ ਕੇ ਇਹਦਾ ਸੈਂਸ ਉਹ ਕਹਿ ਰਿਹਾ 5 ਸਾਲ ਗੇੜੇ ਕੱਢਦੇ ਰਹੇ ਆ ਸਾਡੀ ਬਾਤ ਨਹੀਂ ਅੰਕਲ ਜੀ ਕਿਸ ਨੇ ਪੁੱਛਿਓ ਕਹਿੰਦਾ ਤੂੰ ਨਾਲੇ ਅੰਕਲ ਕਹਿੰਦਾ ਨਾਲੇ ਮੇਰੀ ਇੱਜ਼ਤ ਦਾ ਖਿਆਲ ਨਹੀਂ ਰੱਖਦਾ ਇਹ ਜਿਹੀਆਂ ਗੱਲਾਂ ਕਿਉਂ ਹੋ ਰਹੀਆਂ ਜੀ ਕਿੱਥੇ ਗੱਲ ਹੋਈ ਕੀ ਆ ਸਭ ਜੀ ਜੀ ਮੈਂ ਸਭ ਤੋਂ ਪਹਿਲਾ ਜਿਹੜਾ ਨੁਕਤਾ ਆਪਣੇ ਸਰੋਤਿਆਂ ਨਾਲ ਸਾਂਝਾ ਕਰਨ ਜਾ ਰਿਹਾ ਉਹ ਇਹ ਹੈ ਕਿ ਜਦੋਂ ਸਮਾਜ ਦੇ ਵਿੱਚ ਅ ਦਿਸੇ ਵਿਕਾਸ ਸੜਕਾਂ ਰਾਹੀਂ ਜਾਂ ਦਿਸੇ ਵਿਕਾਸ ਫਰੀ ਦੀਆਂ ਦੇਣ ਵਾਲੀਆਂ ਸਕੀਮਾਂ ਰਾਹੀਂ ਜਫਰੀ ਦਾ ਆਟਾ ਦਾ ਚਾਵਲ ਜਾਂ ਫਰੀ ਦਾ ਕੁਝ ਵੀ ਤੁਸੀਂ ਕਹ ਲਓ ਵੀ ਮੁਫਤ ਦੇ ਵਿੱਚ ਪੰਡਾ ਚਾਰਿਆ ਪਰ ਅੰਤ ਨੂੰ ਜਦੋਂ ਉਹਦੀ ਵੰਡ ਸਿਰਫ ਤੇ ਸਿਰਫ ਤੁਹਾਡੇ ਆਪਣੇ ਜ਼ਹੀਕੀਆਂ ਤੱਕ ਸੀਮਿਤ ਰਹਿ ਜਾਵੇ ਤਾਂ ਇਹ ਕੁਦਰਤਨਾ ਹੈ ਕਿ ਉਸ ਛੋਟੇ ਵਰਗ ਦੀਆਂ ਜੋ ਖੁਸ਼ੀਆਂ ਉਹ ਗਾਇਬ ਹੋਣਗੀਆਂ ਉਹਨਾਂ ਦੇ ਚਾ ਮਲਾਰਨੇ ਜਿਹੜੇ ਉਹ ਵੀ ਗਾਇਬ ਹੋਣਗੇ ਉਹਦੇ ਨਾਲ ਉਹਨਾਂ ਦੇ ਸੁਫਨੇ ਵੀ ਗਾਇਬ ਹੋਣਗੇ ਤੇ ਨਾਲ ਦੀ ਨਾਲ ਇਹ ਉਹ ਲੋਕ ਜਿਨ੍ਹਾਂ ਦੇ ਸੁਫਨੇ ਗਾਇਬ ਹੋਏ ਜਿਨ੍ਹਾਂ ਦੀਆਂ ਖੁਸ਼ੀਆਂ ਗਾਇਬ ਹੋਈਆਂ ਉਹ ਇਹ ਵੀ ਦੇਖ ਰਹੇ ਨੇ ਕਿ ਪਿਛਲੇ 10 ਸਾਲਾਂ ਦੇ ਵਿੱਚ ਬਾਦਲ ਸਾਹਿਬ ਕੋਲੇ ਜਿਹੜੀ ਜਮਾ ਸੰਪਤੀ ਸੀ ਉਹ 14.59 ਕਰੋੜ ਤੇ ਵੱਡੇ ਬਾਦਲ ਜੀ ਦੀ ਜਿਹੜੀ ਪ੍ਰਾਪਰਟੀ ਆ ਉਹ ਪਿਛਲੇ ਸਾਲਾਂ ਦੇ ਵਿੱਚ 8 ਕਰੋੜ ਵੱਧ ਗਈ ਤੇ ਛੋਟੇ ਬਾਦਲ ਸਾਹਿਬ ਦੀ ਜਿਹੜੀ ਇਹੀ ਸੰਪਤੀ ਆ ਉਹ 10 ਕਰੋੜ ਵੱਧ ਗਈ ਮਜੀਠੀਆ ਸਾਹਿਬ ਜਿਹੜੇ ਇਹਨਾਂ ਦੇ ਆਪਣੇ ਪਰਿਵਾਰਕ ਮੈਂਬਰ ਨੇ ਉਹ 10 ਸਾਲਾਂ ਦੇ ਵਿੱਚ 9 ਕਰੋੜ ਤੋਂ 25 ਕਰੋੜ ਹੋ ਗਈ ਜੀ ਜੀ ਸੋ 14 ਕਰੋੜ ਸਿਰਫ ਪਿਛਲੇ 5 ਸਾਲਾਂ ਦੇ ਵਿੱਚ ਜਿਸ ਬੰਦੇ ਦੀ ਪ੍ਰਾਪਰਟੀ ਵੱਧ ਗਈ ਤੇ ਦੂਸਰੇ ਪਾਸੇ ਸੁਪਨੇ ਗਾਇਬ ਹੋ ਰਹੇ ਨੇ ਔਰ ਉਸ ਤੋਂ ਬਾਅਦ ਅੱਗੇ ਆਈਏ ਡਰੱਗ ਰੈਕਡ ਜਿਹੜਾ ਜਿਹਦਾ ਅਸੀਂ ਜ਼ੋਰ ਸ਼ੋਰ ਦੇ ਨਾਲ ਘਰ ਘਰ ਤੱਕ ਪਰਿਵਾਰ ਪਰਿਵਾਰ ਤੱਕ ਜਿਹਦਾ ਨਤੀਜਾ ਦੇਖ ਰਹੇ ਆ ਹੰਡਾ ਰਹੇ ਆ ਔਰ ਅੱਗੇ ਹੋਰ ਹੰਡਾਉਣਾ ਪੈਣਾ ਸਾਨੂੰ ਘਟੋ ਘਟ ਇੱਕ ਪੀੜੀ ਤੱਕ ਉਹਦੀ ਜਾਂਚ ਆਉਂਦੀ ਹੈ ਰਾਈਟ ਤਿੰਨ ਆਈਜੀ ਜਿਹੜੇ ਸਾਡੀ ਚਿਹਤਾ ਬਾਦਲ ਸਾਹਿਬ ਦੀ ਸਰਕਾਰ ਵੱਲੋਂ ਲਾਏ ਗਏ ਨੇ ਈਸ਼ਵਰ ਜੀ ਈਸ਼ਵਰ ਜੀ ਨਗੇਸ਼ਵਰ ਜੀ ਤੇ ਨੀਰਜ ਜੀ ਉਹਨਾਂ ਦੀ ਰਿਪੋਰਟ ਇਹ ਦੱਸ ਰਹੀ ਆ ਕਿ ਇਹ ਜਿਹੜਾ ਰੈਕਟ ਸੀ ਸਿਰਫ 60 ਕਰੋੜ ਦਾ ਪਿੱਛੇ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਇਹ ਕਹਿੰਦਾ ਕਿ ਇਹ ਜਿਹੜਾ ਕੰਪਲੀਟ ਅੰਦਲਾ ਇਹ ਜਿਹੜਾ ਕੰਪਲੀਟ ਕਾਂਡ ਹੋਇਆ ਉਹ 6000 ਕਰੋੜ ਦਾ ਸੀ ਹੁਣ ਹਜਾਰ ਕਰੋੜ ਤੋਂ ਇਹਨਾਂ ਦੀ ਜਿਹੜੀ ਐਸਆਈਟੀ ਟੀਮਾਂ ਉਹਨੇ ਉਹਨੂੰ 60 ਕਰੋੜ ਤੇ ਲੈ ਆਂਦਾ ਪੁਲਿਸ ਦੀ ਐਸਆਈਟੀ ਚ ਸਿਰਫ 60 ਕਰੋੜ ਰਹਿ ਗਿਆ ਜਿਹੜੀ ਐਸਆਈਟੀ ਰਿਪੋਰਟ ਬਣਾਈ ਗਈ ਹੈ ਉਹਦੇ ਵਿੱਚ ਉਹਨਾਂ ਤਿੰਨਾਂ ਤਸਕਰਾਂ ਦਾ ਨਾਮ ਹੀ ਗੁੰਮਾ ਖੜੀ ਚੀ ਜਿਹੜਾ ਕੇ ਸਤਪ੍ਰੀਤ ਸੱਤਾ ਸੀ ਪਰਮਿੰਦਰ ਸਿੰਘ ਇਸੀ ਅਮਰਿੰਦਰ ਲਾਡੀ ਸੀ ਉਹ ਬੰਦਿਆਂ ਦਾ ਨਾਮ ਹੀ ਐਸਆਈਟੀ ਚ ਗੋਮਾ ਹੁਣ ਪਿੰਦੇ ਤੇ ਲਾਡੀ ਤੇ ਰੈੱਡ ਕਰਾਸ ਨੋਟਿਸ ਜਾਰੀ ਕਰਨ ਦੀ ਕੀ ਨਾਮ ਹੈ ਜੀ ਐਨਆਰਆਈ ਜਿਹੜਾ ਅਨੂਪ ਕਲਨੂਆ ਜਿਹਦੇ ਕੋਲੋਂ ਸਭ ਤੋਂ ਖੁਲਾਸਾ ਹੋਇਆ ਉਹਦੇ ਬਿਆਨ ਵੀ ਐਸਆਈਟੀ ਨੂੰ ਸੌਂਪੇ ਗਏ ਹੁਣ ਜਦੋਂ ਫਾਈਨਲ ਰਿਪੋਰਟ ਤਿਆਰ ਕੀਤਾ ਤੇ ਉਹਦੇ ਵਿੱਚ ਉਹਦਾ ਨਾਮ ਵੀ ਹੈ ਨਹੀਂ ਤੇ ਬਾਕੀ ਤੇਰੀ ਰੈਂਬੀ ਖੁੰਦੀ ਕਸਰ ਆ ਪੰਜਾਬ ਦੇ ਕੰਪਲੀਟ ਹਾਲਾਤਾਂ ਦੀ ਉਹਦੇ ਵਿੱਚ ਅਸੀਂ ਕਿਸਾਨ ਵਰਗ ਨੂੰ ਲੈ ਕੇ ਆਉਨੇ ਆਂ ਤੇ ਸਾਡਾ 80% ਇਨਕਮ ਸਾਡਾ 80% ਕਾਰੋਬਾਰ ਸਾਡਾ 80% ਜੰਤਰ ਤੰਤਰ ਮੰਤਰ ਸਾਰਾ ਪੰਜਾਬ ਦਾ ਉਹ ਉਹਨਾਂ ਲੋਕਾਂ ਤੇ ਖੜਾ ਹੈ ਤੁਸੀਂ ਫ੍ਰੀ ਬਿਜਲੀ ਦੇਤੀ ਕੀ ਫ੍ਰੀ ਬਿਜਲੀ ਕਿਸਾਨ ਲੈਣੀ ਚਾਹੁੰਦਾ ਬਿਲਕੁਲ ਨਹੀਂ ਚਾਹੁੰਦਾ ਉਹ ਕਹਿੰਦਾ ਮੈਨੂੰ ਬਿਜਲੀ ਦਿਓ ਮੇ ਤੋਂ ਠੀਕ ਕੀਮਤ ਲਓ ਪਰ ਉਹ ਸਮੇਂ ਤੇ ਆਉਣੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜਾ ਨਰਮੇ ਦੇ ਪਿੱਛੇ ਜਿਹੜਾ ਤੁਸੀਂ ਦੇਖਿਆ ਕਿੰਨੇ ਕਿੰਨੇ ਲੋਕਾਂ ਨੇ ਉਹਦੇ ਵਿੱਚ ਆਪਣਾ ਜੀਵਨ ਜਿਹੜਾ ਉਹ ਵਿਚਾਰੇ ਨੇ ਦੁਸ਼ਵਾਰ ਕਰ ਲਿਆ ਅੱਜ ਵੀ ਡੇਟ ਦੇ ਵਿੱਚ ਨੋਟਬੰਦੀ ਦੇ ਕਾਰਨ ਕਿੰਨੇ ਆ ਲੋਕਾਂ ਨੂੰ ਆਪਣੀਆਂ ਸਬਜ਼ੀਆਂ ਦੀਆਂ ਫਸਲਾਂ ਜਿਹੜੀਆਂ ਉਹ ਬੋਣੀਆਂ ਪਈਆਂ ਤੇ ਉਸ ਸਮੇਂ ਇਹ ਪਰਿਵਾਰ ਇਹ ਸਰਕਾਰ ਜਿਹੜੀ ਹੁਣ ਲੇਲ ਕੱਢ ਕੇ ਲੋਕਾਂ ਦੇ ਕੋਲੋਂ ਅਕੀਦੇ ਮੰਗਦੀ ਆ ਇਹਨਾਂ ਨੂੰ ਲੋਕ ਪੁੱਛਦੇ ਨੇ ਕਿ ਤੁਸੀਂ ਉਦੋਂ ਕਿੱਥੇ ਗਏ ਸੀ ਉਸ ਸਮੇਂ ਜਦੋਂ ਸਾਡੀ ਸਾਡੇ ਤੇ ਮੁਸੀਬਤ ਸੀ ਉਸ ਸਮੇਂ ਤੁਸੀਂ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਉਹਨਾਂ ਦੋਸ਼ੀਆਂ ਦੇ ਨਾਂ ਕੱਟਣ ਦੇ ਵਿੱਚ ਉਹਨਾਂ ਦੋਸ਼ੀਆਂ ਦੇ ਥਰੂ ਆਪਣੀ ਪਕੜ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਸੀ ਤੇ ਅੱਜ ਸਾਠ ਹੱਥ ਮਜ਼ਬੂਤ ਕਰਨ ਦੀ ਜਿਹੜਾ ਟਾਈਮ ਆ ਗਿਆ ਔਰ ਉਸ ਤੋਂ ਬਾਅਦ ਇੱਕ ਨਵਾਂ ਜਿਹੜਾ ਵਰਤਾਰਾ ਇਹਨਾਂ ਚੋਣਾਂ ਦੇ ਵਿੱਚ ਹਰ ਜਿੱਤੀ ਦੇਖ ਨੂੰ ਮਿਲਦਾ ਉਹ ਹੈ ਮਿੱਟੀ ਦਾ ਮੋਹ ਅਸੀਂ ਸਾਰੇ ਜਾਣਦੇ ਹਾਂ ਮੈਂ ਵੀ ਇਸ ਸਮੇਂ ਪ੍ਰਦੇਸਾਂ ਦੀ ਧਰਤੀ ਤੇ ਬੈਠਾ ਤੁਸੀਂ ਵੀ ਪ੍ਰਦੇਸਾਂ ਦੀ ਧਰਤੀ ਤੇ ਕਿਸ ਇਨਸਾਨ ਦਾ ਜੀ ਕਰਦਾ ਕਿ ਉਸ ਮਿੱਟੀ ਦਾ ਮੂੰਹ ਉਸ ਜਨਮ ਭੂਮੀ ਦਾ ਮੂੰਹ ਠੀਨ ਸਭ ਦੀਆਂ ਅੱਖਾਂ ਅੱਜ ਦੀ ਡੇਟ ਦੇ ਵਿੱਚ ਜੋ ਵੀ ਬੰਦਾ ਬਾਹਰ ਆ ਆਪਣੀ ਜਨਮ ਭੂਮੀ ਪੰਜਾਬ ਵੱਲ ਲੱਗੀਆਂ ਹੋਈਆਂ ਨੇ ਕਈ ਐਨ ਆਰ ਆਈ ਵੀਰ ਜਿਨ੍ਹਾਂ ਦੇ ਮਾਂ-ਬਾਪ ਵੀ ਇਸ ਦੁਨੀਆ ਤੋਂ ਚਲੇ ਗਏ ਨੇ ਉਸ ਧਰਤੀ ਤੇ ਇਸ ਮਿੱਟੀ ਦੇ ਮੋਹ ਕਰਕੇ ਰਾਜਨੀਤਿਕ ਵਰਤਾਰੇ ਤੇ ਗਤੀਵਿਧੀਆਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਵਹੀਰਾਂ ਕੱਤ ਕੇ ਜਹਾਜ਼ਾਂ ਦੇ ਜਹਾਜ਼ ਪਰ ਕੇ ਆਪਣੀ ਜਮਣ ਕੋਈ ਤੇ ਪਹੁੰਚੇ ਹੋਏ ਨੇ ਅੱਜ ਵੀ ਦੇਸ਼ ਦੇ ਵਿੱਚ ਹੁਣ ਉਹਨਾਂ ਦੇ ਮਨ ਦੇ ਵਿੱਚ ਇੱਕ ਆਸ ਜੁੜੀ ਹੋਈ ਹੈ ਉਹ ਉਮੀਦ ਕੀ ਹੈ ਉਹ ਆਸ ਕੀ ਹੈ ਕਿ ਉਹਨਾਂ ਦਾ ਪਾਇਆ ਹੋਇਆ ਫੇਰਾ ਸਿਆਸੀ ਹਲਕਿਆਂ ਦੇ ਵਿੱਚ ਕੋਈ ਤਬਦੀਲੀ ਲਿਆਉਣ ਲਈ ਸ਼ਾਇਦ ਸਹਾਇ ਹੋਵੇਗਾ ਜਿੰਨਾ ਕਰਨਾ ਕਰਕੇ ਜਿੰਨਾ ਵਜਾਵਾ करके ਉਹਨਾਂ ਨੂੰ ਆਪਣਾ ਵਤਨ ਛੱਡਣ ਲਈ ਮਜਬੂਰ ਹੋਣਾ ਪਿਆ ਸੀ ਉਹ ਕਾਰਨ ਫੇਰ ਕਿਤੇ ਹੋਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਪਿੰਡੇ ਤੇ ਨਾ ਹੰਡਾਉਣੇ ਪੈਣ ਉਹ ਚਾਹ ਰਹੇ ਨੇ ਕਿ ਇਹ ਮਨੁੱਖਤਾ ਦਾ ਢਿੱਡ ਭਰਨ ਵਾਲਾ ਰਸੇ ਦਾ ਬਹੁਤ ਵਧੀਆ ਗੱਲਾਂ-ਵੱਤਾਂ ਹੋ ਰਹੀਆਂ ਪ੍ਰਸਾਦ ਦਾਲ ਤੇ ਵਪਾਰ ਖੰਦੇਸ਼ਾਂ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਵਿਸ਼ਲੇਸ਼ਣ ਹੋਵੇਗਾ ਜਿਵੇਂ ਦੋ ਪਾਰਟੀਆਂ ਦਾ ਉਹੀ ਤਰਜ਼ ਤੇ ਵਾਪਸ ਮੁੜਦੇ ਹਾਂ ਲੋਕਾਂ ਦਾ ਮੋਹ ਤਾਂ ਜਿੱਦਣ ਪਟਾਰੀਆਂ ਖੁੱਲਣੀਆਂ ਮਾਰਚ ਦੇ ਵਿੱਚ ਜਦ ਪਤਾ ਲੱਗੂ ਜਿਹੜੀ ਪਾਰਟੀ ਜਿੱਤਦੀ ਹੈ ਪਰ ਅੱਜ ਦੇ ਦਿਨ ਹੋਰ ਐ ਵੱਡੇ ਇਕੱਠ ਚਾਹੇ ਭਗਵੰਤ ਮਾਨ ਦੀ ਰੈਲੀ ਆ ਕੇਜਰੀਵਾਲ ਦੀ ਰੈਲੀ ਆ ਤੀਜੀ फ्रंट दी आमद और सफलता पूर्वक वोटा तक ओदा जाना ਪੀ ਪੀ खंडा ना जाना आम आदमी पार्टी बा लोकां दा चका ते इकठ्ठा दे विच ओना दा जाना जिथे पंजाब दे विच बदल दी इक निशानी है पर असल फिर मैं इस नु कहना के जब तक रिजल्ट नहीं आंदे मैं इस नु मानन ले तैयार नहीं पर इस पार्टी ਦੇ ਵਿੱਚ ਬਹੁਤਾਂ ਲੋਕਾਂ ਦਾ ਜਿਹੜਾ ਝੁਕਾ ਹੈ ਉਹ ਪੰਜਾਬ ਦੇ ਵਿੱਚੋਂ ਪੰਜਾਬ ਦਾ ਭਲਾ ਇਹਨਾਂ ਦੇ ਰਾਹੀ ਬਹੁਤ ਵੱਡਾ ਭਾਲ ਰਹੇ ਨੇ ਪਰ ਪੰਜਾਬ ਦੀਆਂ ਹੱਕੀ ਮੰਗਾਂ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਿਉਂਕਿ ਇਹਨਾਂ ਦਾ ਤਾਂ ਆਮ ਆਦਮੀ ਪਾਰਟੀ ਇੱਕ ਗੱਲ ਕਲੀਅਰ ਕੇਸਰੀਵਾਲ ਦੇ ਵਿੱਚ ਦੇਸ਼ ਭਗਤੀ ਐ ਪੈਟਰੋਟਿਜ਼ਮ ਐ ਗਾਂਧੀ ਨੂੰ ਆਪਣਾ ਆਈਡਲ ਮੰਨਦਾ ਵੱਧ ਅਧਿਕਾਰਾਂ ਦੀ ਗੱਲ ਪੰਜਾਬ ਦੇ ਪਾਣੀਆਂ ਦੀ ਗੱਲ ਹੋ ਸਕਦੀ ਹੈ ਪਰ ਭ੍ਰਿਸ਼ਟਾਚਾਰ ਮੁਕਤ ਇੱਕ ਸਮਾਜ ਦੇਣਾ ਲੋਕਾਂ ਦੀਆਂ ਮੁਢਲੀ ਸਹੂਲਤਾਂ ਦਾ ਮੁਢਲੀਆਂ ਦਾ ਖਿਆਲ ਰੱਖਣਾ ਇਹ ਉਹਨਾਂ ਦੇ ਵੱਡੇ ਨਾਅਰੇ ਨੇ ਤੇ ਦਿੱਲੀ ਚੋਂ ਕਰ ਰਹੇ ਨੇ ਪਰ ਮੈਂ ਕਦੇ ਉਸ ਨੁਕਰੇ ਬੈਠੇ ਉਹਨਾਂ ਇਨਸਾਨਾਂ ਨੂੰ ਵੇਖਦਾ ਪ੍ਰੋਫੈਸਰ ਸਾਹਿਬ ਜਿਨ੍ਹਾਂ ਨੇ ਜ਼ਿੰਦਗੀ ਇਹਦੇ ਵਿੱਚ ਲਾਈ ਜੋ ਕੋਈ 70ਆਂ ਚ ਜੇਲ੍ਹ ਚ ਬੈਠਾ ਕੋਈ 50ਆਂ ਚ ਬੈਠਾ ਜਿਨ੍ਹਾਂ ਨੇ ਸਿੱਖ ਸੰਘਰਸ਼ ਆਪਣੇ ਹਿੱਕ ਤੇ ਲੜਿਆ ਆਪਣੇ ਆਪ ਦਾ ਉਜਾੜਾ ਕੀਤਾ ਗੱਲ ਕਿਤੇ ਨਾ ਜਾਵਣੀ ਜਿਨ੍ਹਾਂ ਲਈ ਉਹ ਤੁਰੇ ਫਿਰਦੇ ਰਹੇ ਉਹਨਾਂ ਦੀ ਅਗਲੀ ਪੀੜ੍ਹੀ ਸਾਰੀਆਂ ਚੀਜ਼ਾਂ ਪਛਾਣ ਸੁੱਟ ਕੇ ਇੱਕ ਨਵੀਂ ਸੋਚ ਵੱਲ ਪ੍ਰਬਲ ਹੋਗੀ ਇਹ ਕਹਿਜਾ ਵਰਤਾਰਾ ਕੀ ਆਮ ਆਦਮੀ ਪਾਰਟੀ ਲੋਕਾਂ ਦਿਆਂ ਕਿਹੜੀਆਂ-ਕਿਹੜੀਆਂ ਮੰਗਾਂ ਦਾ ਖਿਆਲ ਰੱਖੂ ਜਾਂ ਵੱਧ ਅਧਿਕਾਰਾਂ ਦੀ ਗੱਲ ਕਿਸੇ ਖੂ ਖਾਤੇ ਵਿੱਚ ਪਾ ਕੇ ਲੋਕ ਸਿਰਫ ਤੇ ਸਿਰਫ ਭ੍ਰਿਸ਼ਟਾਚਾਰ ਸਮਾਜ ਭ੍ਰਿਸ਼ਟਾਚਾਰ ਮੁਕਤ ਸਮਾਜ ਨੌਕਰੀਆਂ ਲੋਕਾਂ ਦੀਆਂ ਮੁਰਲੀ ਜ਼ਰੂਰਤਾਂ ਇੱਕ ਵੱਡੇ ਬਦਲਾਅ ਦਾ ਕਾਰਨ ਕੀ ਹੈ ਕਿ ਲੋਕ ਟੁੱਟੇ ਮਹਿਸੂਸ ਕਰ ਰਹੇ ਨੇ ਕਿ ਬਣ ਕੇ ਉਸ ਗੱਲ ਦੇ ਵਿੱਚੋਂ ਕਿਤੋਂ ਉਹਨਾਂ ਨੂੰ ਆਸ ਦੀ ਕਿਰਨਾਂ ਮਾਨਸਿਕਤਾ ਕੀ ਹੈ ਲੋਕਾਂ ਦੀ ਮਾਨਸਿਕਤਾ ਅਗੇਨ ਜੀਜੀ ਕਿ ਜਿਹੜੇ ਸਾਡੇ ਖਿੱਤੇ ਦਾ ਇਤਿਹਾਸ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸੈਹ ਦੇ ਰਹਿੰਦੇ ਆ ਸੈਹ ਦੇ ਰਹਿੰਦੇ ਆ ਸੈਹ ਦੇ ਰਹਿੰਦੇ ਆ ਤੇ ਅੰਤ ਨੂੰ ਜਦੋਂ ਉਹ ਸੈਹ ਦੀ ਆ ਤਾਂ ਉਹ ਆਪਣੇ ਆਦਰਸ਼ ਦੇ ਵਿੱਚੋਂ ਆਪਣੀਆਂ ਇੱਛਾਵਾਂ 'ਚੋਂ ਆਪਣੇ ਮਰੇ ਹੋਏ ਸੁਪਨਿਆਂ 'ਚੋਂ ਆਪਣੇ ਗਾਇਬ ਹੋਈਆਂ ਖੁਸ਼ੀਆਂ ਦੇ ਵਿੱਚੋਂ ਕਿਸੇ ਇੱਕ ਨੇਤਾ ਦੇ ਰੂਪ ਦੇ ਵਿੱਚ ਕਿਸੇ ਇੱਕ ਧਾਰਮਿਕ ਨੇਤਾ ਦੇ ਰੂਪ ਦੇ ਵਿੱਚ ਕਿਸੇ ਇੱਕ ਰਾਜਨੀਤਿਕ ਨੇਤਾ ਦੇ ਰੂਪ ਦੇ ਵਿੱਚ ਉਹ ਉਹਨਾਂ ਸੁਪਨਿਆਂ ਦੀ ਜਿਹੜੀ ਉਮੀਦ ਇਕ ਇੱਕ ਕਿਰਨਾਂ ਜਿਹੜੀ ਉਹਨਾਂ ਨੂੰ ਨਜ਼ਰ ਆਉਂਦੀ ਹੈ। ਔਰ ਉਸ ਕਿਰਨ ਦਾ ਨਜ਼ਰ ਆਉਣਾ ਵੀ ਸਾਨੂੰ ਪਿਛਲੇ ਸਮੇਂ ਦੇ ਵਿੱਚ ਜੋ ਦਿੱਲੀ ਦੇ ਵਿੱਚ ਇਸ ਨਵੀਂ ਆਮਦ ਹੋਈ ਪਾਰਟੀ ਦੀ ਜਿੱਤ ਹੋਈ ਹੈ ਉਸ ਜਿੱਤ ਦੇ ਨਾਲ ਜੋੜਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਸੰਗੀਤਾਂਚਾ ਭਾਰਤ ਦਾ ਉਹਦੇ ਵਿੱਚ ਅਗਰ ਸਾਰੇ ਰਾਜ ਇਕੱਠੇ ਹੋ ਗਏ ਅਗਰ ਸਾਰੇ ਏਦਾਂ ਦੀ ਸੋਚ ਵਾਲੇ ਨੇਤਾ ਇਕੱਠੇ ਹੋ ਕੇ ਇਸ ਵੱਧ ਅਧਿਕਾਰਾਂ ਦੀ ਲੜਾਈ ਨਹੀਂ ਲੜਦੇ ਉਦੋਂ ਤੱਕ ਉੱਥੇ ਕਿਸੇ ਤਬਦੀਲੀ ਦੀ ਆਸ ਕਰਨੀ ਬਿਲਕੁਲ ਝੂਠੀ ਹੋਏਗੀ ਔਰ ਆਪਣੇ ਆਪ ਨੂੰ ਤੁਖਾ ਦੇਣ ਵਾਲੀ ਹੋਏਗੀ ਪਰ ਕਿਉਂਕਿ ਅਗਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਕਿਸ ਕਿਸ ਸੰਘਰਸ਼ ਦਾ ਕਿਸ ਚਾਰੈਨੂ ਅਗਰ ਉਸ ਸੰਘਰਸ਼ ਦੇ ਹਿੱਸੇ ਨੇ ਸਿਆਸਤ ਦੀ ਬਾਗਡੋਰ ਤੁਹਾਡੇ ਹੱਥ ਦੇ ਵਿੱਚ ਦਿੱਤੀ ਔਰ ਉਸ ਹੱਥ ਦੇ ਵਿੱਚ ਆਉਣ ਤੋਂ ਬਾਅਦ ਤੁਸੀਂ ਆਪਣੀਆਂ ਕੋਸ਼ਿਸ਼ਾਂ ਰਾਹੀਂ ਆਪਣੀਆਂ ਅ ਕਹੋ ਇਮਾਨਦਾਰ ਨੀਤੀਆਂ ਰਾਹੀਂ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਲੋਕਾਂ ਨੂੰ ਜ਼ਰੂਰ ਨਜ਼ਰ ਆਉਂਦੀ ਹੈ ਔਰ ਉਸ ਨਜ਼ਰ ਆਉਣ ਤੋਂ ਮੇਰਾ ਭਾਵ ਹੈ ਕਿ ਅੱਜ ਦਾ ਆਸਟਨ VOTER ਜਿਹੜਾ ਇੱਕ ਐਵਰੇਜ VOTER ਪੰਜਾਬ ਦਾ ਉਹਦੀ ਇੱਕ ਆਸ ਵੀ ਇਸੇ ਗੱਲ ਦੇ ਨਾਲ ਜੁੜੀ ਹੋਈ ਹੈ ਕਿ ਇੱਕ ਬੰਦਾ ਜਿਹੜਾ ਸੰਘਰਸ਼ ਚੋਂ ਪੈਦਾ ਹੋਇਆ ਫਿਰ ਉਸਨੇ ਪਾਰਟੀ ਬਣਾਈ ਫਿਰ ਉਹ ਜਿੱਤਿਆ ਜਿੱਤੋਂ ਤੋਂ ਬਾਅਦ ਉਹਦੀਆਂ ਜਿੰਮੇਆਂ ਕਿ ਪ੍ਰਾਪਤੀਆਂ ਉਸ ਸਮੇਂ ਦੇ ਵਿੱਚ ਔਰ ਉਹ ਪ੍ਰਾਪਤੀਆਂ ਵੀ ਉਸ ਸੰਘਰਸ਼ ਚੋਂ ਨਿਕਲੀਆਂ ਨੇ ਜਿਸ ਸੰਘਰਸ਼ ਉਹ ਬੈਠਾ ਜਿਸ ਜਗ੍ਹਾ ਤੇ ਉਹ ਬੈਠਾ ਜਿੱਥੇ ਕੇਸ ਕੇਸ ਪਾਏ ਨੇ ਜਿੱਥੇ ਉਹਦੇ ਕੋਈ ਗੱਲ ਨਹੀਂ ਸੁਣੀ ਜਾ ਰਹੀ ਜਿੱਥੇ ਉਹਦੀ ਕੋਈ ਫਾਈਲ ਨਹੀਂ ਮੋੜੀ ਜਾ ਰਹੀ ਜਿੱਥੇ ਉਹਦੇ ਕੋਲੋਂ ਕ੍ਰਪਸ਼ਨ ਡਿਪਾਰਟਮੈਂਟ ਖੋਲਿਆ ਜਿੱਥੇ ਉਹਦੇ ਕੋਲੋਂ 84 ਦੇ ਦੰਗਿਆਂ ਦੀ ਐਸਆਈਟੀ ਸਰਕਾਰ ਬਣਨ ਤੋਂ 2 ਦਿਨ ਪਹਿਲਾਂ ਉਹਦੇ ਕੋਲੋਂ ਖੋਲੀ ਇਸ ਸਾਰੀਆਂ ਗੱਲਾਂ ਅੰਤ ਨੂੰ ਆ ਕੇ ਪੰਜਾਬ ਦੀ ਉਸ ਸੋਚ ਨਾਲ ਪੰਜਾਬ ਦੇ ਉਸ ਸੁਪਨੇ ਨਾਲ ਜੁੜ ਜਾਂਦੀਆਂ ਨੇ ਕਿ ਸ਼ਾਇਦ ਜਰ ਇਹ ਇਨਸਾਨ ਜਾਂ ਇਹ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਦੂਜਿਆਂ ਨੂੰ ਤਾਂ ਉਹ ਦੇਖ ਹੀ ਚੁੱਕੇ ਨੇ ਉਹਨਾਂ ਦੀ ਅਸੀਂ ਕਿੰਨੀਆਂ ਗੱਲਾਂ ਕਰ ਚੁੱਕੇ ਹਾਂ ਉਹਨਾਂ ਦੇ ਡਬਲ ਸਟੈਂਡਰਡ ਦੀਆਂ ਗੱਲਾਂ ਕਰ ਚੁੱਕੇ ਹਾਂ ਉਹਨਾਂ ਦੀ ਜਿਹੜੀ ਪਰਿਵਾਰਕ ਸਾਂਝ ਦੀ ਗੱਲ ਕਰ ਚੁੱਕੇ ਹਾਂ ਉਹਨਾਂ ਦਾ ਪ੍ਰਸ਼ਟਾਚਾਰ ਦੇਖ ਚੁੱਕੇ ਹਾਂ ਸੋ ਉਹਨਾਂ ਆਸਾਂ ਦੇ ਵਿੱਚੋਂ ਈ ਆਸ ਜਾ ਕੇ ਜੁਰਦੀਆਂ ਕਿ ਪ੍ਰੋਬੇਬਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਇਹਨਾਂ ਨੇ ਉੱਥੇ ਕਰਕੇ ਦਿਖਾਏ ਨੇ ਉਹਨਾਂ ਕੰਮਾਂ ਦੀ ਤਰਜੀਹ ਹੋ ਸਕਦਾ ਸਾਨੂੰ ਨਾ ਹੋਵੇ ਪਰ ਉਸ ਨਿਗਾਹ ਦੇ ਵਿੱਚ ਉਸ ਰਾਜ ਦੇ ਵਿੱਚ ਉਸ ਸਿਸਟਮ ਦੇ ਵਿੱਚ ਸਾਨੂੰ ਉਹ ਦਿਸਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੋਂ ਕੋਈ ਜਿਹੜੀ ਅੱਛੀ ਆਸ ਕੋਈ ਅੱਛੀ ਜਿਹੜੀ ਉਮੀਦ ਆ ਉਹ ਕੀਤੀ ਜਾ ਸਕਦੀ ਹੈ ਜਿੰਨਾ ਤੱਕ ਤੁਸੀਂ ਦੇਖਿਆ ਕਿ ਅ ਅੱਜ ਦੀ ਡੇਟ ਦੇ ਵਿੱਚ ਜਿਸ ਡੀਪ ਹੋਲ ਦੇ ਵਿੱਚ ਜਿਸ ਡੂੰਘੇ ਟੋਏ ਦੇ ਵਿੱਚ ਪੰਜਾਬ ਸੁਟਿਆ ਹੋਇਆ ਉਸ ਨੂੰ ਕੱਢਣ ਦੇ ਲਈ ਮੇਰਾ ਖਿਆਲ ਨਹੀਂ ਚਾਹੇ ਉਹ ਕਾਂਗਰਸਾ ਦੇ ਚਾਹੇ ਉਹ ਆਪ ਆਜ ਦੇ ਉਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ 5 ਸਾਲਾਂ ਦੇ ਵਿੱਚ ਉਸ ਡੂੰਘੇ ਟੋਏ ਦੇ ਵਿੱਚੋਂ ਕੱਢਣਾ ਜੋ ਮੈਨੂੰ ਲੱਗਦਾ ਸ਼ਾਇਦ ਕਿਸੇ ਵੀ ਪਾਰਟੀ ਦੇ ਹੱਕ 'ਚ ਨਹੀਂ ਹਾਂ ਪਰ ਜਿੱਥੋਂ ਤੱਕ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ ਅਗਰ ਉਹਦੇ ਦੇ ਉੱਤੇ ਕਿ ਕਾਮਯਾਬ ਹੋ ਜਾਂਦੇ ਆ ਅਗਰ ਇਹਨਾਂ ਨੂੰ ਬਹੁਮਤ ਮਿਲ ਜਾਂਦਾ ਤਾਂ ਇੱਕ ਉਮੀਦ ਦੀ ਕਿਰਨ ਜ਼ਰੂਰ ਵੱਧਦੀ ਹੈ ਕਿਉਂਕਿ ਜਿਹੜੇ ਫੈਸਲੇ ਦਿੱਲੀ ਦੇ ਵਿੱਚ ਲਏ ਗਏ ਨੇ ਉਹ ਫੈਸਲੇ ਸਾਨੂੰ ਕਿਸੇ ਹੱਦ ਤੱਕ ਇਹ ਸੋਚਣ ਲਈ ਮਜਬੂਰ ਕਰਦੇ ਨੇ ਕਿ ਇਹਨਾਂ ਨੇ ਉੱਥੇ ਉਸ ਗੱਲ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਤੇ ਜੇ ਨਹੀਂ ਕੀਤਾ ਤਾਂ ਇਸ ਉਮੀਦ ਦੇ ਨਾਲ ਵੋਟਰ ਇੱਕ ਆਸ ਨਾਲ ਜੁੜਿਆ ਹੈ ਕਿ ਪ੍ਰੋਬੇਬਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਜੋ ਹਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੀਤੀਆਂ ਨੂੰ ਉਹਨਾਂ ਕਾਨੂੰਨਾਂ ਨੂੰ ਲੋਕਾਂ ਦੇ ਸਾਹਮਣੇ ਜ਼ਰੂਰ ਰੱਖਣਗੇ ਜਿਨ੍ਹਾਂ ਦੇ ਨਾਲ ਉਹਨਾਂ ਦੇ ਸੁਪਨੇ ਉਹਨਾਂ ਦੀਆਂ ਕਾਇਬ ਹੋਈਆਂ ਖੁਸ਼ੀਆਂ ਜ਼ਰੂਰ ਵਾਪਸ ਆਉਣਗੀਆਂ ਅੱਜ ਦੀ ਘੜੀ ਦੇ ਵਿੱਚ ਅਗਰ ਦੇਖੀਏ ਜਿਹੜਾ ਵਰਤਾਰਾ ਪੰਜਾਬ ਦੇ ਵਿੱਚ ਵਾਪਰਿਆ ਮੈਂ ਹੁਣ ਸਿੰਪਲ ਇੱਕ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਕਿ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਮੁੱਖ ਮੰਤਰੀ ਦਾ ਆਪਣਾ ਹਲਕਾ ਹੋਵੇ ਲੰਬੀ ਹਲਕਾ ਹੋਵੇ ਹੈ ਉੱਥੇ ਪਿੰਡ ਕਟਿਆਵਾਲੀ ਤੋਂ ਲੈ ਕੇ ਕਈ ਕਿਲੋਮੀਟਰ ਤੱਕ ਜਿਹੜੀ ਉੱਥੇ ਨਹਿਰ ਜਾਂਦੀ ਆ ਉਹਦੇ ਨਹਿਰ ਦੇ ਨਾਲ-ਨਾਲ ਸ਼ਰਾਬ ਦੀਆਂ ਪੱਟੀਆਂ ਚੱਲ ਰਹੀਆਂ ਹੁੰਣ ਚੋਣ ਜਾਬਤੇ ਤੋਂ ਬਾਅਦ ਪੁਲਿਸ ਉਹਨਾਂ ਨੂੰ ਕੁਛ ਨਾ ਕਹੇ ਜਦੋਂ ਪੁਲਿਸ ਤੇ ਸੀਆਰਪੀ ਦਾ ਡੰਡਾ ਚੜਦਾ ਦਾ ਚੋਣ ਜਾਬਤੇ ਦਾ ਡੰਡਾ ਚੜਦਾ ਤੇ ਉਥੋਂ 25 2 ਲੱਖ 54 ਹਜ਼ਾਰ ਲੀਟਰ ਕੱਚੀ ਸ਼ਰਾਬ ਉਹਨਾਂ ਦੇ ਆਪਣੇ ਇਲਾਕੇ 'ਚ ਫੜੀ ਜਾਵੇ ਇੱਕ ਸਵਾਲ ਪੈਦਾ ਕਰਦੀ ਹੈ ਕਿ ਯਾਰ ਅਸੀਂ ਉਸ ਬੰਦੇ ਤੋਂ ਕੀ ਉਹ ਮੀਟ ਕਰ ਸਕਦੇ ਆ ਜਿਹਦਾ ਆਪਣਾ ਇਲਾਕਾ ਇਸ ਨਸ਼ੇ ਦੀ ਦਲਦਲ ਦੇ ਵਿੱਚ ਡੁੱਬਿਆ ਹਾ ਜਿੱਥੇ 10 ਡਰਮ ਤੇ 5 ਕੁਆਂਟਲ ਲੱਕੜ ਤੇ 20 ਪਾਈਪਾਂ ਉੱਥੇ ਫੜੀਆਂ ਜਾਂਣ ਇਹ ਬੜੀ ਮਤਲਬ ਇੱਕ ਚਿੰਚੋ ਲੋਹਟ ਪੈਦਾ ਕਰਨ ਵਾਲੀ ਸਥਿਤੀ ਹੈ ਤੇ ਲੋਕਾਂ ਨੂੰ ਇਹ ਸਥਿਤੀਆਂ ਸੋਚਣ ਲਈ ਮਜਬੂਰ ਕਰ ਰਹੀਆਂ ਨੇ ਕਿ ਜਿਹੜਾ ਪਰਿਵਰਤਨ ਜ਼ਰੂਰ ਆਉਣਾ ਚਾਹੀਦਾ ਔਰ ਸੋਸ਼ਲ ਮੀਡੀਆ ਦਾ ਯੋਗਦਾਨ ਇਸ ਵਾਰੀ ਤੱਕ ਕਮਾਲ ਹੀ ਹੋਈ ਪਈ ਹੈ ਪਤਨਾ ਇਕੱਠ ਨਾ ਸਾਡੇ ਤੱਕ ਪਹੁੰਚਦੀ ਨਹੀਂ ਸੀ ਹੁਣ ਚਾਹੇ ਛੋਟੀ ਤੋਂ ਛੋਟੀ ਗੱਲਬਾਤ ਹੋਵੇ ਚਾਹੇ ਸੁਖਬੀਰ ਸਿੰਘ ਦੇ ਬਾਦਲੋਂ ਨਿਕਲ ਆਉਣੀਆਂ ਈਆਂ ਉਹ ਕਹਿੰਦੇ ਉਹਨਾਂ ਦੀ ਜ਼ੁਬਾਨ ਥਰਥਰਾ ਜਾਂਦੀ ਹੈ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਮਤਲਬ ਹਰ ਸਮੇਂ ਚੋ ਕੁਝ ਵੀ ਹੋ ਉਹ ਸਾਰਾ ਕੁਝ ਹਰ ਵੋਟਰ ਤੱਕ ਹਰ ਲੋਕ ਤੱਕ ਇੱਕਦਮ ਪਹੁੰਚ ਜਾਂਦਾ ਔਰ ਉਸ ਪਹੁੰਚਣ ਦੀ ਜਿਹੜੀ ਰਫ਼ਤਾਰ ਆ ਉਸ ਮਨੁੱਖੀ ਮਨ ਨੂੰ ਮਨੁੱਖੀ ਸੋਚ ਨੂੰ ਇਤਨਾ ਪਰਬਲ ਕਰ ਦਿੱਤਾ ਕਿ ਉਹ ਰਾਈਟ ਵੇ ਉਹਦਾ ਜਿਹੜਾ ਬੁਰਾ ਚਾ ਭਲਾ ਰਾਈਟ ਵੇ ਉਹਦਾ ਜਿਹੜਾ ਇੱਕ ਨਕਸ਼ਾ ਆਪਣੇ ਦਿਮਾਗ ਦੇ ਵਿੱਚ ਬਣਾ ਲੈਂਦਾ ਕਿ ਇਹ ਬੰਦਾ ਜਿਹੜਾ ਕੱਲ ਆ ਆ ਭਾਜਪਾ ਨੂੰ ਗਾਣਾ ਕਰਦਾ ਸੀ ਅੱਜ ਤਾਰਾ ਡੁੱਬਣ ਤੋਂ ਬਾਅਦ ਕਾਂਗਰਸ ਦੇ ਵਿੱਚ ਐਂਟਰੀ ਇਸ ਬੰਦੇ ਨੇ ਕਿਉਂ ਲੈ ਲਈ ਤੇ ਜੀ ਲੈ ਲਈ ਆ ਤਾਂ ਉਹਦੀਆਂ ਜੁਨੀਆਂ ਵੀਡੀਓ ਜਦੋਂ ਰਿਲੀਜ਼ ਹੁੰਦੀਆਂ ਨੇ ਤੇ ਉਹ ਵੋਟਰ ਸੋਚਣ ਲਈ ਹੱਜੀ ਜੀ ਜ਼ਰੂਰ ਮਜਬੂਰ ਹੁੰਦਾ ਕਿ 3 ਮਹੀਨਿਆਂ ਦੇ ਵਿੱਚ 6 ਮਹੀਨਿਆਂ ਦੇ ਵਿੱਚ ਇਸ ਬੰਦੇ ਦੇ ਚਰਿੱਤਰ ਦੇ ਵਿੱਚ ਐਸੀ ਕਿਹੜੀ ਤਬਦੀਲੀ ਆ ਗਈ ਐਸਾ ਜਿਹੜਾ ਨਵਾਂ ਤਾਰਾ ਚੜ੍ਹ ਗਿਆ ਕਿ ਇਸ ਨੂੰ ਜਿਹੜਾ ਕਾਂਗਰਸ ਇਹ ਲੱਗਣ ਲੱਗੀ ਕਿ ਮੈਂ ਤਾਂ ਬਚਪਨ ਤੋਂ ਹੀ ਜਨਮ ਤੋਂ ਹੀ ਕਾਂਗਰਸੀਆਂ ਜੀ ਹੱਜੀ ਬਿਲਕੁਲ ਜੀ ਮਸਕਰਿਆਂ ਨੇ ਕੀ ਕਰਨਾ ਹੈ ਜਿਨ੍ਹਾਂ ਨੇ ਡਮਰੂ ਵਜਾਉਣੇ ਨੇ ਉਹਨੂੰ ਮੈਂ ਕਦੇ ਕੰਸਿਡਰ ਹੀ ਨਹੀਂ ਕੀਤਾ ਜਿਹਦੇ ਪਿਓ ਨੇ ਸਾਡੇ ਗੁਰਦੁਆਰਿਆਂ ਦੇ ਖਿਲਾਫ ਬੋਲਿਆ ਭਗਵੰਤ ਸਿੱਧੂ ਨੇ ਤੇ ਇਹਨੇ ਕੀ ਕਰਨਾ ਖੰਭਣੀਆਂ ਬੰਨ ਕੇ ਮੌਜਾਂ ਕਰੇ ਤੁਰਿਆ ਫਿਰੇ ਜਿੱਥੇ ਬਾਕੀ ਤੁਰੇ ਫਿਰਦੇ ਆਖੀਰ ਦੇ ਵਿੱਚ ਜਿਹੜੀਆਂ ਚੀਜ਼ਾਂ ਰਹਿ ਗਈਆਂ ਜੀ ਕੁਝ ਜਿਵੇਂ ਕੁਝ ਐਡ ਕਰਨਾ ਹੋਵੇ ਕਲੋਜ਼ਿੰਗ ਦੇ ਵਿੱਚ ਆਪਣੇ ਕੋਲ ਮਿੰਟ ਹੋਰ ਆ ਪ੍ਰੋਫੈਸਰ ਸਾਹਿਬ ਕੋਈ ਗੱਲ ਆਖੀਰ ਚ ਕਹਿਣੀ ਚਾਹੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿੰਨੇ ਮੇਰੇ ਵੀਰ ਜੋ ਸੁਣ ਰਹੀ ਨੇ ਜਾਂ ਇਥੇ ਨੇ ਉਹ ਇਹ ਨਾ ਸੋਚਣ ਕਿ ਕਿਹੜੀ ਪਾਰਟੀ ਅੱਗੇ ਜਾ ਰਹੀ ਆ ਜਾਂ ਕਿਸ ਪਾਰਟੀ ਦੀ ਵੇਵ ਆ ਜਾਂ ਸੋਸ਼ਲ ਮੀਡੀਆ ਤੇ ਕੌਣ ਪਾਰਟੀ ਸਭ ਤੋਂ ਵੱਧ ਜਿਹੜਾ ਮਾਰ ਕਾ ਮਾਰ ਰਹੀ ਆ ਉਹ ਆਪਣੇ ਪਰਿਵਾਰ ਨੂੰ ਆਪਣੇ ਉਹਨਾਂ ਮੈਂਬਰਾਂ ਨੂੰ ਜਿਹੜੇ ਯੋਗ ਵੋਟਰ ਨੇ ਤੁਸੀਂ ਯਕੀਨ ਨਹੀਂ ਕਰਨਾ ਮੈਂ ਵੀ ਹਰ ਲੋਕ ਚ ਜਿਹੜੇ ਮੇਰੀ ਗਲੀ ਦੇ ਪਰਿਵਾਰ ਨੇ ਜਿਹੜੇ ਮੇਰੇ ਲੋਕ ਨੇ ਜਿੰਨਾ ਤੱਕ ਮੇਰੀ ਪਹੁੰਚ ਆ ਮੈਂ ਉਹਨਾਂ ਨਾਲ ਇਹ ਸਾਂਝ ਜ਼ਰੂਰ ਪਾਉਣਾ ਲੌਜੀਕਲੀ ਦਲੀਲ ਦੇ ਨਾਲ ਕਿ ਤੁਸੀਂ ਇਹ ਦੇਖਣਾ ਕਿ ਇਹ ਬੰਦਾ ਜਿਹੜਾ ਤੁਹਾਡੇ ਦੇ ਵਿੱਚ ਆ ਰਿਹਾ ਉਹਦਾ ਪਿਛੋਕੜ ਜਾਂ ਤੁਸੀਂ ਸਮਾਜ ਨੂੰ ਦਿੱਤੇ ਯੋਗਦਾਨ ਦੇ ਵਿੱਚੋਂ ਆਉਣ ਵਾਲੇ 5 ਸਾਲ ਦੇ ਲਈ ਕੀ ਲੱਭ ਸਕਦੇ ਹੋ ਕੀ ਉਹ ਤੁਹਾਡੇ ਪਿੰਡ ਦਾ ਤੁਹਾਡੀ ਸੜਕ ਦਾ ਤੁਹਾਡੇ ਕਿਸੇ ਆਪਣੇ ਸਕੂਲ ਦਾ ਕੋਈ ਕਿਸੇ ਵਿੱਦਿਕ ਢਾਂਚੇ ਦਾ ਤੁਹਾਡੇ ਕਿਸੇ ਹਸਪੀਟਲ ਦਾ ਕੀ ਕੋਈ ਭਲਾ ਕਰ ਸਕਦਾ ਤਾਂ ਕਿ ਅਸੀਂ ਆਉਣ ਵਾਲੇ 5 ਸਾਲਾਂ ਦੇ ਜਿਸ ਦੀਪ ਹੌਲ ਦੇ ਵਿੱਚ ਆਲਰੇਡੀ ਹਾਂ ਉਸ ਤੋਏ ਦੇ ਵਿੱਚੋਂ ਘਟੋ ਘਟ ਨਿਕਲਣ ਦੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਰਹਿਣ ਔਰ ਸਹੀ ਤੋਂ ਸਹੀ ਉਮੀਦਵਾਰ ਪ੍ਰੋਫੈਸਰ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਆਪਣੀ ਲੈਕਚਰ ਦੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਗੱਲ ਕਰਦੇ ਹੋ ਥੈਂਕ ਯੂ ਸੋ ਮੱਚ ਅਗਲੇ ਹਫ਼ਤੇ ਵਿਸ਼ਲੇਸ਼ਣ ਕਰਾਂਗੇ ਵੋਟਾਂ ਤੋਂ ਬਾਅਦ ਬਈ ਹੁਣ ਕਿਵੇਂ ਆ ਕਹਾਣੀ ਬਿਆ ਤੋਂ ਬਾਅਦ ਜਦ ਕੋਠੀ ਝਾੜ ਕੱਟ ਕਰੀਦਾ ਇਸ ਤਰ੍ਹਾਂ ਹੀ ਇਲੈਕਸ਼ਨ ਤੋਂ ਬਾਅਦ ਦੀ ਗੱਲ ਕਰਾਂਗੇ ਫਿਰ ਥੈਂਕ ਯੂ ਸੋ ਮੱਚ ਤਾਰੇ ਹੀ ਮੇਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਜੀ ਆਪਣੇ ਪ੍ਰੋਗਰਾਮ ਦੇ ਵਿੱਚ ਇਨਵਾਈਟ ਕਰਨ ਲਈ ਥੈਂਕ ਯੂ ਜੀ ਧੰਨਵਾਦ ਜੀ ਵਸਰਾਮਿਤ ਸਿੰਘ ਜੀ ਅਮਰੀਕਾ ਤੋਂ ਗੱਲਬਾਤ ਕਰ ਰਹੇ ਸੀ ਹੁਣ ਵਪਾਰਕ ਸੰਦੇਸ਼ ਤੇ ਮੁੜਦੇ ਹਾਂ ਫਿਰ ਸੰਸਾਰਿਕ ਪਿੰਡ ਦੀ ਗੱਲ ਕਰਾਂਗਾ ਮੇਨਾ ਮਤ ਨੂੰ ਮੰਗਦਾ ਪਿੰਡ ਚ ਕਿਸੇ ਦਰਤ ਜਾ ਕੇ ਮਾਤਾ ਅੰਦਰ ਕੋਈ ਬੈਠੀ ਉਹ ਕਹਿੰਦਾ ਬੇਬੇ ਪਾ ਖੈਰ ਉਹ ਕਹਿੰਦੀ ਲਿਉਣੀਆ ਪੁੱਤਾ ਆਕਾ ਅੰਦਰੋਂ ਮਹਾਤਮਾ ਜੀ ਜਦ ਤੱਕ ਕੋਈ ਭਜਨ ਸੁਣਾ ਦੇ ਹੋਰ ਭਜਨ ਕਿੱਥੇ ਆਵੇ ਉਹ ਕਰਾਤੀ ਤੋਰ ਦੇ ਪੱਤੇ ਮਟਿਆਰੇ ਜੱਟਾਂ ਦੇ ਪੁੱਤ ਸਾਧ ਹੋ ਗਏ ਡਾਂਗਾ ਦੇ ਤਾਂ ਮੰਗ ਵੀ ਨਹੀਂ ਹੋਣਾ ਸਿਆਣੇ ਹੋ ਕੇ ਵੋਟ ਪਾ ਲੈਣ ਕਿਸੇ ਨੂੰ ਜਿੱਥੋਂ ਭੁਲਾਈ ਹੋਰ ਜਾ ਸੋ ਇਹੋ ਜਿਹਾ ਕੁਛ ਆ ਇਹ ਜ਼ਿਆਦਾਤਰ ਆਪਣੇ ਖਿੱਤੇ ਦੇ ਵਿੱਚ ਲੋਕਾਂ ਦਾ ਪਰੂ ਪਤਾ ਹੀ ਆ ਵੀ ਕੀ ਕਹਾਣੀ ਐ ਇੱਕ ਹੋਰ YouTube ਤੇ ਹੋਰ ਬੈਠਾ ਸੀ ਇੱਕ ਪੈਰਾ ਭਾਰ ਉਈ ਉਹ ਵੀ ਭੇਜੀ ਕਿਸੇ ਨੇ ਪਿੱਛੋ ਏਅਰ ਗਨ ਲਿਆ ਕੇ ਜਵਾਕ ਕਹਿੰਦਾ ਤੇ ਆਲਾ ਉਹ ਜਿਹਨੂੰ ਧਿਉਣਾ ਉਹਨੂੰ ਗਾਲ ਕੱਢ ਕੇ ਕਹਿੰਦਾ ਸਾਡੇ ਸਾਰੇ ਇੱਥੇ ਆਏ ਹੋਏ ਨੇ ਜਿਹੜਾ ਤੂੰ ਕੋਈ ਕਰਨਾ ਕਰ ਲਾ ਇਹ ਸਾਡਾ ਸੁਭਾਅ ਹੈ ਹੁਣ ਸਿਆਣੇ ਹੋ ਕੇ ਕਿਸੇ ਪਾਸੇ ਗੱਲ ਲੱਗ ਜੇ ਵਧੀਆ ਹੁਸ਼ਾਲ ਹੈ ਪਰ ਜਿਹੜੀ ਵੀ ਸਰਕਾਰ 'ਚ ਉਹਨਾਂ ਨੂੰ ਫਾਇਦਾ ਲੱਗਦਾ ਉਹ ਸਰਕਾਰ ਨੂੰ ਚੋਣਨ ਚੁਣਨਾ ਉਹ ਲੋਕਾਂ ਨੇ ਆਪਾਂ ਤਾਂ ਇੱਥੇ ਕੋਸ਼ਿਸ਼ ਕਰ ਰਹੇ ਆ ਅਵੇਅਰ ਕਰਨ ਕਿਉਂਕਿ ਆਪਾਂ ਆਪ ਸੁਣਦੇ ਆ ਤੇ ਆਪਸ ਇੱਕ ਦੂਜੇ ਨੂੰ ਆਪਾਂ ਨੂੰ ਫੀਡ ਕਰਨਾ ਪੈਂਦਾ ਗੱਲ ਕਰਨੀ ਪੈਂਦੀ ਅਸਲ ਉਹਨਾਂ ਨੇ ਸੁਣਨਾ ਸੰਸਾਰ ਦੇ ਵਿੱਚ ਅੱਜ ਦੇ ਦਿਨ ਤੁਹਾਨੂੰ ਕਿਹੜੇ ਇਸ਼ੂ ਲੱਗਦੇ ਆ ਤੇ ਤੁਸੀਂ ਉਹਦੇ ਨਾਲ ਪ੍ਰਭਾਵਿਤ ਕਿਵੇਂ ਚਲੋ ਪੰਜਾਬ ਦਾ ਸਾਡੀ ਜੰਮਣ ਭੋਇਆ ਸਾਡਾ ਉਹਨਾਂ ਨਾਲ ਦੁੱਖ ਦਰਦ ਹੈ ਭਾਰਤ ਦੇ ਵਿੱਚ ਵੀ ਜਿਹੜੇ ਇਸ਼ੂ ਨੇ ਚਾਹੇ ਉਹ ਨਕਸਲ ਲਹਰਾ ਚਾਰਖੰਡ ਦਾ ਏਰੀਆ ਜਿਹੜਾ ਜਾਂ ਐਮਪੀ ਦਾ ਏਰੀਆ ਆਂਧਰਾ ਪ੍ਰਦੇਸ਼ ਦਾ ਏਰੀਆ ਜਿੱਥੇ ਵੀ ਉਹਨਾਂ ਦੀ ਬਹੁਤਾਤ ਹੈ ਬੰਗਾਲ ਦਾ ਏਰੀਆ ਉਸ ਨੂੰ ਲੋਕ ਬਹੁਤ ਨੇੜਿਓਂ ਵੇਖ ਰਹੇ ਨੇ ਕਸ਼ਮੀਰ ਦਾ ਜਿਹੜਾ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਜਿਹੜਾ ਇਸ਼ੂ ਸਭ ਤੋਂ ਵੱਡਾ ਹਲ ਦਾ ਜਾਂ ਤਾਲਿਬਾਨ ਦਾ ਸਥਿਰਤਾ ਨਾ ਹੋਣੀ ਸਰਕਾਰਾਂ ਦਾ ਫਲਟ ਜਾਣਾ ਫੌਜੀ ਰਾਜ ਦੀ ਗੱਲ ਉਦੋਂ ਉਰਲੇ ਬੰਨੇ ਆ ਜੀਏ ਜਿੱਥੇ ਸਵਾਦ ਨਲੂਏ ਨੇ ਬੰਦ ਲਾਇਆ ਸੀ ਉਥੇ ਹਰ ਇੱਕ ਖਿੱਤੇ ਦਾ ਆਪਣਾ ਰਾਜ ਜਿੱਥੇ 100 ਬਾਈ 100 ਦਾ 1 ਕਿਲੋਮੀਟਰ ਦਾ ਏਰੀਆ ਉਥੇ ਪੁਰਾਣੇ ਕਬੀਲੇ ਨੇ ਉਹਨਾਂ ਦੀ ਆਪਣੀ ਜ਼ਮੀਨ ਹੈ ਦੁਨੀਆ ਭਰ ਦਾ ਉਸ ਉੱਥੇ ਬੀਜਿਆ ਜਾਂਦਾ ਦੁਨੀਆ ਭਰ ਦੀ ਕੋਪੀਮ ਉਥੇ ਪ੍ਰੋਡਿਊਸ ਹੁੰਦੀ ਹੈ ਜਿਹੜੀਆਂ ਦੁਨੀਆ ਭਰ ਦੀਆਂ ਦਵਾਈਆਂ ਦੇ ਵਿੱਚ ਪੈਂਦੀਆਂ ਉਥੋਂ ਡਰਗ ਦਾ ਕਾਰੋਬਾਰ ਚੱਲਦਾ ਉਹਨੂੰ ਸਾਹਮਣੇ ਲਈ ਅਫਗਾਨਿਸਤਾਨ ਨੂੰ ਕੋਸ਼ਿਸ਼ਾਂ ਕਰ ਲਈਆਂ ਬਹੁਤ ਧੜਾ ਧੜ ਬੰਬ ਸਿੱੜ ਤੇ ਬਾਧੂ ਹੋਇਆ ਸਮਾਨ ਨਕਾਰਾ ਜਿਹੜਾ ਇੱਥੇ ਸੀ ਵੱਡੀਆਂ ਕੰਪਨੀਆਂ ਨੇ ਹੋਰ ਬਣਾਉਣਾ ਸੀ ਉਹ ਕਹਿੰਦੇ ਡੰਪ ਕਰ ਦਿਓ ਪਹਾੜਾਂ ਦੇ ਵਿੱਚ ਪ੍ਰੈਸ਼ਰ ਦੇ ਲਈ ਐਗਰੀਗੇਟ ਹੈ ਨਹੀਂ ਉਹ ਕਹਿੰਦਾ بڑے ਪਹਾੜਾਂ 'ਚ ਬੰਬ ਸਿੱੜ ਦਿਓ ਵੀ 52 ਕਾਰਪਟ ਬੋਮਬਿੰਗ ਉਹਦੇ ਬਾਅਦ ਫਿਰ ਆਪਾਂ ਚੱਕੀ ਚੱਲਾਂਗੇ ਸਰਕਾਂ ਬਣਾਓ ਏ ਗਰਦ ਉੜਦੀ ਆ ਬਰਨੋ ਉੜਦੀ ਆ ਨਾਲ ਰਸ਼ੀਆ ਆ ਗਿਆ ਤੇ ਰਸ਼ੀਆ ਦੇ ਟੋਟੇ ਹੋ ਗਏ ਅਜ਼ਬੇਕਿਸਤਾਨ ਤਾਜਿਕਸਤਾਨ ਤੁਰਮਕਿਸਤਾਨ ਮੰਦੇ ਹਾਲੀ ਮੁਸਲਮ ਬਹੁ ਗਿਣਤੀ ਆ ਤੇ ਲੋਕ ਤੁਰੇ ਫਿਰਦੇ ਆ ਜਦ ਰਸ਼ੀਆ ਟੁੱਟਿਆ ਹਜ਼ਾਰਾਂ ਹੀ ਲੜਕੀਆਂ ਨੇ ਆ ਕੇ ਦੁਬਈ ਦੇ ਵਿੱਚ ਜਿਹਨੂੰ ਚੱਕ ਕੇ ਲਿਆ ਜਦ ਆਕੇ ਦੇ ਵਪਾਰ ਦੇ ਧੰਦੇ ਦੇ ਵਿੱਚ ਨੇ ਚਿੱਟੀਆਂ ਕੰਦੂਰੀਆਂ ਥੱਲੇ ਸ਼ੇਖਾਂ ਦੇ ਦੋ ਦੋ ਮਿਲੀਅਨ ਦੀਆਂ ਗੱਡੀਆਂ ਦੇ ਥੱਲੇ ਸੋਨੇ ਦੇ ਦੀਆਂ ਗੱਡੀਆਂ ਸੋਨੇ ਦੇ ਦਰਵਾਜ਼ਿਆਂ ਦੇ ਥੱਲੇ ਉਹਨਾਂ ਦੇ ਨੱਕ ਥੱਲੇ ਸਾਰਾ ਕੁਝ ਹੋ ਰਿਹਾ ਬਲੈਕ ਮਾਰਕੀਟਿੰਗ ਦੇ ਲਈ ਦਵਾਈ ਦੀ ਗੱਲ ਸਤੰਬਰ 11 ਤੋਂ ਬਾਅਦ منی ਦਾ ਫਲੋ ਉਸ ਦੇਸ਼ ਦੇ ਵਿੱਚ ਪਹੁੰਚਿਆ ਸੋ ਦੇਸ਼ਾਂ ਦੇ ਵਿੱਚ ਰਜ਼ਵਿਕ ਸਟਾਨ ਦੇ ਵਿੱਚੋਂ ਜਾਂ ਤਾਜਿਕਸਤਾਨ ਦੇ ਵਿੱਚੋਂ ਤੁਰਕਮਸਤਾਨ ਦੇ ਵਿੱਚੋਂ ਜੇ ਇਹ ਜਿਹੜੇ ਦੇਸ਼ ਨੇ ਉਹ ਬਹੁਤ ਭੁੱਖਮਰੀ ਦੇ ਵਿੱਚ ਨੇ ਚੇਚਨੀਆਂ ਦੇ ਬਾਗੀ ਉੱਥੇ ਲੜ ਰਹੇ ਨੇ ਰਸ਼ੀਆ ਆਪਣੀ ਸਰਦਾਰ ਉਸ ਖਿੱਤੇ 'ਚ ਕਾਇਮ ਕਰਨ ਲਈ ਕਰਾਈਮੀਆਂ ਦੇ ਖਿੱਤੇ ਦੇ ਵਿੱਚ ਜਨਗਣਨਾ ਕਰਵਾ ਕੇ ਉੱਥੇ ਬਾਧੂ ਕਰ ਗਿਆ ਤੇ ਯੂਕਰੇਨ ਦੇ ਬਾਲੂ ਮੂੰਹ ਕਰੀ ਬੈਠਾ ਨੈਟੋ ਮੂੰਹੇ ਪਾਸੇ ਤੇ ਨਾਲ ਹੀ ਉਸ ਖਿੱਤੇ ਦੇ ਵਿੱਚ ਸਤੋ ਵੱਡੀ ਗੱਲ ਯੂਕਰੇਨ ਤੋਂ ਬਿਨਾ ਰਿਫਿਊਜੀਆ ਨੇ ਧਰਤੀ ਹਿਲਾਤੀ ਜਿਉਂ ਸੀਰੀਆ ਦੇ ਬਾਅਦ ਲੋਕ ਹਿੱਲੇ ਨੇ ਤੇ ਉਸ ਧਰਤੀ ਦੇ ਵਿੱਚ ਵੀ ਗਾਂ ਉੱਥੇ ਤਾਂ ਪਹਿਲਾਂ ਹੀ ਬੰਦਾ ਹਾਲ ਸੀ ਉਸ ਦੇ ਸੜਕਾਂ ਦੇ ਉੱਪਰ ਜਾਂ ਡੰਗਣ ਲੱਗੇ ਪਹੀਆਂ ਦੇ ਵਿੱਚ ਨਹੀਂ ਉਹਨਾਂ ਨੂੰ ਕੰਡਿਆਲੀਆਂ ਤਾਰਾਂ ਲਾਉਣੀਆਂ ਪਈਆਂ ਉਸ ਖਿੱਤੇ ਦੇ ਵਿੱਚ ਨੈਟੋ ਬਹੁਤ ਵੱਡੀ ਫੋਰਸ ਦੇ ਤੌਰ ਤੇ ਆਪਣੀਆਂ ਜੰਗੀ ਮਸ਼ਕਾਂ ਕਰ ਰਹੀ ਹੈ ਅਮਰੀਕਾ ਨੇ ਆਪਣੇ ਫੌਜੀ ਭੇਜੇ ਆਵਾਮਾਂ ਦੇ ਸਮੇਂ ਜਰਮਨ ਦੇ ਵਿੱਚ ਕ੍ਰਾਈਸਿਸ ਨੇ ਬਹੁਤ ਵੱਡੇ ਜਿੰਨੇ ਵੀ ਰਿਫਿਊਜੀ ਗਏ ਨੇ ਉੱਥੇ ਉਸ ਕਰਕੇ ਗਾਜ਼ੀਲ ਹਰ ਬਰਦ ਕਰਫਿਊ ਦੀ ਸਥਿਤੀ ਦੇ ਵਿੱਚ ਆਜਾਦਾ ਉੱਥੇ ਬਲਾਸਟ ਹੋਇਆ ਇਸ ਤਰ੍ਹਾਂ ਫਰਾਂਸ ਦੇ ਵਿੱਚ ਕਰਫਿਊ ਨਹੀਂ ਹਲੇ ਤੇ ਹਟਿਆ ਇਟਲੀ ਦੀ ਰਾਜਨੀਤਿਕ ਜਿਹੜੀ ਪਹੁੰਚ ਹੈ ਉਹ ਬੜੀ ਵਧੀਆ ਨਹੀਂ ਤੁਰਕੀ ਵਾਲੇ ਪਾਸਿਓਂ ਗੜਬੜ ਪਰਲੇ ਬੰਨਿਓਂ ਗ੍ਰੀਸ ਦੇ ਨਾਲੋਂ ਸਾਰਾ ਕੁਝ ਹੋ ਰਿਹਾ ਤੇ ਇੰਗਲੈਂਡ ਦੇ ਵਿੱਚ ਬ੍ਰੈਕਸਿਟ ਤੋਂ ਬਾਅਦ ਬ੍ਰੈਕਸਿਟ ਦੇ ਬਾਅਦ ਹੁਣ ਸਕਾਟਿਸ਼ ਲੋਕ ਦੁਆਰਾ ਫੇਰ ਮੰਗ ਕਰਨ ਲੱਗੇ ਨੇ ਵੀ ਅਸੀਂ ਦੁਆਰਾ ਫੇਰ ਆਪਣੀ ਦੇਖਣੀ ਹੈ ਕਿ ਅਸੀਂ ਕਿਹਦੇ ਨਾਲ ਰਹਿਣਾ ਆਇਰਲੈਂਡ ਵਾਲੇ ਥੋੜੇ ਜਿ ਚੁੱਪ ਨੇ ਹੁਣ ਬਹੁਤ ਲੰਮਾ ਖੂਨ ਡੋਲਮਾ ਇਤਿਹਾਸ ਉਹਨਾਂ ਦਾ ਇੰਗਲੈਂਡ ਦੇ ਖਿਲਾਫ ਰਿਹਾ ਬਾਕੀ ਲੋਕ ਨੇ ਆਇਰਲੈਂਡ ਲੋਕ ਜ਼ਿਆਦਾਤਰ ਪੰਜਾਬੀਆਂ ਦੇ ਨਾਲ ਮਿਲਦੇ ਜੱਦਾ ਗਦਾਫੀ ਹਲਾਇਆ ਗਦਾਫੀ ਦੇ ਹਿੱਲਣ ਤੋਂ ਬਾਅਦ ਬਿਲਕੁਲ ਖੰਡ ਟਹਿ ਗਈ ਦੇ ਦੁਨੀਆ ਜਿਵੇਂ ਪਾਣੀ ਦੇ ਲਈ ਜਾਨਵਰ ਹਿਜਰਤ ਕਰਦੇ ਆ ਅਫਰੀਕਾ ਦੇ ਵਿੱਚ ਲੋਕ ਤੁਰਨ ਲੱਗੇ ਤੇ ਆ ਕੇ ਜਦ ਪਾਣੀ ਮਿਲਦਾ ਲਿਬੀਆ ਦੇ ਵਿੱਚੋਂ ਜਹਾਜ਼ ਉੱਥੋਂ ਦੋ ਨੰਬਰ ਦੀਆਂ ਕਿਸ਼ਤੀਆਂ ਡੁੱਬਣ ਲੱਗੀਆਂ ਤੇ ਇਟਲੀ ਵਾਲੇ ਪਾਸੇ ਨੂੰ ਬਣ ਲੱਗੇ ਸਿਜ਼ਲੀ ਦੀ ਟਾਪੂ ਉੱਪਰ ਦਿੱਤਾ ਲੋਕ ਹਲੇ ਵੀ ਹਜ਼ਾਰਾਂ ਦੀ ਗਿਣਤੀ 'ਚ ਸਮੁੰਦਰ ਦੀ ਕੋਖ 'ਚ ਜਾ ਬੜੇ ਸ਼ਾਰਕਾਂ ਦਾ ਹਿੱਸਾ ਬਣ ਗਏ ਸਭ ਤੋਂ ਵੱਡਾ ਜਿਹੜਾ ਹਾਲ ਅਫਰੀਕਾ ਦੇ ਵਿੱਚ ਪਾਣੀ ਦੇ ਲਈ ਲੋਕ ਮਰ ਰਹੇ ਨੇ ਪਾਣੀ ਦੇ ਲਈ ਈਜੀਪਟ ਹੁਣ ਥੋੜਾ ਜਿਹਾ ਆਰਾਮ ਦੇ ਵਿੱਚ ਲੋਕਾਂ ਦੀ ਨਿਗਾ ਚੋਂ ਤੇ 15 ਚੋਦੇ ਰਹੀ ਤੁਨੀਸ਼ੀਆ ਦੇ ਵਿੱਚ ਮੁਸਲਮ ਬ੍ਰਦਰਹੂਡ ਦਾ ਜਿਉਂ ਧਰਤੀ ਹਿੱਲੀ ਤੇ ਉੱਥੋਂ ਗੱਲ ਚੱਲੀ ਸਰਪਦੇਸ਼ਾਂ ਚ ਵੀ ਬੜੀ ਜਾ ਕੇ ਪਰ ਦੱਬ ਲਈ ਸਾਊਦੀ ਅਰਬ ਚੋਂ ਮਾਨ ਚ ਇਹ ਗੱਲਾਂ ਹੋਈਆਂ ਉਹਨਾਂ ਨੇ ਦੱਬ ਲਈ 100 ਕਾਲਡ ਰਾਜੇ ਨੇ ਉਹ ਲੱਗਦੇ ਡੈਮੋਕ੍ਰੇਸੀ ਆ ਬਾਹਰੋਂ ਬੜ ਨਹੀਂ ਦਿੰਦੇ ਕਿਸੇ ਨੂੰ ਪੱਤਰਕਾਰ ਨਹੀਂ ਜਾ ਸਕਦੇ ਗੱਲਾਂ ਨਹੀਂ ਲੱਭ ਸਕਦੇ ਬਹੁਤ ਤਿੱਖੇ ਨੇ ਉਹ 656 ਦੇਸ਼ ਉਹ ਪਰਿਵਾਰਾਂ ਦਾ ਹੀ ਰਾਜ ਹੈ ਪਰਿਵਾਰਾਂ ਦਾ ਹੀ ਉੱਥੇ ਰਹਿਣਾ ਲੱਗਦਾ ਨਹੀਂ ਕਦੇ ਉੱਥੇ ਬਦਲਾਅ ਹੋ ਜਿਹੜੀ ਚੀਜ਼ ਕਿਸੇ ਨੂੰ ਚਾਹੀਦੀ ਆ ਉਹ ਨਹੀਂ ਦਿੱਤੀ ਜਾਂਦੀ ਉਸ ਨੂੰ ਮਵਾਰ ਕੋਣੀ ਦੇਖ ਕਿਸੇ ਜਗ੍ਹਾ ਤੇ ਬੈਠੇ ਸੀ ਹੱਥ ਠੋਕੇ ਬਣ ਕੇ ਤੇ ਕਿੱਥੋਂ ਕਿੱਥੇ ਗੱਲ ਆ ਖੜੀ ਯੂਰਪ ਤੰਗ ਤੰਗੀ ਦੇ ਸਮੇਂ ਚੋਂ ਗੁਜ਼ਰ ਰਿਹਾ ਉਸ ਤੋਂ ਬਾਅਦ ਉੱਪਰ ਆ ਜਾਈਏ ਸਾਡੇ ਦੇਸ਼ਾਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਡੋਨਲਡ ਟਰੰਪ ਤੋਂ ਬਾਅਦ ਬਹੁਤ ਚੀਜ਼ਾਂ ਬਦਲ ਰਹੀਆਂ ਉਹ ਦਰਵਾਜ਼ੇ ਬੰਦ ਕਰ ਰਿਹਾ ਜਸਟਨ ਟਰੂਡੋ ਸੀਰੀਆਨ ਰਫਿਊਜੀਆ ਦੇ ਲਈ ਬਹੁਤ ਖੁੱਲ ਦਿਲਾ ਹੋ ਰਿਹਾ ਲੋਕ ਵੀ ਕਹਿੰਦੇ ਨੇ ਜਿੰਨਾਂ ਨੂੰ ਜ਼ਰੂਰਤ ਆ ਉਹ ਇੱਥੇ ਨੂੰ ਆਉਣ ਮਸਜਿਦ ਦੇ ਵਿੱਚ ਹੋਏ ਹਮਲੇ ਨੇ ਸਾਰੀ ਕਟ ਗਿਣਤੀ ਝੰਡੋੜ ਕੇ ਰੱਖ ਦਿੱਤੀ ਕਰੇਬੀਅਨ ਦੇ ਵਿੱਚ ਲੋਕ ਛੁੱਟੀਆਂ ਛੱਟੀਆਂ ਕੱਟਣ ਨੂੰ 4 ਪੈਸੇ ਉੱਥੇ ਬਣ ਰਹੇ ਨੇ ਹੋਰ ਇਹਨਾਂ ਦੇਸ਼ਾਂ 'ਚ ਕੁਛ ਨਹੀਂ ਕੋਲੰਬੀਆ ਦੇ ਵਿੱਚ ਡਰੱਗ ਪੰਡੂਬੀਆਂ ਦੇ ਰਾਹੀ ਆ ਰਹੀ ਹੈ ਤੇ ਉੱਥੋਂ ਸਭ ਕੁਝ ਸਭ ਤੋਂ ਵੱਡੀ ਖੇਪ ਯੂਬਾ ਦੇ ਫਿਦਲ ਕਾਰੋ ਦਾ ਮਰ ਜਾਣਾ ਉਸ ਤੋਂ ਬਾਅਦ ਅੱਗੇ ਕਾਸਟਰੋ ਪਰਿਵਾਰ ਦਾ ਭੂਖਾ ਉਹਨਾਂ ਦੇ ਸਾਹਮਣੇ ਆ ਕਦੇ ਵੋਟਾਂ ਪੈਣ ਤੇ ਬਰਾਕ ਓਬਾਮਾ ਕੋਲ ਬਣ ਗਿਆ ਸੀ ਪਰ ਡੋਨਲਡ 트럼ਪ ਨੇ ਉਹ ਪੁਲ ਨਹੀਂ ਲਾਉਣਾ ਡੋਨਲਡ 트럼ਪ ਦੇ ਸਮੇਂ ਚ ਕਿਊਬਾ ਦੇ ਨਾਲ ਵਧੀਆ ਸਬੰਧ ਨਹੀਂ ਹੋ ਸਕਦੇ ਮੈਕਸੀਕੋ ਵਾਲੇ ਪਾਸੇ ਕੰਧ ਨੱਪਣ ਨੂੰ ਬੈਠਾ ਕੰਧ ਬਣਾਉਣ ਨੂੰ ਬੈਠਾ ਤੇ ਮੈਕਸੀਕੋ ਤੋਂ ਆਉਣ ਵਾਲੀਆਂ ਚੀਜ਼ਾਂ ਤੇ 20% ਦੇ ਕਰੀਬ ਟੈਕਸ ਲਾਉਣ ਨੂੰ ਬੈਠਾ ਤੇ ਥੱਲੇ ਬੰਨੇ ਬ੍ਰਾਜ਼ਿਲ ਦੇ ਵਿੱਚ ਅਰਜਨਟਾਈਨਾ ਦੇ ਵਿੱਚ ਬੰਦੇ ਹਾਲ ਨੇ ਲੋਕ ਭੁੱਖਮਰੀ ਦਾ ਸ਼ਿਕਾਰ ਨੇ ਜੇਲ੍ਹ ਦੇ ਵਿੱਚ 3-400 ਬੰਦੇ ਦਾ ਮਰ ਜਾਣਾ ਕੁਸ਼ ਦੇ ਨੱਕ ਥੱਲੇ ਦੇਖੋ ਗੱਲ ਕਿੱਥੇ ਬੜੀ ਜੰਗਬੰਦੀ ਦੀਆਂ ਗੱਲਾਂ ਕੋਲੰਬੀਆ ਚੱਲ ਰਹੀਆਂ ਨੇ ਤੇ ਇਹ ਕੁਸ਼ ਚੱਲ ਰਿਹਾ ਹੈ ਦੇ ਵਿੱਚ ਦੁਨੀਆ ਦੇ ਖਿੱਤੇ ਤੇ ਚੀਨ ਸਰਦਾਰੀਆਂ ਦੀ ਗੱਲ ਕਰ ਰਿਹਾ ਸਭ ਤੋਂ ਵੱਧ ਵਧਾ ਰਿਹਾ ਆਪਣੇ ਆਪ ਨੂੰ ਜੰਗੀ ਮਸ਼ਕਾਂ ਆਉਂਦੀਆਂ ਤਾਈਵਾਨ ਦੇ ਨਾਲ ਦੀਆਂ ਚੱਲੀਆਂ ਜਾਂਦੀਆਂ ਡੋਨਲਡ ਟਰੰਪ ਨੇ ਤਾਈਵਾਨ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ ਆ ਸਾਊਥ ਚਾਈਨਾ ਸੀ ਹੈ ਜਿੱਚ ਬਹੁਤ ਵੱਡੇ ਖਣੇਜ ਪਦਾਰਥ ਨੇ ਉਹਦੇ ਤੇ ਦਾਵੇਦਾਰੀ ਚੀਨ ਦੀ ਅਤੇ ਭਾਰਤ ਵਾਲਾ ਭਾਰਤ ਵਾਲੇ ਪਾਸਿਓਂ ਵੀ ਥੋੜੀ ਜਿਹੀ ਲੱਤ ੜਾਉਂਦੇ ਆ ਵੀ ਸਾਡਾ ਵੀ ਹਿੱਸਾ ਪਰ ਚੀਨ ਨੇ ਕੁਛ ਨਹੀਂ ਚੀਨ ਤੋਂ ਵੱਟੀਦਾ ਉਹ ਬਹੁਤ ਵੱਡੀ ਪਾਵਰ ਦੇ ਰੂਪ ਚ ਤਿੱਬਤ ਉਹਨੇ ਡਿਵੈਲਪ ਕਰ ਲਿਆ 에ਅ ਸਟ੍ਰਿਪਸ ਉਹਨੇ ਬਣਾ ਦਿੱਤੀਆਂ ਸੜਕ ਦੇ ਨਾਲ ਉਹਨੇ ਪਾਕਿਸਤਾਨ ਨੂੰ ਆਪਣੇ ਨਾਲ ਜੋੜ ਲਿਆ ਬੜਾ ਫਰਕ ਆ ਪਹਿਲੀ ਲੜਾਈ ਤੋਂ ਹੁਣ ਦੀ ਲੜਾਈ ਬਹੁਤ ਫਰਕ ਹੈ ਉਸਨੇ ਬਹੁਤ ਕੁਛ ਬੰਨਿਆ ਹੋਇਆ ਥੋਏ ਦੁਨੀਆ ਦੇ ਖਿੱਤੇ ਦੇ ਵਿੱਚ ਕੀ ਕੀ ਹੋ ਰਿਹਾ ਤੇ ਤੁਹਾਨੂੰ ਕੀ ਕੀ ਪ੍ਰਭਾਵਿਤ ਕਰ ਰਿਹਾ ਤੇ ਕਿਉਂ ਜਾਂ ਸੰਸਾਰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਪੰਜ ਚਾਰ ਸਮੇਂ ਤੁਹਾਨੂੰ ਲੱਗਦਾ ইরাਕ ਦੇ ਹਮਲੇ ਨੇ ਅਫਗਾਨਿਸਤਾਨ ਦੇ ਰਾਸ਼ਟਰ ਆਪਣੇ ਅਮਰੀਕਾ ਦੇ ਹਮਲੇ ਨੇ ਲਿਬੀਆ ਦੇ ਉੱਪਰ ਐਲਾਈਜ਼ ਵੱਲੋਂ ਕੀਤੇ ਹਮਲੇ ਨੇ ਜਿੱਥੇ ਦੇਸ਼ ਕੀਤੇ ਨੇ ਉਥੋਂ ਸਾਰਾ ਰਾਜਕਤਾ ਫੈਲ ਗਈ ਮਬਨਾਨ ਅੱਧਾ ਹਿਜ਼ਬੁੱਲਾ ਕੋਲਾ ਅੱਧਾ ਲੋਕਤੰਤਰ ਹੈ ਇਜ਼ਰਾਈਲ ਜਿਹੜਾ ਸੈਟਲਮੈਂਟ ਧੜੋ-ਤੜ ਕਰ ਰਿਹਾ ਹੈ ਤੇ ਗਾਜ਼ਾ ਦੇ ਵਿੱਚ ਹਮਾਸ ਵਾਲੇ ਬੈਠੇ ਆ ਥੋੜਾ ਜਿਹਾ ਏਰੀਆ ਉਹ ਪਰ ਆਲੇ-ਦਾਲੇ ਕੰਟਰੋਲ ਇਹਨਾਂ ਦਾ ਕੀਤਾ ਤੇ ਦੂਸਰੇ ਬੰਨੇ ਵੈਸਟ ਬੈਂਕ ਦੇ ਵਿੱਚ ਉਹਦੀ ਇਮਾਰਤਾਂ ਧੜੋ-ਤੜ ਬਣਾ ਬਦੋ-ਬਦ ਬਣਾ ਰਿਹਾ ਤੇ ਜਿਹਦੇ ਵਿੱਚ ਇਜ਼ਰਾਈਲ ਦਾ ਬਹੁਤਾਤ ਉੱਥੇ ਹੋ ਜਾਣੀ ਆ ਅਰਬ ਦੇਸ਼ ਜਿਹੜੇ ਫਲਸਤੀਨ ਨੇ ਉਹਨਾਂ ਦਾ ਕੁਝ ਨਹੀਂ ਬੱਟੀ ਦਾ ਤੁਸੀਂ ਵੇਖਿਓ ਮਦਨੀ ਯਾਹੂ ਨੇ ਹੁਣ 4 ਸਾਲ ਦੇ ਸਮੇਂ ਦੇ ਵਿੱਚ ਕੀ ਕੀ ਕੰਮ ਕਰਨਾ ਤੁਹਾਡੇ ਸਾਹਮਣੇ ਸੀਰੀਆ ਉੱਜੜ ਚੁੱਕਿਆ ਹੈ ਲੈਪੋ ਨੂੰ ਤੁਸੀਂ ਦੇਖਦੇ ਹੋ ਉੱਥੇ ਕੱਖ ਨਹੀਂ ਹੈ ਜਿਹੜਾ ਇੱਕ ਹੱਬ ਹੁੰਦਾ ਸੀ ਲੋਕ ਜਿਹੜੇ ਦੁਨੀਆ ਦੇ ਸੁਨੱਖੇ ਲੋਕ ਨੇ ਠੁਗ ਵਸਦੇ ਤੁਸੀਂ ਇੱਕ ਚੀਜ਼ ਦੇਖੋ ਇੱਕ ਮਾਨਸਿਕਤਾ ਇੱਕ ਨਾਰਮਲ ਬੰਦੇ ਦੇ ਤੌਰ ਤੇ ਆਪਾਂ ਸੋਚਦੇ ਹਾਂ ਕਿ ਕੀ ਹੋਊਗਾ ਜੇ ਪੰਜਾਬ ਥੇ ਬਣ ਗਿਆ ਰਾਜ ਕਿਹਦੇ ਤੇ ਕਰਨਗੇ ਆਸਾਦ ਕਿਹਦੇ ਤੇ ਰਾਜ ਕਰ ਰਿਹਾ ਫੇਰ ਵੀ ਉਹਨਾਂ ਰਾਜਿਆਂ ਦੀ ਅਲੀਟ ਜਿਹੜੇ ਕੁਸ਼ਕ ਲੋਕ ਨੇ 10 20 30 40 ਹਜ਼ਾਰ ਉਹ ਆਪਣੇ ਆਲ ਦਲੇ ਰੱਖਣਗੇ ਬੇਸ਼ੁਮਾਰ ਉਹਨਾਂ ਕੋਲ ਧਾਨਾ ਜਿੱਥੇ ਮਰਜ਼ੀ ਦੁਨੀਆ ਦੇ ਵਿੱਚੋਂ ਰਾਸਤਰੀ ਸ਼ਰਨ ਲੈ ਲੈਣ ਪੰਜਾਬ ਜੇ ਉੱਜੜਦਾ ਵੀ ਆ ਪਾਣੀਆਂ ਦਾ ਕੋਈ ਰਾਖਾ ਨਹੀਂ ਆਉਂਦਾ 20 ਸਾਲਾਂ ਚ ਉਥੇ ਥੇਹਾਂ ਬਣਦੀਆਂ ਨੇ ਜਗ੍ਹਾ ਜਾਂ ਰੇਤਾ ਪਾਣੀ ਨਹੀਂ ਲੱਗਣਾ ਬੰਜਰ ਬੰਜਰ ਤੋਂ ਰੇਤਾ ਅੱਗੇ ਅਰਲੂਸੀ ਨੂੰ ਵਿਕੀਪੀਡੀਆ ਤੇ ਪਾ ਕੇ ਦੇਖਿਓ ਅਰਲੂਸੀ ਦੇ ਵਿੱਚ ਕੀ ਬਣਿਆ ਦਰਿਆਵਾਂ ਦੀ ਬਹਿਣ ਰੋਕ ਦਿੱਤੇ ਰਸ਼ੀਆ ਨੇ ਤੇ ਖਤਮ ਹੋ ਗਈ ਖਾਨ ਵਸਦਾ ਹੱਸਦਾ ਇੱਕ ਬਹੁਤ ਪਰਿਵਾਰ ਜਿਹੜੇ ਉਥੇ ਫਿਸ਼ਰੀ ਦੇ ਵਿੱਚ ਮਛੇਰੇ ਸੀ ਕੇਂਦਰਿਸ ਦੇ ਵਿੱਚ ਕੰਮ ਕਰਦੇ ਖਤਮ ਹੋ ਗਈਗਾ ਦੇਖਦੇ ਦੇਖਦੇ ਸੋ ਦੁਨੀਆ ਦੇ ਵਿੱਚ ਕੀ ਕੀ ਹੋ ਰਿਹਾ ਜਿੱਥੇ ਰਾਜਕਤਾ ਦੀ ਗੱਲ ਹੈ ਉਥੇ ਹੋਰ ਕੀ ਕੀ ਤੁਹਾਨੂੰ ਪ੍ਰਭਾਵਿਤ ਕਰ ਰਿਹਾ ਸਰ ਹਰਜਿੰਦਰ ਸਿੰਘ ਦੀ ਲਾਈਨ ਨੰਬਰ 2 ਸਾਰ ਹਰਦੀਪ ਸਿੰਘ ਜੀ ਲਾਈਨ ਨੰਬਰ ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਛੋਡੀ ਸਾਹਿਬ ਗਿੱਲ ਸਾਹਿਬ ਤੁਸੀਂ ਬਹੁਤ ਵਧੀਆ ਅੱਜ ਆਪਣੇ ਮਹਿਮਾਨ ਲਿਆ ਕੇ ਜਿਵੇਂ ਪ੍ਰੋਫੈਸਰ ਅਮਰਜੀਤ ਸਿੰਘ ਜਾਂ ਹੋਰ ਬਹੁਤ ਵਧੀਆ ਤਰੀਕੇ ਦੇ ਨਾਲ ਵਿਸ਼ਲੇਸ਼ਣ ਕੀਤਾ ਸਾਰੇ ਹਾਲਾਤਾਂ ਦੇ ਉੱਤੇ ਅਖੀਰ ਦੇ ਵਿੱਚ ਨਾ ਤੁਸੀਂ ਇੱਕ ਗੱਲ ਕਹੀ ਆ ਜੇ ਦੇ ਮੁੰਡੇ ਨੂੰ ਮੰਗਤਾ ਬਣਾ ਕੇ ਤੇ ਉਹਦੇ ਨਾਲ ਜੋੜ ਕੇ ਤੁਸੀਂ ਕਹੀ ਵੀ ਤੁਸੀਂ ਆਪਣੇ ਬੰਦਾ ਵੇਖੋ ਵੀ ਕਿਹੜਾ ਤੁਹਾਡਾ ਭਲਾ ਕਰ ਸਕਦਾ ਮਤਲਬ ਕਿਸੇ ਪਾਰਟੀ ਜਾਂ ਦੂਜੇ ਤੀਜੇ ਚ ਭੈਣ ਦੀ ਲੋੜ ਨਹੀਂ ਨਾ ਇਹ ਮੇਖੋ 100 ਗੱਲ ਦਾ ਨਿਚੋੜ ਆ दुनिया ਦੇ ਵਿੱਚ ਇਸ ਵੇਲੇ ਹਾਲਾਤ ਐਸੇ ਬਣੇ ਪਏ ਆ ਵੀ ਜਿਹੜਾ ਕਿਸੇ ਇੱਕ ਚੀਜ਼ ਨੂੰ ਜੱਫਾ ਮਾਰ ਕੇ ਬੰਦਾ ਉਹਦੇ ਗੋਣ ਔਗਣ ਨਹੀਂ ਵੇਖਦਾ ਸਿਰਫ ਇਹ ਵੇਖਦਾ ਵੀ ਇਹ ਮੇਰੀ ਆ ਜਾਂ ਮੇਰੀ ਜਾਤ ਆ ਜਾਂ ਕੋਸ਼ ਆ ਉਹਨੂੰ ਜੱਫਾ ਮਾਰਦਾ ਉਹੀ ਘਾਟੇ 'ਚ ਜਾਂਦਾ ਤੇ ਜਿਹੜੇ ਚਾਲੂ ਲੋਕ ਆ ਉਹ ਪੰਨਿਆਂ ਛਾਂ ਬੇੜੀਆਂ ਵੱਲੋਂ ਲਾਤ ਰਖਦੇ ਆ ਜਿਹੜੀ ਮਲੇ ਪਤਾ ਨੀ ਕੀ ਆ ਵੈਸੇ ਚਲੋ ਕੁਦਰਤ ਦੇ ਸੂਲ ਦੇ ਖਿਲਾਫ ਆ ਪਰ ਸਮੇਂ ਦੀ ਲੋੜ ਬਣ ਗਈ ਆ ਜਿਵੇਂ ਹੁਣ ਆਪਾਂ ਵੇਖੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਵਿਚਾਰ ਦੇ ਰਿਆਂ ਬਿ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਇਹ ਭਾਜਪਾ ਪੰਜਾਬ ਨੂੰ ਕੁਝ ਨਹੀਂ ਦੇ ਰਹੀ ਜਿੱਦਾਂ ਇਹ ਹੁਣ ਪਹਿਲੇ ਇਲੈਕਸ਼ਨ ਤੋਂ ਬਾਅਦ 2014 ਦੇ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਸਾਰਿਆਂ ਜਿਹੜੀ ਜਿਹੜੀ ਸਟੇਟ 'ਚ ਹੋਇਆ ਉਥੇ ਸਪੈਸ਼ਲ ਪੈਕੇਜ ਦਿੱਤੇ ਕਿਸੇ ਜੰਮੂ ਕਸ਼ਮੀਰ ਦਿੱਤਾ ਬਿਹਾਰ 'ਚ ਹਰਿਆਣਾ ਸਾਰੇ ਪੰਜਾਬ ਭਾਵੇਂ ਉਹ ਪੂਰੇ ਨਹੀਂ ਕੀਤੇ ਵਾਅਦੇ ਲੇਕਿਨ ਕੀਤੇ ਤੇ ਆ ਪੰਜਾਬ ਦੇ ਵਿੱਚ ਝੂਠਾ ਵਾਅਦਾ ਵੀ ਨਹੀਂ ਕੀਤਾ ਇਸ ਕਰਕੇ ਇਹਨਾਂ ਨੇ ਪੰਜਾਬ ਨੂੰ ਕੁਝ ਨਹੀਂ ਦੇਣਾ ਜਦੋਂ ਵੀ ਦੇਣਾ ਉਹ ਕਾਂਗਰਸ ਨੇ ਦੇਣਾ ਤੇ ਅੱਗੇ ਵੀ ਕਾਂਗਰਸ ਦਿੰਦੀ ਆਈ ਆ ਜੇ ਪੰਜਾਬ ਦਾ ਮਤਲਬ ਇੱਕ ਸਿੱਖ ਪ੍ਰੈਜ਼ੀਡੈਂਟ ਲਿਆ ਤੇ ਕਾਂਗਰਸ ਨੇ ਸਿੱਖ ਪ੍ਰਾਈਮ ਮਿਨਿਸਟਰ ਲਿਆਦ ਕਾਂਗਰਸ ਨੇ ਦੋ ਸਿੱਖ ਚੀਫ ਆਫ ਆਰਮੀ ਸਟਾਫ ਲਏ ਉਹ ਕਾਂਗਰਸ ਨੇ ਡਿਫੈਂਸ ਮਿਨਿਸਟਰ ਹੋਮ ਮਿਨਿਸਟਰ ਫైనాన్స్ ਮਨਿਸਟਰ ਰੇਲਵੇ ਮਨਿਸਟਰ ਇਹ ਸਾਰੇ ਕਾਂਗਰਸ ਦੇ ਰਾਜਾਂ ਚਾਹੇ ਤੇ ਹੁਣ ਤੇ ਉਸ ਪਾਰਟੀ ਦਾ ਰਾਜ ਦੇ ਵਿੱਚ ਕੋਈ ਪਾਗ ਆਲਾ ਤੇ ਇਹਦੇ ਕੋਲੋਂ ਕੁਝ ਨਹੀਂ ਲੱਭਣਾ ਇਸ ਵੇਲੇ ਸਿਰਫ ਮੁੱਕ ਗੱਲ ਇਹ ਆ ਵੀ ਪੰਜਾਬ ਦੇ ਵਿੱਚੋਂ ਇਹ ਜਿਹੜੀ ਗੰਦੀ ਰਾਜਨੀਤੀ ਹੈ ਕਿਸ ਤਰੀਕੇ ਚਲੀ ਜਾਏ ਕੇਜਰੀਵਾਲ ਆ ਜਾਏ ਮੈਂ ਕਹਿੰਦਾ ਨਹੀਂ ਆਉਂਦਾ ਅਗਰ ਕਾਂਗਰਸ ਵੀ ਆ ਜਾਏ ਜਾਂ ਦੋਹਾਂ ਦੀ ਕਲੀਸ਼ਨ ਵੀ ਆ ਜਾਏ ਤੇ ਫੇਰ ਇਹ ਅਕਾਲੀ ਦਲ ਵਾਲੇ ਜਦੋਂ ਵਿਰੋਧੀ ਧਿਰ ਦੇ ਵਿੱਚ ਬਹਿਣਗੇ ਨਾ ਸਿੱਖਾਂ ਨੂੰ ਨਾਲ ਲੈ ਕੇ ਤੇ ਫੇਰ ਆਪਣੀਆਂ ਮੰਗਾਂ ਮੰਨਣਗੇ ਤੇ ਫੇਰ ਇਹ ਲੈਣਗੇ ਅੱਜ ਦੀ ਡੇਟ ਦੇ ਵਿੱਚ ਕੁਝ ਨਹੀਂ ਮਿਲਣਾ ਬਾਕੀ ਲੋਕਾਂ ਨੂੰ ਇਸ ਗੱਲ ਤੋਂ ਸਤਰਕ ਹੋਣ ਦੀ ਲੋੜ ਹੈ ਵੀ ਜਿਹੜਾ ਕੱਲ ਬਠਿੰਡੇ ਮੌੜ ਮੰਡੀ ਦੇ ਵਿੱਚ ਕੰਮ ਹੋਇਆ ਜੇ ਇੱਕ ਅੱਧਾ ਹੋਰ ਹੋ ਗਿਆ ਤੇ ਪੰਜਾਬ ਦੇ 6 ਮਹੀਨੇ ਲਈ ਰਾਸ਼ਟਰਪਤੀ ਰਾਜ ਜਿਹੜਾ ਲਾਗੂ ਹੋਇਆ ਸਮਝੋ ਤੇ ਹੁਣ ਤੇ ਐਵੇਂ ਉਹ ਮਤਲਬ ਜਿੱਤੀ ਬਾਜੀ ਹਾਰਨ ਵਾਲੀ ਗੱਲ ਆ ਪਰ ਇਹ ਹੁੰਦਾ ਪਤਾ ਨੀ ਕੀ ਆ ਤੇ ਕੀ ਨਹੀਂ ਇਹ ਤੇ ਰੱਬ ਕੋਲੋਂ ਸੁੱਖ ਮੰਗਣ ਦੀ ਲੋੜ ਆ ਤੇ ਬਾਕੀ ਲੋਕਾਂ ਨੂੰ ਇਹ ਆ ਵੀ ਪਾਰਟੀ ਬਾਜੀ ਮੇਰਾ ਪੰਥ ਮੇਰਾ ਫਲਾਣਾ ਇਹਨਾਂ ਚੀਜ਼ਾਂ ਤੋਂ ਬਚ ਕੇ ਤੇ ਚੰਗੇ ਬੰਦੇ ਜਿੱਥੇ ਲੱਭਦੇ ਆ ਕਾਂਗਰਸੀ ਲੱਭਦਾ ਉਹ ਚੋਲੋ ਆਪ ਵਾਲੇ ਲੱਭਦੇ ਉਹ ਚੋਗ ਲੋ ਮੈਂ ਕਹਿੰਦਾ ਜਿੱਥੇ ਅਕਾਲੀ ਆ ਸਮਝ ਲਓ ਵੀ ਉਹ ਪਾਰਟੀ ਨਾਲ ਜੁੜਾਉਣ ਕਰਕੇ ਖਰਾਬ ਆ ਬੰਦਾ ਵਧੀਆ ਮੈਂ ਕਹਿੰਦਾ ਉਹਨੂੰ ਵੀ ਚੋਣੋ ਤੋ ਇਸ ਤਰੀਕੇ ਨਾਲ ਪੰਜਾਬ ਦਾ ਭਲਾ ਹੋ ਸਕਦਾ ਕਿਸੇ ਇੱਕ ਰੋਖ ਨਾਲ ਚਿੰਬੜ ਕੇ ਨਹੀਂ ਹੋਣਾ ਧੰਨਵਾਦ ਤੁਹਾਡਾ ਧੰਨਵਾਦ ਜੀ ਸਾਹਿਬ ਜਸਵੀਰ ਸਿੰਘ ਲਾਈਨ ਅਪ ਜਸਵੀਰ ਸਿੰਘ ਜੀ ਸਾਬ ਮੋਹਨ ਸਿੰਘ ਖਟੜਾ ਲਾਈਨ ਅਪ ਹਾਂਜੀ ਜੀ ਮੋਹਨ ਸਿੰਘ ਜੀ हां जी बोलो जी हां जी ਇਹ ਜਿਹੜੇ ਬਾਈ ਜੀ ਕਹ ਕੇ ਗਏ ਨਾ ਹਰਦੀ ਸਿੰਘੋਣੀ ਇਹ ਵੀ ਦੋ ਚੀਜ਼ ਆਰਮੀ ਸਟਾਫ ਇਹ ਬਣਾਤੇ ਤੇ ਜਦੋਂ 55 ਦੇ ਨਹੀਂ ਹੋਏ ਸੀ ਯਾਦੀ ਮਿਲੀ ਨੂੰ ਤੇ ਉਦੋਂ ਜਿਨ੍ਹਾਂ ਨੇ ਸਿੱਖਾਂ ਨੂੰ ਕਿਹਾ ਸੀ ਇਹ ਪੇਸ਼ਾ ਉਹ ਕੌਣ ਸੀਗੇ ਹੂੰ ਬਲੰਸ਼ਟਾਰ ਕਿਨੇ ਕੀਤਾ ਸੀ ਉਹ ਗਰਦਰ ਵਾਲੇ ਦੇ ਨਹੀਂ ਕਰਨਾ ਸੀਗਾ ਹੂੰ ਐਨੇ ਗੱਲਾਂ ਹੋਏ ਤਨ ਗਰਮਾ ਚੋ ਵੋਏ ਆ ਕਾਂਗਰਸ ਦੇ ਪਹਿਲਾ ਕਰੋ ਦੂਜਾ ਦਰਵਾਜ਼ਾ ਤੀਜਾ ਗੈਲ ਸਿੰਘ ਚੌਥਾ ਇਹ ਤੇਰਾ ਕਪਤਾਨ ਕਿ ਕੱਲ ਤੇ ਨਹੀਂ ਦੇ ਹੋਏ ਆ ਇਹ ਸੱਤ ਗਰਮਾ ਚੋ ਵਾ ਜਿਹਨਾਂ ਨੇ ਨਾ ਪੰਜਾਬ ਨੂੰ ਵੇਛੜਾ ਠੀਕ ਆ ਜੀ ਖੜਕਾ ਸਾਹਿਬ ਥੈਂਕ ਯੂ ਸਖਜਿੰਦਰ ਸਿੰਘ ਜੀ ਲਾਈਨ ਨੰਬਰ 2 ਹੈਲੋ ਸਾਡੀ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਾਈ ਜੀ ਜਿਹੜੇ ਪਹਿਲੇ ਜੀ ਉਹਨਾਂ ਪਿਛਲੇ ਨੇ ਗੱਲਾਂ ਕੀਤੀਆਂ ਉਹ ਵਿਚਾਲ ਮਾੜਾ ਜਿਹਾ ਗੱਲ ਕਰ ਦਿੰਦੇ ਆ ਵੀ ਪੰਜਾਬ ਕੋਲੇ ਉਹਦੇ ਪੂਰੇ ਹੱਕ ਕਿੰਨੇ ਕਿ ਸੀਗੇ ਵੀ ਜਿਹੜਾ ਲੱਗਦਾ ਵੀ ਕੋਈ ਇੱਕ ਥੇ ਰੁਕ ਪਿਆ ਜਾਂਦੇ ਸੈਂਟਰ ਨੂੰ ਬੀਚੇ ਹੋਊ ਜਿਹੜਾ ਪੰਜਾਬ ਦੇ ਆਪਣੇ ਉਸ ਦਾ ਪਾਵਰ ਹਾਸੇ ਉੱਪਰ ਕੋਲੇ ਈਐ ਸੈਕਟਰੀਟਰੀਆਂ ਨੂੰ ਇਸ ਵਾਲੀਆਂ ਦੀ ਪਾਵਰ ਆ ਉਨੀ ਪਾਵਰ ਰੋਟੀ ਸੁਪੀ ਕੋਲੇ ਆ ਹਰੇਕ ਚੀਜ਼ ਵਾਸਤੇ ਤਾਂ ਫਰੂਲਾਂ ਲੈਣੀਆਂ ਪੈਂਦੀਆਂ ਸਾਹਾਂ ਸਾਹ ਤੋਂ ਸਦੋਂ ਸੋ ਤੇ ਦੂਜੀ ਗੱਲ ਆ ਜਿਹੜੇ ਅਹੁਦੇ ਐ ਭਾਈਓ ਉਹ ਕਾਗਲੇ ਤੋਂ ਮਿਲਨੇ ਚਾਹੀਦੇ ਆ ਜੇ ਕਾਂਗਰਸ ਨੇ ਸਿੱਖਾਂ ਨੂੰ ਕੋਈ ਅਹੁਦਾ ਦਿੱਤਾ ਤਾਂ ਸਿੱਖਾਂ ਜਿਹੋ ਦੇ ਵਿੱਚ ਸਮੂਲੀਅਤ ਆ ਤੇ ਜੋ ਬੰਦੇ ਜਿਆਰ ਬਕਰਦੇ ਆ ਮਿਲਣਾ ਚਾਹੀਦਾ ਪੂਰੀ ਜੇ ਭਾਜਪਾ ਦੇ ਵਿੱਚ ਸਿੱਖ ਜਾਣਗੇ ਫੇਰ ਭਾਜਪਾ ਨੇ ਉਹਤੇ ਹੋ ਕੇ ਥੋੜਿਆ ਕਿਤੇ ਦੇਨੇ ਕਿਸੇ ਨੂੰ ਦੂਜੀ ਗੱਲ ਇਹ ਵੀ ਅਹੁਦਾ ਕੋਈ ਵੀ ਧਰਮ ਦੇ ਨਾਮ ਨਾਲ ਤਾਂ ਮਿਲਣਾ ਨਹੀਂ ਚਾਹੀਦਾ ਇਹ ਬੰਦੇ ਜੇ ਕਾਬਲੀਤ ਹੈਗੀ ਆ ਉਹ ਚੀਜ਼ ਉਹ ਜ਼ਿਆਰ ਬੁਖਾਰ ਦਾ ਜੀ ਮੈਂ ਇੱਥੇ ਹਰਜੀਤ ਸਿੰਘ ਸੱਜਣ ਉਹਨਾਂ ਨੇ ਕੀਤਾਗਾ ਉਹ ਉਪਰ ਵੀ ਉਹਨਾਂ ਉਸ ਚੀਜ਼ ਸੀਗਾ ਉਹ ਸਿੱਖਾਂ ਦਾ ਮੰਤਰੀ ਨਹੀਂ ਬਣਿਆ ਉਹਦੀ ਕਾਬੂਲੇ ਤਾਬਦੀ ਤਾਂ ਫੇਰ ਜਾ ਕੇ ਬਣਿਆਗਾ ਦੂਜੇ ਪਾਸੇ ਭਾਈ ਜੀ ਜਿਸ ਤਰ੍ਹਾਂ ਤੁਸੀਂ ਗੱਲ ਕਰਕੇ ਲੱਦੇ ਹੋ ਨਾ ਆਪੀ ਮਿਰਲੀ ਵਗੈਰਾ ਦੀ ਜੀਵੀਆ ਵਗੈਰਾ ਦੀ ਇਹ ਸਾਰੀਆਂ ਕ੍ਰੇਸ਼ਨ ਇਹਨਾਂ ਦੀ ਅਮਰੀਕਨ ਨਹੀਂ ਕੀਤੀਆਂ ਮੈਂ ਜਦੋਂ ਪਹਿਲਾਂ ਤੁਸੀਂ ਹਮਦਰਦੀ ਬਣਦੇ ਹੋ ਕਿ ਜੇ ਕੋਈ ਸੋਟਾ ਉੱਥੇ ਕਤਲਿਆਮ ਹੋ ਗਿਆ ਜੀ ਸਦਾਮ ਹਸਨ ਨੇ ਕਤਲ ਕਰਤਾ ਜੀ ਇੰਨੇ ਬੰਦਿਆਂ ਦਾ ਉਸ ਤੋਂ ਬਾਅਦ ਲੱਖਾਂ ਦੀ ਗਣਤੀ ਹੋਏ ਵਿੱਚ ਹੁਣ ਤਾਂ ਤੇ ਪਹੁੰਚਣਾ ਹੋਣਾ ਦੇ ਤੇ ਇੰਨੇ ਜਿੱਥੇ ਵੀ ਆਈ ਹੈ ਜਿਹੇ ਡਿਕਟੇਟਰ ਨੂੰ ਪਾਸੇ ਲਾਂਬੇ ਕਰਕੇ ਆਈ ਹੈ ਉੱਥੇ ਨਰਕ ਹੀ ਬਣਿਆ ਜਿਹਦੇ ਸਰਕਾਰਾਂ ਨਹੀਂ ਬਣਿਆ ਤੁਸੀਂ ਪਛੂਕਰ ਦੇ ਵਿੱਚ ਜਿਹੜੇ ਪੰਜਾਂ ਤਹਾਂ ਸਾਲਾਂ ਦੇ ਵਿੱਚ ਆਏ ਨਾ ਰੈਵਿਊਸ਼ਨ ਜਿਹੜੀਆਂ ਇਸ ਕੰਟਰੀਆਂ ਦੇ ਵਿੱਚ ਸਵਾਹ ਹੀ ਹੋਈਆਂ ਹੋਰ ਉਹਦੇ ਜੇ ਇੱਕ ਵੀ ਕੰਟਰੀ ਹੈ ਤਾਂ ਤੁਸੀਂ ਕੇ ਦੇਖੋ ਜਿਹੜਾ ਡਕਟੇਟਰ ਆ ਉਹਦੇ ਵਿੱਚ ਨੇ ਨਾ ਉਹ ਤਾਂ ਜਿਉਂ ਰਹੇ ਆ ਲੋਕ ਬਾਕੀ ਦੂਖੀ ਹੋਣ ਗਏ ਜਿਹੜੇ ਮਾਰਦੇ ਉਹਨੇ ਕਿੰਨੇ ਕੋ ਮਾਰਦੇ ਉਹ ਤੋਂ ਵੱਧ ਸੋਈ ਮਾਰ ਰਹੇ ਆ ਭਲਾ ਕਰਨ ਦੇ ਵਿੱਚ ਤੇ ਦੂਜਾ ਜਿਹੜਾ ਕੇਸ਼ਰੀਵਾਲ ਦੀ ਗੱਲ ਜਿਹੜਾ ਬੇਆਬਦੀ ਤੇ ਗਰੋਧ ਦਾ ਮਤਲਬ ਇਹਦਾ ਹੋ ਰਿਹਾ ਹੂ ਕੈਜਰੀਵਾਲ ਨੂੰ ਮੈਂ ਨਹੀਂ ਕਹਦਾ ਹੋਵੇ ਨਾ ਹੋਵੇ ਕਿਹਦੇ ਮਰਜ਼ੀ ਪਾਰਟੀ ਨੂੰ ਹੋਣਾ ਚਾਹੀਦਾ ਪਰ ਸਰਕਾਰ ਸਿਮਰਜੀਤ ਸਿੰਘ ਮਾਨ ਦੇ ਯਰਬ ਕਰਦਾ ਸੀ ਉਹ ਸਪੋਰਟ ਨੂੰ ਉਹ ਪਤਾ ਨਹੀਂ ਕਿ ਉਹ ਲੋਕਾਂ ਦੇ ਵਿੱਚ ਹੁਦਾਰ ਨਹੀਂ ਉਹਦਾ ਕਰ ਸਕੀ ਆਸ਼ੀਅਤ ਕਰੇ ਵੀ ਆ ਮੀਡੀਏ ਦੇ ਵੀ ਉਹ ਉੱਥੇ ਤੇ ਬਾਕੀ ਸੋਸ਼ਲ ਮੀਡੀਏ ਦੇ ਵਿੱਚ ਵੀ ਹੈ ਨਹੀਂ ਉਹਨਾਂ ਹਜ਼ਾਰ ਰੋਤਾ ਤੇ ਉਹ ਜਿਹੜੇ ਬੁਕਰਦੇ ਸੀ ਉਹਨਾਂ ਦੀ ਜਰਬੰਦੀ ਸੀ ਜਿਹੜੀ ਜਿੱਤੇ ਉਹ ਲੜਾਈਆਂ ਲੜਦੇ ਰਿਹਾ ਆ ਜਿਹੜੇ ਬੰਦਿਆਂ ਦੀ ਗੱਲ ਕਰਤਿਆਂ ਉਹ ਬੰਦੇ ਦਾ ਸਟੈਂਡ ਹੈਗਾ ਉੱਥੇ ਖੜਾ ਹੋ ਸਟੈਂਡ ਵਾਲੇ ਦੀ ਕਦਰ ਕੋਣ ਪਾਉਦਾ ਠੀਕ ਹੈ ਜੀ ਧੰਕਵਾਦ ਜੀ ਥੈਂਕ ਯੂ ਬਾਕੀ ਤੁਸੀਂ ਇੱਥੇ ਸਪੋਰਟ ਦੇਖੋ ਕਾਂਗਰਸੀ ਆਏ ਉਹ ਵੀ ਬੰਦੇ ਸਰੀ ਚ ਮੂਰੇ ਉਹੀ ਹੁਣ ਅਕਾਲੀਆਂ ਦੇ ਮੂਰੇ ਉਹੀ ਹੁਣ ਆਪ ਆਦਮੀ ਆਮ ਆਦਮੀ ਪਾਰਟੀ ਲਈ ਗਏ ਹੋਏ ਨੇ ਕੋਈ ਨਹੀਂ ਇੱਥੇ ਸੁਣਦਾ ਇੱਥੇ ਇਹ ਤਾਂ ਬੰਦ ਕੇ ਅਗਲਾ ਕਹਿੰਦਾ ਜਿਹਦੀ ਸਰਕਾਰ ਬਣਦੀ ਆ ਉਧਰ ਚੱਲੇ ਚੱਲੋ ਮਾਰੋ ਛਾਲਾ ਆਪਾ ਇੱਥੇ ਦੇਖਦੇ ਜਿੱਥੇ ਐਨ ਖੁੱਲ ਕੇ ਜਿਉਂਦੇ ਆ ਇੱਥੇ ਲੋਕ ਮਾਰਗੇ ਛਾਲਾ ਉਹ ਆਮ ਆਦਮੀ ਪਾਰਟੀ ਵਧੀਆ ਵੇ ਆਮ ਆਦਮੀ ਰੋਟੀਆਂ ਕਾਂਗਰਸੀਆਂ ਤੇ ਅਕਾਲੀਆਂ ਨੂੰ ਘਰੇ ਹੁਣ ਆਮ ਆਦਮੀ ਪਾਰਟੀ ਵਧੀਆ ਪਰ ਇਹਦੇ ਵਿੱਚ ਠੀਕ ਹੈ ਉਹਨਾਂ ਬਦਲਾ ਪਰ ਬਦਲਾ ਪੱਕਾ ਰੱਖਿਓ ਇੰਉਂ ਨਾ ਵੀ ਜੇ ਹੁਣ ਆਮ ਆਦਮੀ ਚੰਗੀ ਤੇ ਹੋਰ ਸਰਕਾਰ ਬਣ ਜੇ ਜਾਂ ਕਾਹ ਨੂੰ ਆਉਣ ਤੇ ਉਹਨਾਂ ਦੇ ਕਾਕਿਆਂ ਨੂੰ ਗੱਡੀਆਂ ਚ ਲਈ ਫਿਰੋ ਤੋਰੇ ਫਿਰੋ 604 585 33 31 ਮਹਿਕ ਰੈਸਟੋਰੈਂਟ ਰੈਸਟੋਰੈਂਟ ਤੁਹਾਡੇ ਲਈ 94 ਤੇ 100 ਵੀ ਤੇ ਸਕਾਟ ਰੋਡ ਤੇ ਪੁਰਾਣਾ ਰੈਸਟੋਰੈਂਟ ਤੇ ਸੇਵਾ ਬਹੁਤ ਵਧੀਆ ਕਰਦੇ ਆ ਤੁਹਾਡੀ ਖਾਸ ਤੌਰ ਤੇ ਓਪਨਿੰਗ ਦੇ ਲਈ ਇਹਨਾਂ ਕੋਲ ਐਪੀਟਾਈਜ਼ਰ ਜਿੰਨੇ ਵੀ ਨੇ ਤੁਸੀਂ ਆਰਡਰ ਕਰ ਸਕਦੇ ਹੋ ਖਾਸ ਰੇਟਾਂ ਤੇ 6045853331 ਹਰਪਾਲ ਕੰਗਜੀ ਲਾਈਨ ਨੰਬਰ 3 ਦੀ ਸਸੀ ਗਾਲ ਜੀ ਸਸੀ ਕਾਲ ਕੰਗ ਸਰ ਗੱਲ ਸਾਹਿਬ ਵਜਾ ਵਜਾ ਕਰਾਤੀ ਇੰਨਾ ਸੋਹਣਾ ਪ੍ਰੋਫੈਸਰ ਸਾਹਿਬ ਨੇ ਵਿਸ਼ਲੇਸ਼ਣ ਕੀਤਾ ਵਜਾ ਵਜਾ ਕਰਾਤੀ ਜੇ ਲੋਕਾਂ ਦੇ ਸ਼ਾਇਦ ਕੰਨ ਖੁੱਲ ਜਾਣ ਲੋਕਾਂ ਨੂੰ ਥੋੜਾ ਦਿਮਾਗ ਖੁੱਲ ਜਾਣਾ ਪਤਾ ਲੱਗ ਜਾਵੇ ਵੇ ਰਾਜ ਹੁਣ ਤੱਕ ਰਿਹਾ ਹੈਗੇ ਨਾ ਕੋਈਆਂ ਜਿੱਥੇ ਤੱਕ ਕਈ ਲੋਕ ਗੱਲਾਂ ਕਰਦੇ ਕਿ ਨਹੀਂ ਸਾਹਿਬ ਤੇ ਹਮਲਾ ਕਾਂਗਰਸ ਦਾ ਰਾਏ ਸੀ ਉਹਨਾਂ ਨੇ ਕੀਤਾ ਅਕਾਲੀਆਂ ਨੇ ਤਾਂ ਭਾਜਪਾਈਆਂ ਨੇ ਕਰਵਾਇਆ ਅਕਾਲੀਆਂ ਨੂੰ ਫ਼ਰਜ਼ ਨਹੀਂ ਕਰਨਾ ਚਾਹੀਦਾ ਜੇ ਕੋਈ ਮਰਿਆ ਟੋੜਾ ਮਰਿਆ ਲੰਗੋਵਾਲ ਵਾਲੇ ਕਿਸੀ ਸੀ ਉੱਥੇ ਸੀ ਬਾਦਲ ਮਰਿਆ ਕੁਝ ਨਹੀਂ ਹੋਇਆ ਇਹਨਾਂ ਇਹ ਸਭ ਮਿਲੀ ਭੁਗਤ ਸੀ ਮਰੀ ਆਪ ਜੰਤਾ ਇਹ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਜੇ ਹੁਣ ਤੀਜਾ ਬਦਲ ਨਾ ਆ ਲੋਕੀ ਫੇਰ ਥੱਕੇ ਖਾਣਗੇ ਦੇਖੋ ਇਹ 5 ਸਾਲ ਦਾ ਰਾਜ ਕਰਨ ਦੇ ਲੋਕਾਂ ਨੂੰ ਪਤਾ ਲੱਗਿਆ ਨਾ ਮੁਰਗੇ ਹੋਰ ਕਿਸ ਨੂੰ ਦੇ ਦਿਓ ਪਰ ਜਿਹੜਾ ਹੈ ਨਾ ਤੁਸੀਂ ਆਪ ਪ੍ਰੋਫੈਸਰ ਸਾਹਿਬ ਨੂੰ ਲੈ ਕੇ ਧੰਨ ਤੁਹਾਨੂੰ ਸਲੂਟ ਆ ਅਮਰਿੰਦਰ ਸਿੰਘ ਸਜੀਤ ਬਰਨਾਲਾ ਸਦਾ ਸਿੰਘ ਜੀ ਕਰਨਲ ਜਸਵੇਰ ਸਿੰਘ ਬਾਲਾ ਮਨਜੀਤ ਸਿੰਘ ਜਗਦੇਵ ਸਿੰਘ ਤਲਵੰਡੀ ਗੱਟਨ ਸਿੰਘ ਟੋੜਾ ਐਲਾਨਨਾਮ ਤੇ ਦਸਤਖਤ ਕਰਨ ਨੂੰ ਸਾਰੇ ਖੜੇ ਆ 7 ਜਣੇ ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਸ਼੍ਰੀ ਅਕਾਲਤਾ ਸਾਹਿਬ ਸੌਂ ਚਕਾਉਂਦੇ ਐ ਦੱਸੇ ਕੋਈ ਇੱਕ ਦੇ ਕਿਸੇ ਪੁੱਤ ਨੂੰ ਛੜੀ ਟਾਈ ਉੱਥੋਂ ਤਾਂ ਪੜ ਲਏ ਅਮਰੀਕਾ ਤੇ ਉਧਰ ਲੱਖ ਦੇ ਵਿੱਚ ਆਮ ਪਿੰਡਾਂ ਵਾਲੇ ਮੋਢੇ ਤੇ ਪੰਨਾ ਰੱਖ ਕੇ ਗੋਲ ਬੰਨ ਕੇ ਤੁਰ ਗਏ 100 ਰੁਪਏ ਘਰਾਂ ਤੋਂ ਖਤਮ ਕਹਾਣੀ ਸ਼ੁਰੂ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਕਿਸੇ ਵੀ ਪੁੱਤ ਨੂੰ ਕੁਝ ਨਹੀਂ ਹੋਇਆ ਪਰ ਪੰਜਾਬ ਉੱਜੜ ਗਿਆ ਬਚਣ ਦੀ ਲੋੜ ਹੈ ਤੇ ਸਿਆਣੇ ਹੋਣ ਦੀ ਲੋੜ ਹੈ ਸਦਾ ਜੇ ਅੱਜ ਕਿਸੇ ਖਾਸ ਧਿਰ ਲਈ ਇਸ ਵਰਤੋਂ ਹੋ ਰਹੀ ਹੈ ਸੋਸ਼ਲ ਮੀਡੀਆ ਦੀ ਇਹ ਸੋਸ਼ਲ ਮੀਡੀਆ ਤੇ ਸਦਾ ਸਤਾਰਕ ਰਹੋ ਕਿ ਕੋਈ ਵੀ ਤੁਹਾਨੂੰ ਵਰਤ ਨਾ ਸਕੇ ਬਹੁਤ ਵਰਤ ਲਿਆ ਲੋਕਾਂ ਨੇ ਤੁਹਾਨੂੰ ਅਮਨ ਖੜਕੜ 600 4825 13 14 aman.ca ਸਰੀ ਐਂਡ ਸਪੋਰਟ ਵੈਨਕੂਵਰ ਚ ਦਫ਼ਤਰ ਨੇ ਮਾਰਗੇਜ ਦਾ ਕੰਮ ਹੈ ਤੇ ਅਮਨ ਖੜਕੜ ਨੂੰ ਹਰ ਕਿਸਮ ਦੀ ਮਾਰਗੇਜ ਲੈ ਸਕਦੇ ਹੋ ਕੰਸਟਰਕਸ਼ਨ ਕੰਸਟਰਕਸ਼ਨ ਰੈ ਕਮਰਸ਼ੀਅਲ ਮਾਰਗੇਜ ਬੈਂਕਾ ਨਹੀਂ ਦਿੰਦੀਆਂ ਤਾਂ ਕ੍ਰੈਡਿਟ ਯੂਨੀਅਨ ਨਹੀਂ ਤਾਂ ਪਰਸਨਲ ਫਾਈਨਾਂਸਿੰਗ ਕਰਾ ਕੇ ਦੇਣਗੇ 6048251314 ਸਰ ਸੁਖਦੇਵ ਸਿੰਘ ਜੀ ਲਾਈਨ ਨੰਬਰ 4 ਸੁਖਦੇਵ ਸਿੰਘ ਜੀ ਬੋਲਿਆ ਸੀ ਉਹਨੇ ਜੀ ਨੇ ਜਿਹੜਾ ਹਮੈਦਦੀ ਬਾਦਲ ਨੂੰ ਉਹਦੇ ਬਾਰੇ ਉਹਨੇ ਪਿਆ ਸੀ ਆ ਮੈਂ ਨਾ ਹੌਲੀ ਹੌਲੀ ਬੋਲਦਾ ਹੁਣਾਂ ਤੁਸੀਂ ਫੋਨ ਛੇਤੀ ਕੱਟਿਓ ਨਾ ਕੋਨੇ ਕਿ ਐਸੀ ਤਕਸਾਲ ਆਲੇ ਹੁਣ ਬੰਦ ਕਾ ਤੋ ਇਹਨਾਂ ਦੇ ਇਹਨਾਂ ਦੇ ਜਵਾਨ ਕਾ ਤੋ ਬੰਦ ਹੈ ਉਸ ਵਿਸ਼ੇ 'ਚ ਮੈਂ ਬੋਲਣਾ ਚਾਹੁੰਨੇ ਜਦੋਂ ਨਿਰੰਕਾਰ ਨਿਕਲ ਗਿਆ ਸੀਗਾ ਅੰਮ੍ਰਿਤਸਰ ਤੋਂ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਸੰਤਾਂ ਨੇ ਉਦੋਂ ਇਹਨਾਂ 2 ਸਾਲ ਮਗਰੋਂ ਇੱਕ 23000 ਬੰਦੇ ਦੇ ਕੱਟ ਛਿਖਿਆ ਸੀਗਾ 100 ਗਾਂ ਮਾਰਨ ਵਾਲੇ ਨੂੰ ਮਾਫ਼ ਕੀਤਾ ਜਾ ਸਕਦਾ ਪਰ ਬਾਦਲ ਨੂੰ ਨਹੀਂ ਮੈਦਕਸ਼ਾਲੀ ਹੈ ਟਕਸਾਲ ਤੋਂ ਵਿਦਿਆਲੀ ਹੈ ਕਿਉਂਕਿ ਹੁਣ ਹਰਨਾਮ ਸਿੰਘ ਧੁੰਮੇ ਨੇ ਖੁੱਲੀ ਮੈਦ ਕੀਤੀ ਹੈ ਬਾਦਲ ਦੀ ਹੁਣ ਟਕਸਾਲ ਮੈਂ ਇਹ ਸਭ ਨੂੰ ਟਕਸ਼ਾਲਗਿਆਂ ਨੂੰ ਕਹ ਰਿਹਾ ਜੇ ਸੁਣ ਰਹੇ ਹੋ ਤਾਂ ਮੇਰਾ ਸਨੇਹਾ ਜ਼ਰੂਰ ਦੇ ਦੇਣ ਹੁਣ ਟਕਸ਼ਾਲੀ ਵੀਰਾਂ ਲਈ ਸੋਚਣ ਦੀ ਘੜੀ ਹੈ ਕਿ ਅਸੀਂ ਉਸ ਮਹਾਨ ਜਰਨੈਲ ਦੀ ਗੱਲ ਮੰਨਣੀ ਹੈ ਜਾ ਕੇ ਹਰਨਾਮ ਸਿੰਘ ਤੁਮੇ ਦੀ ਮੈਂ ਤੁਮੇ ਉਹ ਬੈਲਕੋਲ ਸਪਸ਼ਟ ਕਰਦੇ ਆਂ ਕਿ ਸਾਰੇ ਤਕਸਾਲੀ ਲਈ ਲੱਗਨੀ ਨਹੀਂ ਜਮੀਰ ਮਰੀ ਵਾਲੇ ਆ ਮੈਂ ਤੁਮੇ ਮੈਂ ਤਕਸਾਲੀ ਹੋਣ ਦੇ ਨਾਤੇ ਉਹਨੇ ਤੁਮੇ ਦੇ ਬਿਆਨ ਦੀ ਘੋਰ ਨਿੰਦਿਆ ਕਰਦੇ ਤੇ ਉਹਨੂੰ ਚੈਲੰਜ ਕਰਦੇ ਵੀ ਹਜੇ ਤਕਸਾਲੀ ਉਹਨਾਂ ਜਮੀਰ ਜਿਉਂਦੀ ਹੈ ਤੇ ਹਜੇ ਉਹਨਾਂ ਦੇ ਸਾਥੀ ਬੈਠੇ ਆ ਤੇਰੀ ਗੱਲ ਨਹੀਂ ਮੰਨੀ ਜਾਊਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਠੀਕ ਹੈ ਤੋਂ ਮੇਰੀ ਟਕਸਾਲ ਨਹੀਂ ਟਕਸਾਲ ਬਾਬਾ ਦੀਪ ਸਿੰਘ ਦੀ ਹੈ ਤੋਂ ਮੇ ਅਰਗੇ ਕਈ ਆਏ ਤੇ ਕਈ ਤੁਰ ਗਏ ਜਿਹੜੇ ਗੋਡਿਆਂ 'ਚ ਬਹਿਣ ਰਾਜਨੀਤਿਕ ਬੰਦਿਆਂ ਦੇ ਉਹ ਜਰਨੈਲ ਨਹੀਂ ਹੁੰਦੇ ਇਸ ਟਕਸਾਲ ਦੇ ਜਰਨੈਲ ਉਹ ਹੁੰਦੇ ਜਿਹੜੇ ਮਹਿਤੇ ਚੌਂਕ ਤੋਂ ਬੋਲਦੇ ਵੀ ਤੂੰ ਦੱਸੀ ਬਾਦਲਾ ਤੈਨੂੰ ਕੀ ਚਾਹੀਦਾ ਤੇਰੇ ਕੋਲੋਂ ਸਾਨੂੰ ਨਹੀਂ ਕੋਈ ਚਾਹੀਦਾ ਸ਼ੁਰੂਆਤ ਦੇ ਦਿਨਾਂ ਨਾਲੇ ਉਸ ਸਮੇਂ ਉਮਦਸ ਜਮੈਲ ਨੇ ਕਿਹਾ ਵਪਾਰਕ ਸੰਦੇਸ਼ ਤੇ ਦੁਨੀਆ ਦੇ ਵਿੱਚ ਹੋ ਰਹੀਆਂ ਗੱਲਾਂ ਦੀ ਗੱਲਬਾਤ ਕਰ ਰਿਹਾ ਮੈਂ ਪਰ ਉਹ ਬਾਹਰ ਆ ਸਾਰੀਆਂ ਚੀਜ਼ਾਂ ਛੱਡ ਕੇ ਪੰਜਾਬ ਤੇ ਹੀ ਹਲੇ ਵੀ ਆਪਣੀ ਸੂਈ ਜਿਹੜੀ ਟਿਕੀ ਹੋਈ ਹੈ ਉਸ ਉਹ ਗੱਲ ਕਰਨੀ ਤੁਸੀਂ ਚਾਹੁੰਦੇ ਹੋ ਮੈਂ ਹੁਣ ਕੁਝ ਕਹਿ ਨਹੀਂ ਸਕਦਾ ਮਰਜ਼ੀ ਹੈ ਤੁਹਾਡੀ ਸਵੇਪ ਸਿੰਘ ਦੀ ਲਾਈਨ ਨੰਬਰ 2 ਹਾਂਜੀ ਗਿੱਲ ਸਾਹਿਬ ਆਖੀ ਖਾਲਸਾ ਬਾਗ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜਿ ਵਿਸ਼ਲੇਸ਼ਣ ਕਰਵਾਇਆ ਪ੍ਰੋਫੈਸਰ ਸਾਹਿਬ ਤੋਂ ਵੀ ਔਰ ਤੁਸੀਂ ਗੱਲਾਂ ਕੀਤੀਆਂ ਨਾ ਮੈਨੂੰ ਇੱਕ ਗੱਲ ਤੇ ਹਰ ਹਰਦੀਪ ਸਿੰਘ ਹੁਣੇ ਵੀ ਸੋਢੀ ਸਾਹਿਬ ਬੋਲੇ ਸੀ ਬੜੀ ਵਧੀਆ ਗੱਲ ਸਾਰੇ ਕਰਕੇ ਤੁਹਾਡੇ ਕਾਲਰ ਜਿੰਨੇ ਵੀ ਆਏ ਆ ਦੇਖੋ ਅਸੀਂ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਪੰਜਾਬੀ ਜਾਂ ਸਿੱਖ ਹੈ ਜੇ ਨਾ ਜੀ ਸਾਨੂੰ ਸਾਰਿਆਂ ਨੂੰ ਕਿੰਨਾ ਪੰਜਾਬ ਪਰ ਕਿਉਂਕਿ ਤੁਸੀਂ ਜਿਹਦਾ ਹੁਣ ਗੱਲ ਕੀਤੀ ਸੀ ਵੀ ਉਸ ਉੱਥੇ ਵਾਕਿਆ ਸਹੀ ਗੱਲ ਹੈ ਕਿਉਂਕਿ ਇਹ ਇਲੈਕਸ਼ਨ ਵਿੱਚ ਦੋ ਦਿਨ ਹੈ ਔਰ ਪੰਜਾਬ ਤੋਂ ਬਾਹਰ ਬੈਠਾ ਹਰ ਪੰਜਾਬੀ ਇਹ ਸੋਚਦਾ ਹੈ ਪੰਜਾਬ ਨੂੰ ਪੰਜਾਬ ਤੋਂ ਸਾਨੂੰ ਠੰਡੀਆਂ ਹਵਾਵਾਂ ਉੱਥੇ ਪੰਜਾਬ ਦੇ ਲੋਕਾਂ ਦਾ ਕੋਈ ਲੁੱਟ-ਛੋਟ ਨਾ ਹੋਵੇ ਉੱਥੇ ਬੜੀ ਵਧੀਆ ਲੋਕ ਤਰੀਕੇ ਨਾਲ ਰਹਿਣ ਸੋ ਉਹਦੇ ਲਈ ਸਾਡੀ ਸੋਚ ਹੈ ਇੱਥੇ ਬਾਹਰ ਬੈਠਿਆਂ ਦੀ ਕਿੰਨੀ ਚੰਗੀ ਹੈ ਕਾਸ਼ ਇਹੋ ਹੀ ਸੋਚ ਕੇ ਪੰਜਾਬੀ ਵੀ ਇੱਥੇ ਪੰਜਾਬ ਵਿੱਚ ਰਹਿੰਦੇ ਲੋਕ ਵੀ ਦਿਖਾ ਦੇਣ ਮਾੜੀਆਂ ਮੋਟੀਆਂ ਨਸ਼ਿਆਂ ਲੈਣ ਨੂੰ ਜਾਂ ਸ਼ਰਾਬ ਦੀਆਂ ਬੋਤਲਾਂ ਤੋਂ ਜਾਂ ਹੋਰ ਵੱਡੀਆਂ ਠੋਰੀਆਂ ਲੈਣ ਤੋਂ ਜੇਕਰ ਰਲ ਮਿਲ ਕੇ ਸਾਰੇ ਇੱਕ ਚੰਗੀ ਸਰਕਾਰ ਚੁਣ ਲੈਣ ਜਿਹੜੀ ਪੰਜਾਬ ਦਾ ਭਲਾ ਕਰ ਸਕੇ ਬਚਾਅ ਕਰ ਸਕੇ ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਔਰ ਤੁਹਾਡੀ ਗੱਲ ਚ ਵੀ ਬੜਾ ਦਮ ਹੈਗਾ ਹੈ ਭਾਈ ਅਸੀਂ ਸਾਰੇ ਬਾਹਰ ਵਾਲੇ ਕਿੰਨਾ ਸੋਚਦੇ ਪੰਜਾਬ ਬਾਰੇ ਔਰ ਲੋਕ ਹਾਲਾਂਕਿ ਅਸੀਂ ਨਾ ਉੱਥੇ ਜਾ ਕੇ ਰਹਿਣਾ ਹੈ ਨਾ ਕੋਈ ਐੋ ਜੀ ਗੱਲ ਹੈ ਜਿਹੜੇ ਉੱਥੇ ਰਹਿੰਦੇ ਹੈ ਗੁਰੂਆਂ ਦੀ ਧਰਤੀ ਹੈ ਅਸੀਂ ਤਾਂ ਗੁਰੂਆਂ ਦੀ ਧਰਤੀ ਦੀ ਗੱਲ ਸੋਕ ਮੰਗ ਰਹੇ ਹੈ ਸੋ ਜੇ ਸਾਰੇ ਪੰਜਾਬੀ ਉੱਥੇ ਵੀ ਰਾ ਕੇ ਸਾਡੇ ਨੂੰ ਪੰਜਾਬ ਦੇ ਭਲੇ ਲਈ ਸੋਚਣ ਤਾਂ ਇਹ ਨਾ ਗੁਰਦੇ ਰਾਜ ਜਿਹੜੇ ਰਾਜਜੀ ਜਿਹੜੇ ਪਰਿਵਾਰੀ ਜਾਂਦੇ ਇਹਨਾਂ ਤੋਂ ਆਪਣਾ ਬਚਾਅ ਕਰ ਸਕਦਾ ਬਹੁਤ ਚੰਗੀ ਗੱਲ ਹੈ ਸੋ ਐਨੇ ਸੋ ਮੇਰੇ ਵਿਚਾਰ ਸੀ ਜੀ ਸਰੋ ਸਰਵਜਿਸਰਦੀ ਸਾਪ ਪ੍ਰਭਜੋਤ ਪਾਲ ਸਿੰਘ ਜੀ ਲਾਈਨ ਨੰਬਰ 3 ਸਰਵ ਸਾਹ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਸਿੰਘ ਸਾਹਿਬ ਦੇਖੋ ਉੱਥੇ ਇਲੈਕਸ਼ਨ ਜਿਹੜਾ ਚੱਲ ਰਿਹਾ ਹੈਗਾ ਆ ਗੱਲ ਉੱਥੇ ਆਪਾਂ ਕਰ ਰਹੇ ਆ ਤੇ ਦੇਖੋ ਆਪਾਂ ਜੇ ਸਾਹ ਕਲੈਕਸ਼ਨ ਕਰਨੀ ਹੈਗੀ ਆ ਉਥੇ ਪੰਜਾਬ ਲਈ ਪੰਜਾਬੀਆਂ ਲਈ ਉਥੇ ਪੰਜਾਬ ਦੇ ਲੋਕਾਂ ਲਈ ਤਾਂ ਆਪਾਂ ਨੂੰ ਉਸ ਹਿਸਾਬ ਨਾਲ ਗੱਲ ਕਰਨੀ ਚਾਹੀਦੀ ਆ ਜੇ ਅਸੀਂ ਹਿੰਦੁਸਤਾਨ ਲਈ ਜਿੱਤ ਹਾਰ ਕਰਨੀ ਆ ਤੇ ਸਾਨੂੰ ਗੱਲ ਉਸ ਹਿਸਾਬ ਨਾਲ ਕਰਨੀ ਚਾਹੀਦੀ ਆ ਦੇਖੋ ਜੇ ਕੇਜਰੀ ਮੈਂ ਹਿੰਦੂ ਹੁੰਦਾ ਮੈਂ ਹਿੰਦੁਸਤਾਨ ਦਾ ਪਾਤੀ ਹੁੰਦਾ ਮੈਂ ਕਹਿੰਦਾ ਉਹ ਜਾ ਕੇ ਨਾ ਕੇਜਰੀ ਸਾਡੇ ਲਈ ਬਹੁਤ ਵਧੀਆ ਬੰਦਾ ਆ ਕੇਜਰੀ ਨੇ ਉਥੇ ਕਰਪਸ਼ਨ ਨੂੰ ਦੇਣੀ ਆ ਕੇਜਰੀਆਲ ਨੇ ਉਹਤੇ ਵਧੀਆ ਰਾਜ ਕਰ देना ਸਿਸਟਮ ਸੁਧਾਰ देना ਹੁਣ ਵੱਧ ਕਿਸਮਤੀ ਇਹੋ ਆ ਉਹ ਸਾਰੇ ਦਾ ਸਾਰਾ ਹਿੰਦੁਸਤਾਨ ਪੰਜਾਬ ਨੂੰ ਟਾਰਗੇਟ ਕਰਕੇ ਪੰਜਾਬ ਦਾ ਸਦਾ ਹੀ ਕਹਣ ਕਰਦਾ ਤਿੰਨ ਵਾਰੀ ਸ੍ਰੀ ਦਰਬਾਰ ਸਾਹਿਬ ਤੇ ਇਹ 47 ਤੋਂ ਬਾਅਦ ਹਮਲੇ ਕਰ ਚੁੱਕਿਆ ਦਿੱਲੀ ਵਿੱਚ ਸਾਡਾ ਕਤਲੇਆਮ ਮੇਥ ਲਈ ਤੇ ਜਿਹੜਾ ਵੀ ਵੱਖਵਾਦੀ ਇਸ ਦੇਸ਼ ਨੂੰ ਤੋੜਨ ਦੀ ਗੱਲ ਕਰੂਗਾ ਅਸੀਂ ਉਹ ਲਈ ਸਖਤ ਸਖਤ ਤਨੋਂ ਬਣਾਵਾਂਗੇ ਹੁਣ ਜਿਹੜੇ ਦੁਜਾਕੇ ਨਾਲ ਕਹਿੰਦੇ ਆ ਵੀ ਦੁਜਾਕੇ ਨਾਲ ਜਿਹੜੇ ਉਹਨਾਂ ਦੇ ਖਾਲਸਤਾਨੀ ਸਪੋਰਟ ਕਰ ਰਹੇ ਆ ਭਾਈ ਜਿਹੜੇ ਦੁਜਾਕੇ ਨਾਲ ਖਾਲਸਤਾਨ ਦੀ ਕਲ ਸਪੋਰਟ ਕਰਦੇ ਰਹੇ ਆ ਅੱਜ ਉਹ ਗੱਲ ਛੱਡ ਚੁੱਕੇ ਉਹ ਖਾਲਸਤਾਨੀ ਨਹੀਂ ਹੈਗੇ ਉਹਨਾਂ ਨੇ ਆਪਣਾ ਆਈਡੀਆ ਬਦਲ ਲਿਆ ਤੇ ਉਹ ਬਾਹਰ-ਬਾਹਰ ਕਹਿ ਰਹੇ ਆ ਤੇ ਦੇਖੋ ਇਹ ਜੇ ਦੁਜਾਕੇ ਨਾਲ ਨੁਕਸਾਨ ਆ ਇਹਦੇ ਨੁਕਸਾਨ ਆ ਬਿਲਕੁਲ ਦੁਜਾਕੇ ਨਾਲ ਵਕਤੀ ਤੌਰ ਤੇ ਨੁਕਸਾਨ ਆ ਪਰ ਜੇ ਅਸੀਂ ਅੱਜ ਇਹ ਮੰਨ ਕੇ ਤੁਰ ਪੈ ਵੀ ਸਾਡਾ ਵਕਤੀ ਤੌਰ ਤੇ ਨੁਕਸਾਨ ਨਾ ਹੋਵੇ ਤਾਂ ਅਸੀਂ ਲੰਮੇ ਟਾਈਮ ਲਈ ਆਪਣਾ ਨੁਕਸਾਨ ਕਰਾ ਰਹੇ ਹਾਂ ਸਾਨੂੰ ਗੁਲਾਮੀ ਦਾ ਅਹਿਸਾਸ ਹੀ ਨਹੀਂ ਉਹ ਸਾਡੇ ਤੇ ਕਿਹੋ ਜਿਹਾ ਰਾਜ ਕਰਨ ਨੂੰ ਤਿਆਰ ਆ ਸਾਨੂੰ ਉਸ ਦੇਸ਼ ਵਿੱਚ ਦੂਜਾ ਮਿਨੋਰਟੀ ਐਜ਼ ਮੈਂ ਮੱਥੇ ਉਹਨਾਂ ਭਰਾਵਾਂ ਦੇ ਤਿਲਕ ਨੂੰ ਉਤਜਾਗ ਸਲਾਮ ਆ ਉਹ ਆਪਣੇ ਤਿਲਕ ਲਾਉਂਦੇ ਆ ਪਰ ਮੈਂ ਸਿੱਖ ਰਹਿਣਾ ਚਾਹੁੰਦਾ ਮੇਰੇ ਭਰਾ ਸਿੱਖ ਰਹਿਣਾ ਚਾਹੁੰਦੇ ਆ ਜਾਂ ਉਹੋ ਜੇ ਹੋਰ ਉੱਥੇ ਮਿਨੋਰਟੀ ਧਰਮ ਹੈਗੇ ਆ ਮਿਨੋਰਟੀ ਜਾਤੀਆਂ ਹੈਗੀਆਂ ਜਿਹੜਾ ਇਹ ਜਿਹੜਾ ਕਿ ਉੱਥੇ ਉਹਨਾਂ ਹਿੰਦੂ ਧਾਰਾ ਦਾ ਜਿਹੜਾ ਉੱਥੇ ਰਾਜ ਰਹਿੰਦਾ ਹੈਗਾ ਆ ਤੇ ਜਿਹੜੇ ਸਾਡੇ ਬਹੁਜਨ ਸਮਾਜ ਪਾਰਟੀ ਜਿਹਨਾਂ ਨੂੰ ਉਹ ਨੀਚ ਜਾਤੀ ਕਰਕੇ ਦੂਜਾ ਕਿੰਨਾ ਸੰਬੋਧਿਤ ਕਰਦੇ ਆ ਉਹਨਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ Hindu ਧਰਮ 'ਚੋ ਜਿੰਨੀ ਦੇਰ ਹੋ ਨਹੀਂ ਨਿਕਲਦੇ ਉਹ ਨੀਚੋਂ ਉੱਚ ਨਹੀਂ ਹੋ ਸਕਦੇ ਜੇ ਨੀਚੋਂ ਉੱਚ ਹੋਣਾ ਤਾਂ თანਤਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਆ ਆਕੇ ਅਨੁਸਾਰ ਖਾਕਿਸਤਾਨ ਜਿੰਨੀ ਦੇਰ ਸਾਫਤ ਨਹੀਂ ਹੁੰਦਾ ਉੱਥੇ ਬਰਾਬਰੀ ਨਹੀਂ ਹੋਣੀ ਸਾਡੀ ਜ਼ਮੀਰ ਸ਼ੀਆ 19 ਦੇਰ ਮਰਦੀ ਰਹਿਣੀ ਵੈਕੂ ਜੀ ਖਾਲਸਾ ਵਾ ਕਿ ਪਤੀ ਦੀ ਗੁਰਨਾਮ ਸਿੰਘ ਦੀ ਲਾਈਨ ਨੰਬਰ 4 ਇਲਸਾ ਸਸੀ ਗਾਲੀ ਸਤਿ ਸ੍ਰੀ ਅਕਾਲ ਬਾਈ ਜੀ ਗੱਲਸਾ ਪਹਿਲਾਂ ਧੰਨਵਾਦ ਤੁਹਾਡਾ ਤੁਸੀਂ ਡਾਕਟਰ ਅਮਰ ਜੀ ਸਾਨੂੰ ਨੂੰ ਲਿਆ ਕੇ ਜੋ ਵੀ ਪ੍ਰੋਗਰਾਮ ਦਿੱਤਾ ਬਹੁਤ ਵਧੀਆ ਆਪਾਂ ਗੱਲ ਕਰਦੇ ਆ ਅੱਜ ਪੰਜਾਬ ਦੀ ਇਲੈਕਸ਼ਨ ਤੇ ਆਪਣੇ ਕਈ ਵੀਰ ਭਰਾ ਇੱਥੇ ਬਾਹਰ ਬੈਠੇ ਬਦਲਾ ਚਾਹੁੰਦੇ ਆ ਆਪਾਂ ਬਦਲਾ ਚਾਹੁੰਦੇ ਅਸੀਂ ਉਹੋ ਜਿਹੇ ਜਿਹੜਾ ਅੱਗੇ ਦੇਖ ਚੁੱਕੇ ਆ ਬਦਲਾ ਜਿਵੇਂ ਛੋੜੀ ਸਾਹਿਬ ਗੱਲ ਕਰ ਗਏ ਆ ਇਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀ ਆ ਵੀ ਜੋ ਵੀ ਦਿੱਤਾ ਆ ਪੰਜਾਬ ਨੂੰ ਜਾਂ ਸਿੱਖਾਂ ਨੂੰ ਉਹ ਕਾਂਗਰਸ ਨੇ ਦਿੱਤਾ ਆ ਇਹ ਗੱਲ ਕਾਹਦੂ ਭੁੱਲਦੇ ਆ ਵੀਰ ਮੇਰੇ ਵੀ 1984 ਦੇ ਵਿੱਚ ਜੋ ਕੁਝ ਹੋਇਆ ਜਿੱਥੇ ਆ ਇਹਨਾਂ ਦੇ ਵਾਲੀ ਕਾਂਗਰਸੀਆਂ ਨੇ ਕੋਈ ਘਰ ਬਚਿਆ ਉਹ ਮੈਂ ਕਹਿੰਦਾ ਇਹ 2-4 ਕਲ ਰੇਡ ਇਹਨਾਂ ਦੇ ਬਚਿਆ ਹੋਊਗਾ ਦਿੱਲੀ ਦੇ ਵਿੱਚ ਕੀ ਕੁਝ ਇਹਨਾਂ ਨੇ ਕੀਤਾ ਆ ਦਰਬਾਰ ਸਾਹਿਬ ਤੇ ਕੀ ਕੁਝ ਇਹਨਾਂ ਨੇ ਕੀਤਾ ਆ 84 ਤੋਂ ਬਾਅਦ 15 ਸਾਲ ਇਹਨਾਂ ਨੇ ਭੀ ਆਪ ਕੇ ਸ਼ਿਕਾਰ ਖੇਡਿਆ ਮੁੰਡਿਆਂ ਦਾ ਇਹ ਵੀ ਛੋਟੀ ਸਾਹਿਬ ਦੱਸ ਜਾਂਦੇ ਵੀ ਇਹ ਵੀ ਕਾਂਗਰਸ ਦੀ ਦੇਣ ਆ ਮੈਂ ਕਹਿੰਦਾ ਵੀ ਲਾਹਨ ਤਿਆ ਜੇ ਆਪਾਂ ਦੁਬਾਰਾ ਕਾਂਗਰਸ ਦਾ ਨਾਮ ਲਈਏ ਇੱਕ ਪਾਸੇ ਤਾਂ ਆਪਾਂ ਚੋਣੇ ਆ ਬਦਲਾ ਤੇ ਬਦਲਾ ਚੋਣੇ ਕਾਂਗਰਸ ਦਾ ਤੇ ਉਦੋਂ ਜੋ ਹੁੰਦਾ ਆ ਹੋਈ ਜਾਂਦਾ ਉਹ ਆਪਾਂ ਬਾਹਰ ਬੈਠੇ ਕਾਦੋ ਆਪਾਂ ਇੱਕ ਦੂਜੇ ਰੇਡੀਓ ਦੇ ਉੱਤੇ ਦੂਜੇ ਦੇ ਟੁੰਬਟਾ ਲਾਉਣੇ ਆ ਵੀ ਕਾਂਗਰਸ ਵਧੀਆ ਆਮ ਆਦਮੀ ਵਧੀਆ ਦੂਜਾ ਜੇ ਹੁਣ ਮੰਨ ਲਓ ਬਾਦਲ ਪਰੇ ਹੋ ਜੂਵੇ ਆਪਾਂ ਦੇ ਇਹ ਦੇਖਣਾ ਵੀ ਸਿੱਖਾਂ ਨੂੰ ਕੀ ਮਿਲਿਆ ਆ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਵਿਆਦਵੀ ਲਈ ਪਿੱਟੇ ਆ ਸਾਰੇ ਲੋਕ ਬਾਹਰ ਬੈਠੇ ਹਨ ਉਹ ਕਿਤੇ ਮੁੱਦਾ ਹੀ ਨਹੀਂ ਕੋਈ ਗੱਲ ਹੀ ਨਹੀਂ ਅੱਜ ਜਿਹਨਾਂ ਨੇ ਦਰਬਾਰ ਸਾਹਿਬ ਟਾਇਆ ਉਹੀ ਗੋਟਕਾ ਸਾਹਿਬ ਫੜ ਕੇ ਸੋਹਾ ਖਾਂਡੇ ਆ ਅਸੀਂ ਹੋਣ ਲਈ ਮੈਂ ਤੇ ਆਈਏ ਮੈਂ ਕਹਿੰਦਾ ਵੀ ਲੱਖ ਲਾਂ ਤੇ ਆਏ ਹੋਏ ਆ ਲੋਕਾਂ ਦੇ ਧੰਨਵਾਦ ਜੀ ਧੰਨਵਾਦ ਜੀ ਕੁਲਦੀਪ ਸਿੰਘ ਜੀ ਲਾਈਨ ਨੰਬਰ 5 ਸਤਿ ਸ੍ਰੀ ਅਕਾਲ ਮੈਂ ਦੋ ਬੁੱਧਾਂ ਦੇ ਗੱਲ ਕਰਨੀ ਇੱਥੋਂ ਵਾਲੇ ਤੇ ਵੀ ਜਿੱਦਾਂ ਹੁਣ ਜਿਹੜਾ ਟਰੰਪ ਆ ਉਹਦੇ ਜੋ ਫੈਸਲੇ ਆ ਉਹਦੇ ਨਾਲ ਸਮੀਕਰਨਾ ਬਦਲ ਰਹੀਆਂ ਟ੍ਰੇਡ ਤੇ ਵੀ ਅਸਰ ਪਊਗਾ ਜਿਹੜੀ ਸਿਲੀਕਨ ਵੈਲੀ 'ਚ ਆਪਣਾ ਇੰਨਾ ਸੌਫਟਵੇਅਰ ਦਾ ਇੰਜੀਨੀਅਰ ਬੈਠਾ ਸੀ ਉਹ ਸਾਰੇ ਕੱਢੂਗਾ ਉਹ ਜਿਹੜੇ ਯਾਰੀਆਂ ਪੋਦੇ ਸੀ ਨਾ ਉਹਦੇ ਨਾਲ ਵੀ ਹੱਬ ਕੇ ਹੇਕ ਕਰੂਗਾ ਉਹ ਪਹਿਲਾਂ H1 B ਵੀਜ਼ੇ ਵਾਲੇ ਸਾਰੇ ਗੈਰ ਨੇ ਉਹਨੇ ਉਹ ਵਿਵਤਾ ਪਈ ਆ ਹੁਣ ਜਿਹੜਾ ਇੰਡੀਆ ਦਾ ਜੀਡੀਪੀ ਰੇਟ ਸੀਗਾ ਨੋਟਬੰਦੀ ਦੇ ਕਾਰਨ ਮੈਂ ਦੇਖ ਸੀ ਉੱਤੇ ਸਕਾਲਰ ਆਏ ਸੀ ਸੁਬਰਾਮਣੀਆ ਵਗੈਰਾ ਉਹ 2% ਡਿੱਗ ਪਈ ਉਹ ਜੀ ਤੇ ਜਿਹੜੀ ਖੇਤੀ ਜ ਆ ਉਹਦੇ ਤੇ 4% ਪ੍ਰੋਡਿਊਸ ਦੇ ਵਿੱਚ ਜ ਆ ਪਰਸੈਂਟ ਡਿੱਗ ਪਈ ਜਿਹੜੀ 2018 ਦੀ ਹੋਊਗੀ ਉਹਦੇ ਬਾਰੇ ਬਰੀਡ ਆ ਵੀ ਕਿਵੇਂ ਚੱਲੂਗੀ ਦੂਜੀ ਗੱਲ ਰਹੀ ਇੱਕ ਬਹੁਤ ਵੱਡੀ ਤੁਹਾਨੂੰ ਖਬਰ ਦੱਸਣ ਲੱਗਿਆ ਵੀ ਜਿਹੜੀ ਬਾਬਾ ਦੀਪ ਸਿੰਘ ਦੀ ਯਾਦਗਰ ਸੀਗੀ ਪ੍ਰਕਰਮਾਂ ਦੇ ਵਿੱਚ ਤੁਸੀਂ ਦੇਖੀ ਹੋਣੀ ਉੱਥੇ ਇੱਕ ਪੱਥਰ ਲੱਗਿਆ ਹੁੰਦਾ ਸੀ ਜੀ ਜਿੱਥੇ ਟੈਂਕ ਫਸਿਆ ਸੀਗਾ ਤੁਸੀਂ ਬਾਅਦ 'ਚ ਵੀ ਸ਼ਾਇਦ 84 ਦੇ ਅਟੈਕ ਤੋਂ ਬਾਅਦ ਵੀ ਦੇਖਿਆ ਹੋਣਾ ਉੱਥੇ ਲੋਕ ਖੜ ਕੇ ਉਹ ਪੱਥਰ ਨੂੰ ਪੜਦੇ ਹੁੰਦੇ ਸੀ ਵੀ ਬਾਬਾ ਦੀਪ ਸਿੰਘਾ ਉਹ ਉੱਥੋਂ ਹਟਾ ਦਿੱਤਾ ਗਿਆ ਜੀ ਇਹ ਬਾਦਲ ਸਾਹਿਬ ਦੀ ਦੇਣ ਆ ਉਹ ਪੱਥਰ ਦਾ ਮੁੱਦਾ ਇਸ ਗੱਲ ਕਹਿੰਦੇ ਸੀ ਵੀ ਟੈਂਕ ਇੱਥੇ ਫਸਿਆ ਸੀ ਉਹ ਲੋਕਾਂ ਦੀ ਮੈਮਰੀ ਚੋਂ ਕੱਢ ਦਿਓ ਬਾਕੀ ਜਿਹੜੇ ਹਾਂਜੀ ਜਿਹੜੀ ਗੱਲ ਹੈਗੀ ਆ ਦੂਜੀ ਬੰਦੇ ਆਪਣੇ ਗੱਲਾਂ ਕਰਦੇ ਆ ਮੇਰੇ ਹਿਸਾਬ ਨਾਲ ਇਕੱਲੇ ਜਰਨੈਲ ਸਿੰਘ ਤੋਂ ਬਿਨਾ ਸਾਰੇ ਨਮਾਇਦੇ ਜਿਹੜੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਚੋਂ ਹੀ ਆ ਨਾ ਕੇਜਰੀਵਾਲ ਨੇ ਬਣਾਣਾ ਉੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਕੋਗੀ ਵਰਗੇ ਜਾਂ ਭਗਵਾਨ ਸਤਮਾਨ ਵਰਗੇ ਜਾਂ ਕਵਰ ਸੰਧੂ ਵਰਗੇ ਹੋਏ ਜਾਂ ਸਾਰੇ ਜ਼ਿਲ੍ਹੇ ਵੀ ਬੰਦੇ ਆ ਸਾਰੇ ਪੰਜਾਬ ਚੋਂ ਆ ਉਹ ਇਹਨਾਂ ਨੂੰ ਬੜੀ ਕਰਨ ਦੀ ਲੋੜ ਨਹੀਂ ਗਈ ਬਦਲ ਵੱਡੇ ਸਤਾਨ ਨੂੰ ਮਾਰਨ ਦੀ ਖਾਤਰ ਛੋਟੇ ਸਤਾਨ ਦੀ ਹੈਲਪ ਲੈਣੀ ਪੈਂਦੀ ਹੈ ਤੇ ਜੇ ਇਹ ਕਹਿਣ ਵੀ ਜਦੋਂ ਅਸੀਂ ਅੱਗੇ ਕਿੰਨੀ ਵਾਰੀ ਤਾਂ ਆਪਾਂ ਦੇਖ ਲਿਆ ਵਿਚਾਰਾ ਮਾਨ ਨਹੀਂ ਜਿੱਤੇ ਸਪੋਰਟ ਸਾਰੇ ਉਹ ਵੀ ਜਦੋਂ ਉੱਥੇ ਅਸੀਂ ਮਿਨੋਰਟੀ ਹੋ ਕੇ ਬਹਿ ਗਏ ਆ ਅਸੀਂ ਡੇਰਿਆ ਨਹੀਂ ਜਾਣਾ ਅਸੀਂ ਉਹ ਨਹੀਂ ਕਰਨਾ ਅਸੀਂ ਹਿੰਦੂਆਂ ਦੀ ਵੋਟ ਨਹੀਂ ਦੇਣੀ ਤਾਂ ਅਸੀਂ ਜਿੱਤਾਂਗੇ ਕਿੱਥੋਂ ਇਹ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਸਾਰੇ ਹੱਥ ਸਮੀਕਰਨ ਵਰਤਣੇ ਪੈਂਦੇ ਆ ਤਾਂ ਜਾ ਕੇ ਜਿੱਤ ਹੋਣੀ ਆ ਤੇ ਬਾਕੀ ਰਹੀ ਆ ਧੁੰਮਿਆ ਨਹੀਂ ਤਾਂ ਉਹ ਸਾਲ ਵਾਲਾ ਬੰਦਾ ਦੱਸ ਹੀ ਗਿਆ ਜਿਹੜੇ ਪੈਰਾਂ 'ਚ ਬਹਿਣ ਵਾਲੇ ਇਹਨਾਂ ਨੇ ਕੀ ਕਰਨਾ ਜੀ ਧੰਨਵਾਦ ਜੀ ਥੈਂਕ ਯੂ ਧੰਨਵਾਦ ਜੀ ਵਪਾਰਕ ਸੰਦੇਸ਼ ਅਲੱਗ-ਅਲੱਗ ਵਿਸ਼ਿਆਂ ਤੇ ਅੱਜ ਆਪਾਂ ਗੱਲ ਕੀਤੀ ਹੈ ਜੀ ਆਸ ਹੈ ਕਿ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ ਪ੍ਰੋਗਰਾਮ YouTube ਤੇ ਵੀ ਪਾ ਦਿੱਤਾ ਜਾਂਦਾ ਤੇ Facebook ਤੇ ਉਹਨੂੰ ਵੀ ਸ਼ੇਅਰ ਕਰ ਦੇਵਾਂਗਾ ਖਬਰਨਾਮਾ ਜਿਹੜਾ ਇੱਕ YouTube ਦਾ ਚੈਨਲ ਹੈ ਉਸ ਤੇ ਹੁਣ ਪ੍ਰੋਗਰਾਮ ਹੁੰਦਾ ਫਿਰ ਲੋਕ ਸੱਤ ਤੇ ਪਾ ਕਰਾਂਗੇ ਪਵਨਦੀਪ ਸਿੰਘ ਜਵੰਦਾ ਇੱਥੇ ਹੈ ਨਹੀਂ ਸੋ ਅਖੀਰ ਦੇ ਵਿੱਚ ਮੁਹੰਮਦ ਸ਼ਰੀਫ ਦਾ ਕੀ ਤੇ ਕੱਲ ਨੂੰ 11:00 ਵਜੇ ਫੇਰ ਮੁਰਦਾ ਕਹਾਣੀ ਦਾ ਦਿਨ ਰੱਬ ਰੱਖਾ